ਕੇ ਆਰ ਪੀ 1550 ਏਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ 11:10 ਹੋ ਗਏ 17 ਫਰਵਰੀ ਦਾ ਦਿਨ ਹੈ ਬਰਾ 2017 ਦਾ ਸ਼ੁੱਕਰਵਾਰ ਹੈ 6 ਅੱਗਣ ਨਾਨਕਸ਼ਹਿ ਸੰਮਤ ਨਿੱਘਾ ਹਾਰਦਿਕ ਸਵਾਗਤ ਹੈ ਜੀ ਅੱਜ ਗੱਲਾਂ ਬਾਤਾਂ ਜੀ ਸੰਗੀਤ ਸੁਰਖ ਦੇ ਮਸਲੇ ਤੇ ਗੱਲਬਾਤ ਹੋਏਗੀ ਜੀ ਪਹਿਲੇ ਇਸ ਦੇ ਵਿੱਚ ਖਬਰਾਂ ਤੁਹਾਨੂੰ ਸੁਣਾਉਣਿਆ ਨਾਲ ਪਰਮਿੰਦਰ ਥਿੰਦੂਣੀ ਫਰੋੜੀੜਾ ਤੋਂ ਸ਼ਾਮਲ ਹੋਣਗੇ ਪੁੱਛਦੇ ਆਂ ਵੀ ਅਮਰੀਕਾ ਕਿਉਂ ਜਿਆ ਲੱਗਦਾ ਸਫਰ ਕਿਉਂ ਜਿਆ ਤੇ 12 ਤੋਂ 1 ਤੱਕ ਖਬਰਾਂ ਤੇ ਨਾਲ ਖੁੱਲੀ ਵਿਚਾਰ ਚਰਚਾ 1 ਤੋਂ 2 ਵਜੇ ਤੱਕ ਮੇਰਾ ਪਿੰਡ ਮੇਰੇ ਖੇਤ ਦੇ ਪਿੰਡ ਨੂੰ ਚੱਲਾਂਗੇ ਤੋਰਾਂਗੇ ਕੋਈ ਪੁਰਾਣੀ ਗੱਲ ਤੇ ਤੁਸੀਂ ਦਿਓ ਸਾਥ 1 74 247 1550 18442471550 ਹਵਾਈ ਤਿਰੰਗਾ ਦਾ ਨੰਬਰ ਹੈ ਦਾਗਰਗੀ ਚਾਹ ਪੀ ਕੇ ਹੁਣ ਬਹਿ ਜਾ ਮੈਂ ਤਾਂ ਬਹਿ ਗਿਆ ਸਾਉਣਾ ਹੁਣ ਧੜੀ ਧੜੀ ਦੀਆਂ ਬੈਠੋ ਇਹ ਕਰਤੇ ਜਿਹੜੀ ਤੇ ਸਭ ਪਰਸਾਨ ਹੈ ਨਾ ਦੇ ਕੋਲ ਨੂੰ ਫਿਰ ਬਹੁਤ ਸੁਆਦ ਆਉਂਦਾ ਚਾਹ ਚ ਪਾਇਆ ਕਰੋ ਸਮਾਨ ਵਧੀਆ ਨਾ ਕਾਲੀ ਮਿਰਚ ਇੱਕ ਤਾਂ ਪਾਉਣੀ ਹੈ ਜ਼ਰੂਰ ਇੱਕ ਲੌਂਗ ਇੱਕ ਇਲਾਇਚੀ ਥੋੜੀ ਜੀ ਅਜ਼ਮੈਨ ਇਹ ਕੱਲ ਦੱਸ ਕੇ ਗਏ ਨੇ ਬੈਤ ਜੀ ਅਜ਼ਮੈਨ ਥੋੜੀ ਜੀ ਮਾੜਾ ਜਿਹਾ ਧੂੜਾ ਮਲਠੀ ਦਾ ਮਾੜਾ ਜਿਹਾ ਧੂੜਾ ਦਾ ਦਾ ਬਸ ਫਿਰ ਤਾਂ ਸਤ ਜਿਵੇਂ ਸਵੇਰਾ ਕੱਢਦਾ ਜੋਗੀ yogi ਅਲਦ ਵਾਲੇ ਵੀਨ ਬਜਾਉਣ ਕੋ ਕੋਲ ਰਹਿਣਾ ਪਤੀਲੇ ਦੇ ਪਤੀਲਾ ਛੱਡ ਕੇ ਨਹੀਂ ਜਾਣਾ ਜੇ ਚਾਹ ਉਬਲ ਗਈ ਸੋ ਆ ਸੱਕਰ ਸੇਵੀਆਂ ਹੋ ਜਾਂਦੀਆਂ ਜਦਿ ਚਾਹ ਰੱਖਣਾ ਪੂਰਾ ਸਤ ਨਹੀਂ ਬਾਹਰ ਡਿਗਣ ਦੇਣਾ ਮਾਮਾ ਨੂੰ ਪਰਾ ਕਰਨ ਤੁਸੀਂ ਪਰਾ ਹੋ ਬੈਠੋ ਚਾਹ ਮੈਨੂੰ ਲਾ ਦੇਣ ਦੋ ਸਵੇਰੇ ਕਈ ਤਕੜੇ ਬੰਦੇ ਐ ਇੱਥੇ ਉਹ ਸੰਦੇਹਾ ਚਾਹ ਆਪ ਬਣਾ ਕੇ ਸਰਦਾਰ ਮੈਨੂੰ ਪਿਉਂਦੇ ਆ ਮੈਂ ਕਾਦੇ ਲਈ ਪਿਉਣਾ ਕਹਿੰਦਾ ਫਿਰ ਸਾਰਾ ਦਿਨ ਆਰਾਮ ਰਹਿੰਦਾ ਤੇ ਕੀ ਰਹਿੰਦੀ ਆ ਫਿਰ 1847200 ਨਹੀਂ ਤਾਂ ਉਲਾਂ ਵੱਜਦੀਆਂ 18442471550 ਆਪਣਾ ਨੰਬਰ ਹੈ ਤੇ krpradio.com ਤੇ ਇਸ ਦਾ ਪ੍ਰਸਾਦ ਸੁਣਿਓ ਤੇ ਲੋਕ ਸਾਥ ਜਿਹੜੀ ਖਬਰਨਾਮੇ ਦੇ ਥੱਲੇ ਪੈਂਦੀ ਆ ਹੁਣ ਖਬਰਨਾਮੇ ਵਾਲੇ ਮੁੰਡੇ ਬਹੁਤ ਵਧੀਆ ਕੰਮ ਕਰਦੇ ਸਾਰੇ ਪ੍ਰੋਗਰਾਮ ਚੁਣ ਕੇ ਸਾਰੀ ਦੁਨੀਆ ਦੇ ਵਿੱਚੋਂ ਦੇਖ ਲਓ ਰੇਡੀਓ ਬਾਹਰ ਪੰਜਾਬੀਆਂ ਦਾ ਕਿੰਨਾ ਟਕਰਾ ਹੋ ਗਿਆ ਸਾਰੇ ਕੁਝ ਚੱਕ ਕੇ ਇੱਕ ਜਗ੍ਹਾ ਤੇ ਪਾਉਂਦੇ ਆ ਪੁਣ ਕੇ ਫਿਰ ਸਾਰੇ ਪ੍ਰੋਗਰਾਮ ਮੁੰਡਿਆਂ ਦੇ ਸੁਣਿਆ ਕਰੋ ਇਟਲੀ ਦੇ ਵਿੱਚ ਰਹਿੰਦੇ ਆ ਔਖੀ ਜ਼ਿੰਦਗੀ ਆ ਫੇਰ ਵੀ ਤੁਹਾਡੇ ਲਈ ਕੰਮ ਕਰਦੇ ਆ ਤੇ ਨਾਲ ਨਿਮੀਡੋਵਾ ਜੀ ਨਾਲ ਗੱਲਬਾਤ ਕਰਨੀ ਆ ਤਾਂ 604 440 64 62 ਨੰਬਰ ਆ info@krpa radio.com ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਗੌਰ ਤੇ harjeetg@krpa radio.com ਇਹ ਈਮੇਲ ਹੈ ਇਹ ਗੱਲਾਂ ਬਾਤਾਂ ਤੁਹਾਨੂੰ ਸੁਣਾਈ ਤੁਸੀਂ ਖੁਸ਼ ਰਹੋ ਚਾਹਤਾ ਵਧੀਆ ਹੀ ਹੁੰਦੀਆਂ ਸਦਾ ਗੱਲ ਤੋੜਨ ਲਈ ਕੋਈ ਗੱਲਤਾ ਕਰਨੀ ਪੈਂਦੀ ਹੈ ਨਹੀਂ ਕਹਿੰਦੇ ਤੈਂ ਗੋਗਾ ਘੋਲਿਆ ਹੀ ਨਹੀਂ ਯਾਰ ਮੈਂ ਗੱਲ ਕੀਤੀ ਤੂੰ ਸੁਣੀਓ ਨਹੀਂ ਮੇਰੀ ਗੱਲ ਹੰਗਾਰਾ ਪਰਣਾ ਪੈਂਦਾ ਆ ਨਾਨੀਆਂ ਦਾਦੀਆਂ ਦੀਆਂ ਬਾਤਾਂ ਦੀ ਗੱਲ ਚੱਲਣੀ ਆ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਜਦ ਬਾਤਾਂ ਸੁਣਾਉਂਦੇ ਹੁੰਦੇ ਪਤਾ ਨਹੀਂ ਕਿਹੜਾ ਰਾਜਾ ਕਿੱਥੇ ਛੱਡਿਆ ਆਉਂਦੀਆਂ ਜਵਾਕ ਸੌ ਜਾਂਦੇ ਦੂਜੇ ਦਿਨ ਉੱਠੋ ਖੇਰ ਤੋੜ ਲੈਂਦੀ 18442471550 ਫੋਨ ਨੰਬਰ ਹੈ ਨਾ ਸਾਦਾ ਬੂ ਵਾਂਗ ਮੋਜਾਂ ਮਾਣਦਾ ਸੀ ਚੱਪਾ ਰੋਟੀ ਖਾ ਨਾਮ ਉਹ ਜਪਦਾ ਦੀ ਨਾ ਮੋਟੀਆਂ ਪਿੰਜਨੀਆਂ ਵਾਲਿਆਂ ਵਾਂਗ ਮੋਜਾਂ ਮਾਣਦਾ ਸੀ ਚੱਪਾ ਰੋਟੀ ਖਾਣ ਨਾਮ ਉਹ ਜਪਦਾ ਸੀ 16 ਕਿਕਰਾਂ ਦਈਆਂ ਤੇ ਵੀ ਉਹ ਰਿਹਾ ਸੌਂਦਾ ਕੋਈ ਅੰਤ ਨਾ ਉਸ ਦੇ ਤਪਦਾ ਸੀ ਸਿਰ ਬੰਨਿਆ ਦਮਾਲਾ ਰੱਖੇ ਤੀਰ ਹੱਤੀ ਲੱਖ ਨਾਲ ਨਾਲ ਚੰਗਿਆ ਬੱਚਾ ਸੱਪਦਾ ਸੀ ਇੱਕ ਝੰਡੇ ਹਟ ਖਾਲਸਾ ਜੀ ਹੋ ਬੋ ਇਕੱਠੇ ਕੌਮ ਦੀ ਨਿਤ ਹੀ ਦੱਸਦਾ ਸੀ ਬੀਬੀ ਆਉਂਦੀ ਤੋਂ ਰਾਹ ਸੀ ਬਦਲ ਲੈਂਦਾ ਪ੍ਰਸਾਦਾ ਵਿੱਚ ਦਾ ਸੀ ਪਿਆਰ ਨਾਲ ਜਿਹਦੇ ਵਖੀ ਵਿੱਚ ਤੀਰ ਖੋਬੇ ਉਹ ਤਾਂ ਕੌਡਿਓ ਬਣਦਾ ਲੱਖ ਦਾ ਸੀ ਜੜੀ ਭਾਜੀ ਨਾ ਸਿੰਘ ਉਹਦੇ ਰਹਿਣ ਦਿੰਦੇ ਕਰਜ਼ਾ ਸਣੇ ਵਿਆਜ ਹੀ ਲੱਖ ਦਾ ਸੀ ਡੰਗ ਬੁੱਕਲ ਦੇ ਸੱਪਾਂ ਦੇ ਸੀ ਜਾਨ ਗੁੱਜੇ ਲਾੜੀ ਮੌਤ ਵੱਲ ਵੇਖ ਵੇਖ ਹੱਸਦਾ ਸੀ ਰਵਿੰਦਰਾ ਦੂਰੋਂ ਸੀ ਬੜੀ ਹਿਸੰਤ ਦੀ ਸੀ ਉਹ ਚੜਦੀ ਕਲਾ ਵਿੱਚ ਕੌਮ ਨੂੰ ਰੱਖਦਾ ਸੀ ਉਹ ਚੜਦੀ ਕਲਾ ਕੌਮ ਵਿੱਚ ਰੱਖਦਾ ਸੀ ਰਵੀਗਰ ਵਾਲਾ ਲੰਮੀਰ ਹੂੰ ਧੰਨਵਾਦ ਜਿੱਥੇ ਵੀ ਤੁਸੀਂ ਦੂਰ ਦਰਾਡੇ ਬੈਠੇ ਹੋ ਜਦ ਕੋਈ ਵਧੀਆ ਗੱਲ ਤੁਹਾਨੂੰ ਸੁਣਾਈ ਦੀ ਆ ਫੋਨ ਦੀ ਟੱਡ ਬਣਾ ਦਿੰਦੇ ਹੋ ਇੰਨਾ ਫੇ ਫੋਨ ਖੜਕਦਾ ਕੱਲ ਦੀ ਜਿਹੜੀ ਗੱਲ ਆਪਾਂ ਕੀਤੀ ਸੀ ਜਗਰੂ ਬਰਾੜ ਉਹਨਾਂ ਟ੍ਰੱਕਰਸ ਦੇ ਇਸ਼ੂ ਬਾਰੇ ਤੇ ਬੇਟੀ ਨਿਮਰਤ कौर ਗਿੱਲ ਦੇ ਸਦੀਵੀ ਬਿਸ਼ੋੜੇ ਨੇ ਭਾਈ ਚਾਰੇ ਨੂੰ ਕਚਲ ਕੇ ਰੱਖ ਦਿੱਤਾ ਜਮਈ ਤੇ ਸਰਕਾਰ ਦੇ ਦਰਬਾਰੇ ਇਸ ਦੀਆਂ ਗੱਲਾਂ ਚੱਲ ਰਹੀਆਂ ਕੱਲ ਦੀ ਸੁਲ ਬਿਲਦ ਉਥੋਂ ਚਿੱਠੀਆਂ ਪੱਤਰ ਆਉਣੇ ਸ਼ੁਰੂ ਹੋਏ ਨੇ ਅਸੀਂ ਕੰਮ ਕਰ ਰਹੇ ਹਾਂ ਕੰਮ ਕਰ ਰਹੇ ਨਰਮ ਰੱਖੀ ਨਰਮ ਰੱਖੀ ਮੈਂ ਕਿਹਾ ਮੇਰੇ ਨਰਮ ਗਰਮ ਵਾਲੀ ਗੱਲ ਨਹੀਂ ਐ ਇਹ ਭੰਡਾਂ ਦਾ ਖਾੜਾ ਥੋੜਾ ਜਿਹੜੀ ਗੱਲ ਆ ਉਹੀ ਕਰਨਾ ਤੁਸੀਂ ਖਿਆਲ ਰੱਖੋ ਮਹਿੰਗੀਆਂ ਕੁਰਸੀਆਂ ਤੇ ਉੱਚੀਆਂ ਕੁਰਸੀਆਂ ਤੇ ਬੈਠੇ ਤੁਸੀਂ ਕੌਮ ਬਲ ਝਾਕਦੇ ਨੇ ਬੋੜਾ ਲੈ ਕੇ ਝਾੜਦੇ ਹੋ ਕਿ ਆ ਕੂਣ ਥੱਲੇ ਨੂੰ ਜਿਹੜੇ ਸਾਲ ਵੋਟਾਂ ਪੈਣੀਆਂ ਨੇ ਫੇਰ ਵੀਰ ਬੀਰ ਕਰਦੇ ਫਿਰਦੇ ਹੋ ਇਹਨਾਂ ਦਾ ਖਿਆਲ ਕੌਣ ਰੱਖੂ ਵਿਆਹ ਭੋਗਾਂ ਤੇ ਫਿਰਨ ਲਈ ਪੈਸੇ ਨਹੀਂ ਤੁਹਾਨੂੰ ਦਿੱਦੀ ਸਰਕਾਰ ਤੇ ਨਾ ਹੀ ਅਸੀਂ ਤੁਹਾਨੂੰ ਚੁਣਿਆ ਇਸ ਕਮਿਊਨਿਟੀ ਦਾ ਇਹਦੇ ਵਿੱਚ ਰਹੇ ਆ ਇਹਦੇ ਵਿੱਚ ਜਵਾਕ ਜੰਮਿਆ ਇਹ ਕੋਈ ਵੱਡੀ ਗਰੀਬੀ ਹੈ ਸਾਰੇ ਇੱਥੇ ਮੈਨੂੰ 30 ਸਾਲ ਹੋ ਗਏ ਇੱਥੇ ਵਸਦੇ ਨੂੰ ਕਿਸੇ ਨੂੰ 25 ਸਾਲ ਹੋ ਗਏ ਕਿਸੇ ਨੂੰ 40 ਸਾਲ ਹੋ ਗਏ ਸਾਰੇ ਇਸ ਤਰ੍ਹਾਂ ਕਹਿੰਦੇ ਇਹ ਕੋਈ ਕੁਆਲਿਟੀ ਨਹੀਂ ਕੰਮ ਕਰਕੇ ਵੇਖੋ ਸਿੰਘ ਚੋਪੜਿਆਂ ਦਾ ਸਾਨੂੰ ਫਾਇਦਾ ਨਹੀਂ ਕੋਈ ਨੀ ਜਲ 40 ਸਿੱਟਦੇ ਆ ਜਦੇ ਬੋਰਡ ਨਹੀਂ ਲਾ ਖੜਦੇ ਹੋ ਜੀਪ ਕੱਢਦੇ ਹੋ ਨਾਲ ਹੀ ਇਹ ਕੰਮ ਜਿਹੜੇ ਕਰਨੁੰਦੇ ਨੇ ਨਿਮਰਤ ਗਿੱਲ ਦੀ ਬੱਚੀ ਦੀ ਮੌਤ ਹੋਈਆ ਡਾਕਟਰ ਦੇ ਹੱਥਾਂ ਦੇ ਵਿੱਚ ਵਧੀ ਦਾ ਇਲਾਜ ਹੈ ਕੱਟੀ ਦਾ ਇਲਾਜ ਕੋਈ ਨਹੀਂ ਪਰ ਜੇ ਕੋਈ ਇਲਾਜ ਕਰਦਾ ਉਹ ਮਾਪਿਆਂ ਨੂੰ ਹੇਰਵਾ ਨਾ ਹੋਵੇ ਸਵੇਰ ਦੇ 5 ਵਜੇ ਦੇ ਗਏ 10 ਵਜੇ ਜਦ ਹੱਥਾਂ 'ਚ ਧੀ ਮੁੱਕ ਗਈ ਤਾਂ ਮਾਂ ਨੇ ਵੈਣ ਪਾਉਣੀ ਪਾਉਣਿਆ ਕਿ ਮੇਰੀ ਧੀ ਦਾ ਮੈਂ ਆਲਾਮ ਦੱਸਦੀ ਰਹੀ ਕਿਸੇ ਨੇ ਆ ਕੇ ਬਾਤ ਨਹੀਂ ਪੁੱਛੀ ਕੋਈ ਟੂਟੀਆਂ ਲਾ ਲੈਣਾ ਕੋਈ ਬਲੱਡ ਲੈ ਲੈਣਾ ਕੋਈ ਐਕਸ ਲੈ ਲੈਣਾ ਪਰ ਉਹਦਾ ਖਿਆਲ ਤਾਂ ਰੱਖੋ ਵੀ ਆਹ ਚੀਜ਼ ਹੋ ਰਹੀ ਹੈ ਤੇ ਮੁਰਕੇ ਸਾਰਾ ਹਸਪਤਾਲ ਉਹਦੇ ਸਿਰ ਤੇ ਖੜਾ ਹੈ ਫੇਰ ਕੀ ਕਰਨਾ ਇਹ ਉਹ ਟੱਕਰ ਦਾ ਇਸ਼ੂ ਹੈ ਤਿੰਨ ਸਾਲ ਹੋ ਗਏ ਇਹਨਾਂ ਨੂੰ ਬਿਲਕਦਿਆਂ ਨੂੰ ਮੈਂ ਬਹੁਤ ਵਾਰ ਦੱਸਿਆ ਕਿ ਇਹਨਾਂ ਦੇ ਘਰ ਟੁੱਟ ਰਹੇ ਨੇ ਟਰੱਕ ਜਿਹੜੇ ਕਿਸ਼ਤਾ ਖਾ ਰਹੀ ਆ ਘਰ ਵੀ ਜਾ ਰਹੇ ਨੇ ਉਹਦੇ ਬਾਅਦ ਜਿਹੜੇ ਘਰ ਚ 10000 ਡਾਲਰ ਆਉਂਦੇ ਹੁਣ 3-4000 ਆਉਂਦਾ ਘਰ ਚ ਕਲੇਸ਼ ਨੇ ਬੱਚਿਆਂ ਦੀ ਪੜਾਈ ਦਾ ਅਸਰ ਅੱਜ ਦੇ ਸਿਸਟਮ ਅਜਿਦਾ ਤੁਸੀਂ ਹੱਲ ਨਹੀਂ ਕਰ ਸਕਦੇ ਜਿਹੜੀ ਪੋਰਟ ਮੈਟਰੋ ਵੈਨਕੂਪਲ ਨਾਈਜੀਰੀਆ ਚ ਨਹੀਂ ਬਣੀ ਹੋਈ ਤੁਹਾਡਾ ਸੂਬਾ ਹੈ ਤੁਹਾਡਾ ਸੂਬਾ ਜਿਹੜਾ ਹੈ ਉਸ ਇਸ ਕੈਨੇਡਾ ਦੇਸ਼ ਚ ਕਰ ਕਿਉਂ ਨਹੀਂ ਸਕਦੇ ਜਦ ਕੋਈ ਪ੍ਰੀਮੀਅਰਸ ਦੀ ਮੀਟਿੰਗ ਹੁੰਦੀ ਹੈ ਜੱਤਾਂ ਵਿੱਚ ਲੱਗਦੇ ਫਿਰਦੇ ਹੋ ਇੱਕ ਦੂਜੇ ਨਾਲ ਜਸਟਨ ਟਰੂਡੋ ਨਾਲ ਬਹਿਣੇ ਆਹ ਮੁਸ਼ਕਲ ਵੀ ਹੱਲ ਕਰੋ ਸਾਨੂੰ ਤਾਂ ਅਸੀਂ ਤਾਂ ਟਰੂਡੋ ਦੇ ਕੋਲ ਜਾ ਕੇ ਬਹਿਣਾ ਨਹੀਂ ਤੁਸੀਂ ਸਾਡੀਆਂ ਮੁਸ਼ਕਲਾਂ ਲੈ ਕੇ ਜਾਣੀ ਤੇ ਜਦ ਤਪਸ਼ ਭਾਈਚਾਰੇ ਚ ਵੱਧਦੀ ਐ ਫਿਰ ਸਾਰੇ ਜਿਹੜੇ ਕੱਢਦੇ ਫਿਰਦੇ ਸਾਧ ਧੂਣੀ ਫਿਰ ਬਹੁਤ ਖੰਡਾ ਉਹੀ ਉਹ ਬਾਤ ਨਹੀਂ ਪੁੱਛਦੇ ਇਹ सदा ही इस तरह चाहिए ਆ ਆਨ ਗoing ਪ੍ਰੈਕਟਿਸ ਚਾਹੀਦੀ ਆ ਆਪਣੇ ਆਪਣੇ ਕੰਸਟਿਟੂਐਂਟਸ ਦਾ ਆਪਣੇ ਆਪਣੇ ਸੂਬੇ ਦਾ ਆਪਣੇ ਆਪਣੇ ਦੇਸ਼ ਦਾ ਖਿਆਲ ਰੱਖਾਂਗੇ ਤਾਂ ਕੋਈ ਤੰਗੀ है नहीं। ਬਹੁਤ माड़ी ਘਟਨਾ हुई है, है बेटी ਬੇਟੀ पर ਪਰ ਇਸ ਦੇ ਨਾਲ ਸਰਕਾਰ ਦੇ ਵਿੱਚ ਵਿਕਟੋਰੀਆ ਗੱਲਾਂ ਚੱਲ ਰਹੀਆਂ ਨੇ ਵੀ ਆਹ ਪੰਗਾ ਬਹੁਤ ਵੱਡਾ ਪੈ ਗਿਆ ਮੂਹਰੇ ਇਲੈਕਸ਼ਨਾਂ ਨੇ ਅੱਜ ਸਮਝੌਤੇ ਕੀਤੇ ਨੇ ਚਾਰ ਸੂਬਿਆਂ ਨੇ ਨਹੀਂ ਕੀਤੇ ਬਾਕੀਆਂ ਨੇ ਫੈਡਰਲ ਨਾਲ ਅੱਜ ਡੀਲ ਕੀਤੀ ਹੈ ਹੈਲਥ케ਅਰ ਤੇ ਜਿਹੜੀ ਨਸ਼ੇ ਦੇ ਨਾਲ ਆਪੀਓਇਡ ਦੇ ਜਿਹੜੇ ਕੰਸਰਨ ਦੇ ਉਹਦੇ ਲਈ ਫੰਡਿੰਗ ਹੋਏਗੀ ਇਹ ਹੋਏਗੀ ਪਰ ਬੰਦਾ 950 ਮੁੱਕ ਗਿਆ ਸਮਝ ਨਹੀਂ ਆਉਂਦੀ ਕਿੱਥੋਂ ਸ਼ੁਰੂ ਕਰਾਂ ਪਰ ਭਾਈਚਾਰੇ ਦੀ ਕੀਤੀ ਗੱਲ ਦਾ ਉੱਪਰ ਜੇ ਗੱਲ ਤਖਸ਼ ਜਾਂਦਾ ਤਾਂ ਤੁਹਾਡੇ ਕਰਕੇ ਆ ਲੋਕੋ ਜਦ ਤੁਸੀਂ ਸ਼ਾਮਲ ਹੁੰਨੇ ਹੋ ਠਾ ਤੇ ਠਾ ਤੁਹਾਡੀਆਂ ਕਾਲਜ ਖੜਕਦੀਆਂ ਜਿੱਦਣ ਸੁਖੱਤਾਂ ਦਿਨ ਹੁੰਦਾ ਚਾਹੇ ਨਾ ਕਰਿਆ ਕਰੋ ਮੈਂ ਇਕੱਲਾ ਹੀ ਬੋਲੀ ਜਾਂਦਾ ਪਰ ਜਿੱਦਣ ਮੁਸ਼ਕਲ ਭਾਈਚਾਰਤ ਹੁੰਦੀ ਹੈ ਵਿੱਬ ਕੇ ਅੱਗੇ ਆ ਕੇ ਚਾਹ ਕਰੋ ਸਾਨੂੰ ਨਹੀਂ ਇਹ ਮਨਜ਼ੂਰ ਫਿਰ ਗੱਲ ਤੁਰਦੀ ਹੈ ਵਪਾਰਕ ਸੰਦੇਸ਼ ਰਵਿੰਦਰ ਸਿੰਘ ਖੰਨਾ ਗੱਲ ਕਰਨ ਤੋਂ ਪਹਿਲਾਂ ਦਰਸ਼ਨ ਸਿੰਘ ਢਿੱਲ ਮੇਰੇ ਨਾਲ ਨੇ ਲਾਈਨ ਨੰਬਰ 3 ਕੀ ਕਹਿਣਾ ਚਾਹੁੰਦੇ ਹੋ ਢਿੱਲ ਸਾਹਿਬ ਥੈਂਕ ਯੂ ਚਾਹ ਦੀਆਂ ਚਾਹ ਦੀਆਂ ਗੱਲਾਂ ਮੁੰਡੇ ਮੁੰਡੇ ਕਹਿੰਦੇ ਕੋਕਾ ਹਾਲਤ ਤੇ ਚਾਰ ਸ਼ੁਕਰਾਂ ਪੌਂਦੇ ਹੁਣ ਬਾਈ ਜੀ ਫਿਕਰੇ ਕੋਈ ਨਹੀਂ ਘਰੇ ਆਏ ਲੋ ਤੇ ਨਿਊ ਦੇ ਬਾਰੇ ਦੇ ਰੋਸਟ ਸਿਫ ਤੇ ਰਵਿੰਦਰ ਥੰਦੋਣੀ ਮੇਰੇ ਨਾਲ ਗੱਲਬਾਤ ਕਰਨਗੇ ਇੰਸ਼ੋਰੈਂਸ ਇੰਡਸਟਰੀ ਬਾਰੇ ਰਵਿੰਦਰ ਥੰਦ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਹਿਬ ਤੇ ਸਾਰੇ ਸਰੋਤਿਆਂ ਮੇਰੇ ਵੱਲੋਂ ਜੀ ਸਤਿ ਸ੍ਰੀ ਅਕਾਲ ਜੀ ਇੱਥੇ ਬਰਫ਼ ਪੈਂਦੀ ਹੈ ਤੁਸੀਂ ਗਰਮ ਦੇਸ਼ ਚ ਜਾਵੜੇ ਇਹ ਗੱਲ ਠੀਕ ਨਹੀਂ ਹੈ ਇਕੋ ਜੀ ਅ ਭਾਜ ਦਾਂਗ ਕਹਿੰਨਾ ਪਰਿਵਾਰਾਂ ਦਾ ਟਾਈਮ ਬਹੁਤ ਜ਼ਰੂਰੀ ਵੀ ਕਰਦੇ ਆ ਪਰਿਵਾਰ ਨਾਲ ਜਾਣ ਦੀ ਕੋਸ਼ਿਸ਼ ਨਾ ਕਰ ਸਮਾਂ ਬਤਾਉਣ ਵੈਰੀ ਗੁੱਡ ਅੱਛਾ ਇੰਸ਼ੋਰੈਂਸ ਆਪਣੇ ਇੰਡਸਟਰੀ ਚ ਨਮਾ ਕੀ ਹੋ ਰਿਹਾ ਜੀ ਹਾਂਜੀ ਪਹਿਲਾਂ ਤਾਂ ਜੀ ਹੁਣ ਜਿਹੜੇ ਰਿਜ਼ਲਟ ਆ ਰਹੇ ਨੇ ਕੰਪਨੀਆਂ ਦੇ ਜਿਮ ਉਹਨਾਂ ਬਾਰੇ ਗੱਲ ਕਰਦਾ ਇੰਸ਼ੂਰੈਂਸ ਕੰਪਨੀਆਂ ਦੇ ਹੁਣ ਜਿਹੜੇ ਰਿਜ਼ਲਟ ਆਏ ਨੇ ਜਿਹੜਾ ਹੁਣ ਸਭ ਤੋਂ ਵੱਡੀ ਕੰਪਨੀ ਜਿਹੜੀ ਮੈਨੂ ਲਾਈਫ ਆਪੰਦਨ ਵਾਲੀ ਸ਼ੁਰੂ ਕਰਦੇ ਹਲੇ ਉਹਨਾਂ ਦਾ ਰਿਜ਼ਲਟ ਆਇਆ ਜਿਹੜੇ ਉਹਨਾਂ ਨੇ 2016 ਚ ਬਾਈਜੀ 2.9 ਬਿਲੀਅਨ ਡਾਲਰ ਬਣਾਏ ਨੇ 34% ਆਪਣੇ ਜੀ ਤੇ 2016 ਜਿਹੜੇ ਹੈਗੀ ਜੀ 4 ਬਿਲੀਅਨ ਡਾਲਰ ਹੈ ਅਬਾਊਟ 17% ਅੱਪ ਹੈਗੀ ਜੀ ਉਸ ਤੋਂ ਬਾਅਦ ਜਿਹੜੀ ਦੂਜੇ ਨੰਬਰ ਤੇ ਉਹਨਾਂ ਦਾ ਹਲੇ ਰਿਜ਼ਲਟ ਆਇਆ ਹੈ ਜੀ ਉਸ ਬਾਅਦ ਤੀਜੇ ਨੰਬਰ ਤੇ ਹੈਗੇ ਇੰਡਸਟਰੀਅਲ ਉਹਨਾਂ ਨੇ ਚੌਥੇ ਕੁਆਟਰ ਦੇ ਵਿੱਚ 155 ਮਿਲੀਅਨ ਡਾਲਰ ਬਣਾਏ ਜੀ ਉਹਨਾਂ ਨੇ ਤੇ ਸਾਰੀਆਂ ਕੰਪਨੀ मोस्ट लाइकली ਸਾਰਿਆਂ ਦੇ ਨੰਬਰ ਆਪਣੇ ਜੀ ਦੇ ਕੁਆਟਰਲੀ ਤੇ ਜੀ ਅੱਛਾ ਜੀ ਅੱਛਾ ਇੱਕ ਦੱਸਿਓ ਕਿ આરਓਐਸਪੀ ਤੇ ਟੀਐਫਐਸ ਟੀਐਫਐਸ ਜਿਹੜਾ ਤੁਸੀਂ ਕਹਿੰਦੇ ਕਿ ਤੁਹਾਡੇ ਰਾਹੀਂ ਮੈਂ ਇਨਵੈਸਟ ਜਾਵੇ ਬਾਰੇ ਸਮਝਾਓ ਜੀ ਬਿਲਕੁਲ ਜੀ ਹਰ ਇੱਕ ਮੈਂ ਮੇਨ ਜਿਹੜਾ ਆਨ ਆਰਰਐਸਪੀ ਸੀਜ਼ ਨੇ ਟੈਕਸ ਸਾਰਿਆਂ ਨੂੰ ਇਹੀ ਹੁੰਦੇ ਜਿਹੜੇ ਮੇਨ ਜਿਹੜੇ ਚਨਾਇਕ ਰੋਕਾਂ ਦੇ ਕੁਐਸਚਨ ਇਹੀ ਆ ਰਹੇ ਨੇ ਵੀ ਮੈਂ ਕਿੰਨੀ ਤੁਸੀਂ 15 ਦੇ ਵਿੱਚ ਤੁਸੀਂ 18% ਤੁਹਾਡੀ ਜਿੰਕਮ ਹੈ ਆਲਮੋਸਟ 25000 ਡਾਲਰ ਡਾਲਰ ਤੁਸੀਂ ਆਪਦੇ ਕੋਲ ਰੂਮ ਹੈਗਾ ਉਹ ਤੁਸੀਂ ਜਿੰਨਾ ਕਰਾਸ ਅ 2017 ਦਾ ਕਰਾਉਣਾ ਤਾਂ ਕਿਉਂਕਿ ਉਹ ਵੀ ਤੁਸੀਂ ਕਰਾ ਸਕਦੇ ਹੋ ਉਸ ਤੇ 26000 ਕੁਝ ਦੀ ਲਿਮਟ ਹੈਗੀ ਸੀ ਤੇ ਆਰ ਰੈਸਪੀ ਦੇ ਕਈਆਂ ਨੂੰ ਆਰ ਆਰ ਰੈਸਪੀ ਪਹਿਲਾਂ ਲੈ ਲਈ ਤੁਹਾਨੂੰ ਟੈਕਸ ਕ੍ਰੈਡਿਟ ਮਿਲ ਗਿਆ ਉਦੋਂ ਬਾਅਦ ਤੁਸੀਂ ਉਹ ਤੁਹਾਡੀ ਮਨੀ ਕਿੱਥੇ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਸੈਲਫ ਡਾਇਰੈਕਟਿੰਗ ਵੀ ਹੈਗੀ ਆ ਤੁਸੀਂ ਸਟਾਕ ਚਲਾਉਣੇ ਆਪ ਹੋਰ ਕਈ ਆਪਸ਼ਨ ਹੈ ਫੰਡ ਚਲਾਉਣੇ ਆ ਮਿਊਚੁਅਲ ਫੰਡ ਚਲਾਉਣੇ ਨੇ ਜਾਂ ਜੀਆਈ ਕਿਸੇ ਵੀ ਤਰੀਕੇ ਤੁਹਾਡੇ ਕੋਲ ਆਪਸ਼ਨ ਹੈਗੀਆਂ ਤੁਸੀਂ ਆਪਦੇ ਹਿਸਾਬ ਨਾਲ ਸਪੀ ਕਿੱਥੇ ਇਨਵੈਸਟ ਕਰਨੀ ਹੈ ਉਹ ਤੁਸੀਂ ਕਰ ਸਕਦੇ ਹੋ ਉਦੋਂ ਭਾਵੇਂ ਤੁਸੀਂ ਸਾਡੇ ਕੋਲ ਇਹ ਆਪਸ਼ਨ ਹੈਗੀਆਂ ਵੀ ਤੁਹਾਨੂੰ ਕਿਤੇ ਜਾਣ ਦੀ ਦਾਰੇ ਕੋ ਜਾਣ ਦੀ ਲੋੜ ਹੈਲੋ ਜੀ ਪਰਮਿੰਦਰ ਸਿੰਘ ਤੋਂ ਨਹੀਂ ਗੱਲਬਾਤ ਕਰ ਰਹੇ ਸੀ ਮੈਨੂੰ ਲੱਗਾ ਲਾਈਨ ਡਿਸਕਨੈਕਟ ਹੋ ਗਈ ਬਾਹਰ ਨੇ ਫਿਰ ਟਰਾਈ ਕਰਦੇ ਹਾਂ ਜੀ ਪਰਮਿੰਦਰ ਸਿੰਘ ਮੇਰੇ ਨਾਲ ਲਾਈਨ ਡਿਸਕਨੈਕਟ ਹੋ ਗਈ ਸੀ ਅੱਛਾ ਜੀ ਆਰਐਸਪੀ ਤੇ ਪੀਐਫਐਸਏ ਦੀ ਤੁਸੀਂ ਗੱਲ ਕਰ ਰਹੇ ਸੀ ਜੀ ਉੱਥੋਂ ਹੀ ਤੋਰੋ ਹਾਂਜੀ ਬਾਈ ਜੀ ਆਰਐਸਪੀ ਦੀ ਗੱਲ ਆਪਾਂ ਜਿੱਦਾਂ ਕਰਦੇ ਆਂ ਵੀ ਹੁਣ ਆਰਐਸਪੀ ਹੁਣ ਡੈਸੀਜਨ ਮਾਰਚ ਇੱਕ ਜਿਹੜੀ ਡੈਡ ਲਾਈਨ ਜੇ ਤੁਸੀਂ ਆਪਣੇ ਆਪ ਡੀਲ ਕਰਦੇ ਹੋ ਸਾਡੇ ਕਿਸੇ ਵੀ ਡਿਵਾਈਜ਼ਰ ਨਾਲ ਘਰੇ ਬਹਿ ਕੇ ਤੁਹਾਨੂੰ ਕਿਤੇ ਜਾਣ ਲੋੜ ਨਹੀਂ ਕਿਸੇ ਧਾਰਿਆ ਕੋ ਘਰੇ ਬਹਿ ਕੇ ਸਾਰਾ ਕੁਝ 'ਚ ਪੈਸੇ ਲਾਉਣ ਤੋਂ ਬਾਅਦ ਤੁਹਾਡੇ ਕਾਫੀ ਚੁਆਇਸਸ ਹੁੰਦੀਆਂ ਜੀ ਤੁਸੀਂ ਆਪਦੀ ਚੁਆਇਸ ਕੋਈ ਵੀ ਪਿਕ ਕਰ ਸਕਦੇ ਹੋ ਤੁਸੀਂ ਤੁਸੀਂ ਆਪ ਸਿੱਧਾ ਉਹਨੂੰ ਟ੍ਰੇਡ ਕਰਨਾ ਸਟਾਕ 'ਚ ਉਹ ਵੀ ਤੁਸੀਂ ਕਰ ਸਕਦੇ ਹੋ ਜਾਂ ਤੁਸੀਂ ਮਿਊਚੁਅਲ ਫੰਡ 'ਚ ਪੈਸੇ ਲਾਉਣੇ ਨੇ ਮਿਊਚੁਅਲ ਫੰਡ ਲਾਉਣੇ ਸੈਕ ਸਕਦੇ ਹਾਂ ਅੱਧਾ ਦਹਾਕਾ ਹੋ ਗਿਆ ਜੀ ਆਰਐਸਪੀ ਨੂੰ ਹੁਣ ਇਸ ਇਸ ਮੋੜ 'ਚ ਸ਼ੁਰੂ ਹੋਈ ਨੂੰ ਲੋਕੀ ਹੁਣ ਸਾਰੇ ਆਰਐਸਪੀ ਜ ਹਾਲੀ ਵੀ ਪਾ ਰਹੇ ਪਰ ਲੋਕਾਂ ਨੂੰ ਹਲੇ ਇਹ ਵੀ ਆਪਸ਼ਨ ਨੇ ਪਰ ਕਿੰਨੇ ਪੈਸੇ ਦੀ ਪਾ ਸਕਦੇ ਜਿਹੜੇ ਮੇਨ ਜਨਰਿਕ ਕੁਐਸਚਨ ਹਾਲੀ ਬੇਸਿਕ ਕੁ ਜਿਹੜੇ ਸਟੈਟਸ ਵੀ ਆਏ ਨੇ ਜਾਂ ਲਿਮਰਾ ਦੀ ਸਟੱਡੀ ਵੀ ਆਈ ਹੈ ਲੋਕਾਂ ਵੀ ਆਪਣੇ ਕੋ ਜਿੱਥੇ ਵੀ ਤੁਸੀਂ ਲਾਉਣੇ ਬੈਠ ਕੇ ਸਲਾਹ ਕਰਕੇ ਪੂਰਾ ਜਿਹੜਾ ਤੁਹਾਡੇ ਵਾਸਤੇ ਟੁਕਮਾ ਹੈਗਾ ਤੁਸੀਂ ਉਹੀ ਪਲਾਨ ਚੂਜ਼ ਕਰ ਸਕਦੇ ਹੋ ਤੁਸੀਂ ਆਪਣੇ ਵਾਸਤੇ ਤੇ ਜਿਹੜੀ ਤੁਸੀਂ ਦੱਸਿਆ ਲਿਮਰਾ ਦੀ ਕੋਈ ਕੋਜ ਆਈ ਹੈ ਉਹ ਕੀ ਅੰਕੜੇ ਆ ਜੀ ਹਾਂਜੀ ਬਿਲਕੁਲ ਜੀ ਹੁਣ ਕੋਈ ਨਾ ਕੋਈ ਸਟੈਟਸ ਆਉਂਦੇ ਜੀ ਸੂਬਾ ਜਿੱਥੇ ਇੰਸ਼ੋਰੈਂਸ ਲੋਕੀ ਤੇ ਤੇ ਕੋ ਬੈਕ ਹੈ ਤੇ ਆਪਣਾ ਬੀਸੀ ਦਾ ਨੰਬਰ ਆਪਣਾ ਨੰਬਰ ਤੇ ਆਉਂਦਾ ਹੈ ਜੀ ਤੇ ਇਹ ਹੈ ਵੀ ਜਿਹੜੇ ਉਹਨਾਂ ਜਿਹੜੇ ਜਿਹੜੇ ਅਪਰੋਵ ਜ਼ਿਆਦਾ ਲੋਕੀ ਇੰਸ਼ੋਰੈਂਸ ਬਾਏ ਕਰਦੇ ਨੇ ਤੇ ਆਪਣਾ ਸੁਭਾ ਚੌਥੇ ਨੰਬਰ ਦਾ ਹੈ ਬਾਈ ਉਸ ਉਸ ਸਟੇਟ ਦੇ ਹਿਸਾਬ ਨਾਲ ਆਪਾਂ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਬਾਰੇ ਗੱਲ ਕਰਦੇ ਹਾਂ ਜੀ ਹਮਮ ਅੱਛਾ ਤੇ ਇੱਕ ਦੱਸਿਓ ਕਿ ਇੰਸ਼ੋਰੈਂਸ ਜਿਹੜੀ ਇੰਡਸਟਰੀ ਹੈ ਇਹਦੇ ਚ ਹੁਣ ਤੁਸੀਂ ਜਿਹੜਾ ਦੇ ਕੰਮ ਕਰਦੇ ਹੋ ਲੋਕ ਇੰਸ਼ੋਰੈਂਸ ਖਰੀਦਣ ਤੋਂ ਰਲਟੈਂਟ ਕਿਉਂ ਨੇ ਦੇਲ ਕਿਉਂ ਨਹੀਂ ਉਹਨਾਂ ਦਾ ਮੰਦਾਕਾਰ ਦਾ ਕੀਤੇ ਉਹ ਡਰਾਈਵ ਵਿੱਚ ਉਹ ਨਹੀਂ ਕਰਦੇ ਘਰ ਦਾ ਇੰਸ਼ੋਰੈਂਸ ਕੰਪਨੀਆਂ ਆਪੇ ਇੰਸ਼ੋਰੈਂਸ ਕਰ ਦਿੰਦੀਆਂ ਨੇ ਬੰਦਾ ਜਿਹਦੇ داروਮਦਾਰ ਸਾਰਾ ਘਰ ਵਾਲੇ ਦਾਲੇ ਚੱਲਦਾ ਉਹ ਮੇਰੇ ਵਰਗਾ ਠੇਸਲ ਬਟ ਜਾਂਦਾ ਵੀ ਮੈਂ ਤਾਂ ਕਰਾਉਣਾ ਨਹੀਂ ਇਹ ਕਾਰਨ ਕੀ ਹੈ ਦੇਖੋ ਜੀ ਅਵੇਅਰਨੈਸ ਬਣੀ ਆਪਾਂ ਜਿਸ ਚੀਜ਼ ਬਾਰੇ ਗੱਲ ਕਰਦੇ ਹਾਂ ਉਸ ਚੀਜ਼ ਬਾਰੇ ਆਪਾਂ ਉਸ ਬਾਰੇ ਪੁਛਪੜਤਾਲ ਕਰਦੇ ਆ ਫਿਰ ਆਪਾਂ ਨੂੰ ਪਤਾ ਲੱਗਦਾ ਵਾਕਈ ਇਹ ਦੀ ਹੈਗੀ ਐ ਨਹੀਂ ਹੈਗੀ ਕਿਉਂਕਿ ਹਰੇਕ ਦੀਆਂ ਜ਼ਰੂਰਤਾਂ ਅਡੜ ਨੇ ਹਰੇਕ ਵਾਸਤੇ ਤਾਂ ਦੇ ਹਿਸਾਬ ਨਾਲ ਕਾਰਾਂ ਬਣੀਆਂ ਆ ਤੇਲ ਤੁਸੀਂ ਗੈਸ ਪਾ ਸਕਦੇ ਹੋ ਜਿੱਦਾਂ ਤੁਹਾਡੀ ਜ਼ਰੂਰਤ ਹੈਗੀ ਐ ਤੇ ਇਹੇ ਕਰਕੇ ਕਿਉਂਕਿ ਇਹ ਐ ਵੀ ਇਸ ਚੀਜ਼ ਦੀ ਹਾਲੀ ਵੀ ਆਪਣੇ ਮਾਈਂਡ ਸੈਟ ਹੈ ਜਿਦਾਂ ਜਿਨ੍ਹਾਂ ਨੂੰ ਹੁਣ ਆਪੇ-ਪਾਸੇ ਜਿਨ੍ਹਾਂ ਦੇ ਪਰਿਵਾਰਾਂ ਦੀਆਂ ਚੀਜ਼ਾਂ ਹੁੰਦੀਆਂ ਜੀ ਜੇ ਆਪਾਂ ਦੇਖਦੇ ਆ ਉਹਨਾਂ ਦੇ ਤੇ ਫਿਰ ਆਪਾਂ ਨੂੰ ਪਤਾ ਲੱਗਦਾ ਬੰਦਾ ਕਹਿੰਦਾ ਹੈਗੀ ਲੇਟ ਬਹੁਤ ਮਹਿੰਗੀ ਹੈ ਜਾਂ ਕਹਿੰਦੇ ਵੀ ਟੂ ਪਰ ਇਹ ਵੀ ਸਟੈਟਸ ਨੇ ਜੀ ਹੁਣ ਜਿਹੜੇ ਆ ਰਹੇ ਨੇ ਕਿਉਂਕਿ ਲੋਕੀ ਜਿਹੜੇ ਨਿਆਣਿਆਂ ਦੇ अर्ਲੀ ਪਲਾਨ ਸ਼ੁਰੂ ਕਰ ਰਹੇ ਨੇ ਇਹ ਵੀ ਹੁਣ ਇਸ ਟਾਈਮ ਦੇ ਸਭ ਤੋਂ ਨੰਬਰਸ ਆਪਨੇ ਜੀ ਕਿਉਂਕਿ ਲੋਕੀ ਬਹੁਤ अर्ਲੀ ਸ਼ੁਰੂ ਕਰ ਰਹੇ ਨੇ ਕਿਉਂਕਿ ਆਪਾਂ ਦੂਜਿਆਂ ਵੱਲ ਪਹਿਲਾਂ ਦੇਖਦੇ ਆ ਵੀ ਦੂਜੇ ਆਪਣੇ ਜਿਹੜੇ ਹੋਰ ਇਥੇ ਪਹਿਲਾਂ ਆਏ ਉਹ ਕੀ ਕਰ ਰਹੇ ਨੇ ਕਿਉਂਕਿ ਹਿਸਾਬ ਨਾਲ ਆਪਾਂ ਲਿਆ ਬੰਦਾ ਠੀਕ ਹੀ ਹੋਣਾ ਇਲਾਕਾ ਵਧੀਆ ਹੋਣਾ ਉਸ ਆਪਾਂ ਵੀ ਉੱਥੇ ਸਮਝ ਆਪਦੇ ਆਪ ਨਾਲ ਸਪੈਂਡ ਕਰਦੇ ਸੋਚਦੇ ਆ ਵੀ ਸਾਨੂੰ ਰਿਸਕ ਕਿਸ ਚੀਜ ਤੋਂ ਹੈ ਅਵੇਅਰਨੈਸ ਨਾਲ ਸਾਨੂੰ ਪਤਾ ਲੱਗਦਾ ਵੀ ਸਾਰਾ ਰਿਸਕ ਆਲੇ-ਦੁਆਲੇ ਸਾਡੇ ਹੈਗਾ ਘਰ ਗੱਡੀਆਂ ਪਰਿਵਾਰ ਦਾ ਰਿਸਕ ਜਿਹੜਾ ਹੈਗਾ ਕਿਉਂਕਿ ਮੈਂ ਕਈ ਵਾਰੀ ਦੇਖਦਾ ਕਹਿੰਦੇ ਵੀ ਇੰਨੇ ਕੁ ਗਏ ਵੀ ਸਾਨੂੰ ਇੰਨੀ ਕੀ ਚਾਹੀਦੀ ਇੰਸ਼ੋਰੈਂਸ ਪਰ ਨਹੀਂ ਜਦੋਂ ਆਪਾਂ ਬਹਿ ਕੇ ਤੁਸੀਂ ਕਿਸੇ ਪ੍ਰੋਫੈਸ਼ਨਲ ਨਾਲ ਨੇ ਕਿੰਨੀ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਨੇ ਵਕਾਇਈ ਜਿਨ੍ਹਾਂ ਦੇ ਹੁਣ ਲਾਇਬਿਲਿਟੀਆਂ ਨਹੀਂ ਹੈਗੀਆਂ ਕੁਝ ਕਿਉਂਕਿ ਉਹ ਤੁਸੀਂ ਆਪ ਦੇ ਇਕੱਲੇ ਇੰਸ਼ੋਰੈਂਸ ਹੋਸੀ ਇਸੇ ਵਾਸਤੇ ਨਹੀਂ ਹੈਗੀ ਕਿ ਆਪਦੇ ਤੁਸੀਂ ਪਿਸ਼ੋਖੜ ਪੈਸੇ ਦੇ ਕੇ ਜਾਣੇ ਉਹਨਾਂ ਵਾਸਤੇ ਆ ਤੁਸੀਂ ਹੁਣ ਆਪਦੇ ਜਿਉਂਦੇ ਆ ਜੀ ਵੀ ਆਪਦੀ ਚੀਜ਼ਾਂ ਇੰਜੋਏ ਕਰ ਸਕਦੇ ਆ ਜਦ ਤੱਕ ਕ੍ਰਿ ਤਾਨੂੰ ਪਤਾ ਹੈ ਵੀ ਕੋਈ ਬਿਮਾਰੀ ਲੱਗਦੀ ਹੈ ਤੁਹਾਨੂੰ ਲੰਬ ਪੈ ਜਾਂਦਾ ਜਾਂ ਕਿ ਨਿਆਣਾ ਹੀ ਆਪਣਾ ਬਿਮਾਰ ਹੋ ਜਾਂਦਾ ਆਪਾਂ ਸਕੂਲ ਨਹੀਂ ਜਾਂਦੇ ਆਪ ਕੰਮ ਤੇ ਨਹੀਂ ਜਾਂਦੇ ਨਿਆਣਾ ਸਕੂਲ ਨਹੀਂ ਜਾਂਦਾ ਆਪਾਂ ਨੂੰ ਪਤਾ ਵੀ ਹੁਣ ਕਿੱਥੇ ਛੱਡ ਕੇ ਆਵਾਂ ਕੋਈ ਹੈ ਨਹੀਂ ਇਸ ਕਰਕੇ ਉਹੋ ਚੀਜ਼ਾਂ ਲੰਬੇ ਸਮੇਂ ਵਾਸਤੇ ਹੁਣ ਵੀ ਉਹਨਾਂ ਨੇ ਆਪਾਂ ਉਸ ਚੀਜ਼ ਦਾ ਪਲਾਨਿੰਗ ਕਰੀਏ ਜਾਂ ਕਿਸੇ ਨੇ ਛੁੱਟੀਆਂ ਜਾਂ ਜਾਣਾ ਹੈ ਉਹ ਕਰਾਂਗੇ ਤੱਕ ਜਾਵਾਂਗੇ ਤੇ ਵੀ ਆਪਾਂ ਕਰਕੇ ਕੰਮ ਹੁੰਦੇ ਨੇ ਤੇ ਉਸੇ ਹਿਸਾਬ ਨਾਲ ਜਰੂਰਤਾਂ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਜੀ ਬਿਲਕੁਲ ਜਰੂਰਤਾਂ ਹੈਗੀਆਂ ਨੇ ਆਪਾਂ ਜੇ ਸੋਚੀਏ ਸਾਨੂੰ ਲੋਡ ਨਹੀਂ ਉਹ ਵੀ ਉਹਦੇ ਨਾਲ ਵੀ ਬਿਜਾਰਾ ਨਹੀਂ ਚੱਲਦਾ ਕੰਮ ਤਾਂ ਕਰਨਾ ਹੀ ਪੈਣਾ ਅੱਛਾ ਤੇ ਇੱਕ ਦੱਸਿਓ ਜੀ ਬਹੁਤ ਵੱਡੀ ਗਿਣਤੀ ਭਾਈਚਾਰਾ ਦੇ ਵਿੱਚੋਂ ਸੈਲਫ ਇੰਪਲੋਇਡ ਨੇ ਚਾਹੇ ਉਹ ਟੈਕਸੀ ਚਲਾਉਣੇ ਚਾਹੇ ਟਰੱਕ ਚਾਹੇ ਕੰਸਟਰਕਸ਼ਨ ਦਾ ਬਿਜ਼ਨਸ ਹੈ ਬਹੁਤ ਜ਼ਿਆਦਾ ਵੱਡੀ ਗਿਣਤੀ ਹੈ ਅਸੀਂ ਆਪਣਾ ਛੋਟਾ ਮੋਟਾ ਬਿਜ਼ਨਸ ਕਰਦੇ ਆ ਇਵਨ ਕੰਪਨੀ ਚ ਰੱਖ ਕਿਤੇ ਪਾਏ ਆ ਉਹ ਵੀ ਆਪਾਂ ਸੈਲਫ ਇੰਪਲਾਈਡ ਦੇ ਵਿੱਚ ਆਪਣੇ ਆਪ ਨੂੰ ਓਨਰ ਆਪਰੇਟਰ ਪਾਉਂਦੇ ਆ ਉਹਨਾਂ ਦੇ ਬਾਰੇ ਦੱਸੋ ਕਿ ਉਹਨਾਂ ਦੀ ਇੰਸ਼ੋਰੈਂਸ ਜਾਂ ਕੋਈ ਉਹਨਾਂ ਦੀ ਫੈਮਿਲੀ ਦੀ ਇੰਸ਼ੋਰੈਂਸ ਗਰੁੱਪ ਇੰਸ਼ੋਰੈਂਸ ਉਹ ਕਿਹੜੇ ਖਾਤੇ ਚਾਹੁੰਦੇ ਆ ਦੇਖੋ ਜੀ ਹਾਂਜੀ ਬਿਲਕੁਲ ਇਹ ਹੈ ਵੀ ਜੇ ਆਪਾਂ ਹੁਣ ਮੈਂ ਚਲੋ ਇੱਕ EMPLOYEES ਦੇ ਤੌਰ ਤੇ ਜੇ ਆਪਾਂ ਸੋਚੀਏ ਜੇ ਮੈਂ EMPLOYEES ਆ ਤੇ ਮੇਰਾ ਕੰਮ ਤੋਂ ਮੇਰੀ ਕਵਰੇਜ ਹੈਗੀ ਮੇਰਾ ਗਰੁੱਪ ਪਲਾਨ ਹੈਗਾ ਬਾਈ ਜੀ ਠੀਕ ਹੈ ਜੇ ਹੁਣ ਮੈਂ ਸੈਲਫ এমਪਲੋਇਡ ਆ ਮੇਰੀ ਕੋਈ ਕਵਰੇਜ ਨਹੀਂ ਹੈਗੀ ਨਾ ਹੀ ਮੈਂ ਆਪਦੇ ਕਿਸੇ ਕੋਈ ਕੰਟਰੀਬਿਊਸ਼ਨ ਕਰ ਰਹਾ ਆ ਆਪਦੇ ਰਿਟਾਇਰਮੈਂਟ ਵਾਸਤੇ ਉਹ ਵੀ ਸੈਲਫ এমਪਲੋਇਡ ਅੱਜ ਤਾਂ ਆਪਾਂ ਕੰਮ ਕਰਦੇ ਆ ਕਿ ਕਿੰਨਾ ਚਿਰ ਆਪਾਂ ਕੰਮ ਕਰਦੇ ਰਵਾਂਗੇ ਆਪਾਂ ਜੇ ਇਹ ਸੋਚੀਏ ਵੀ ਅੱਜ ਤਾਂ ਮੇਰਾ ਸਾਰਾ ਕੁਝ ਚਾਉਦਾ ਹੱਥ ਪੈਰ ਸਭ ਕੋਈ ਤੰਦਰੁਸਤੀ ਹੈ ਸਾਰਾ ਕੋਈ ਖਰਚੇ ਬਿੱਲ ਆਈ ਜਾਂਦੇ ਆਪਾਂ ਬਿੱਲ ਤਾਰੀ ਜਾਂਦੇ ਸਾਰਾ ਕੁਝ ਚੱਲ ਜਾਂਦਾ ਜਦੋਂ ਗੱਡੀ ਖੜੂਗੀ ਉਦੋਂ ਫਿਰ ਇਹ ਖਰਚੇ ਕਿਦਾਂ ਚੱਲਣੇ ਕਿਉਂਕਿ ਲਾਈਫਸਟਾਈਲ ਦਾ ਤੁਹਾਡਾ ਚੇਂਜ ਨਹੀਂ ਹੋਣਾ ਫਿਰ ਉਦੋਂ ਐ ਵੀ ਸੈਲਫ ਇੰਪਲਾਈਡ ਜਿੰਨੇ ਨੇ ਉਹ ਆਪ ਦਾ ਭਾਵੇਂ ਰਿਟਾਇਰਮੈਂਟ ਪਲਾਨ ਤੁਸੀਂ ਕਰਨਾ ਕੁਛ ਨਾ ਕੋਈ ਚੀਜ਼ ਤੁਸੀਂ ਉਸ ਹਿਸਾਬ ਨਾਲ ਤਾਂ ਹੀ ਹੌਲੀ ਹੌਲੀ ਕਰਕੇ ਡਾਲਰ ਡਾਲਰ ਕੇ 100 ਡਾਲਰ ਬਣਾਣਾ ਤੇ ਜਾਂ ਉਸੇ ਹਿਸਾਬ ਨਾਲ ਜੇ ਤੁਸੀਂ ਇੱਕ ਤਾਂ ਇੰਸ਼ੋਰੈਂਸ ਗਰੁੱਪ ਹੋ ਗਿਆ ਤੁਸੀਂ ਗਰੁੱਪ ਪਲਾਨ ਤੁਸੀਂ ਆਪ ਵੀ ਸ਼ੁਰੂ ਕਰ ਸਕਦੇ ਹੋ ਰਿਟਾਇਰਮੈਂਟ ਪਲਾਨ ਕਰ ਲਿਆ ਗਰੁੱਪ ਪਲਾਨ ਕਰ ਲਿਆ ਜੇ ਇੰਸ਼ੋਰੈਂਸ ਵੀ ਤੁਸੀਂ ਇੱਕ ਕੰਪਨੀ ਤੁਸੀਂ ਮੇਨ ਹੀ ਚੱਲ ਤੁਸੀਂ ਇਹ ਚਲਾਉਂਦੇ ਹੋ ਆਪ ਕੰਪਨੀ ਦੇ ਪੈਸੇ ਤੁਸੀਂ ਆਪ ਦੀ ਇੰਸ਼ੋਰੈਂਸ ਲੈਣੀ ਹੈ ਜਾਂ ਤੁਸੀਂ ਆਪ ਦੀ ਕ੍ਰਿਟੀਕਲ ਲੈਣੀ ਹੈ ਤੁਸੀਂ ਕੰਪਨੀ ਦੇ ਕਈ ਵਾਰੀ ਆਪਣੇ ਕੰਪਨੀਆਂ ਚ ਪੈਸੇ ਹੁੰਦੇ ਆ ਆਪਾਂ ਕੱਢਦੇ ਨਹੀਂ ਕਿਉਂਕਿ ਰਿਟੇਨਡ ਮਨੀ ਤਾਂ ਸਾਡੀ ਹੈਗੀ ਆ ਉਹ ਅਸੀਂ ਕਈ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਸਾਡੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਕਿਉਂਕਿ ਉਹ ਹੈ ਵਿਥ ਸੈਲਫ এমਪਲoyed ਜ਼ਰੂਰ ਇਸ ਚੀਜ਼ ਵਾਜਾ ਚਾ ਰੱਖਣ ਕਿਉਂਕਿ ਜਦੋਂ ਜਿੰਨੇ ਵੀ ਡਿਵੀਡੈਂਡ ਕਢਾਉਂਦੇ ਨੇ ਸਲਾਹ ਕਰ ਸਕਦੇ ਹੋ ਮੈਂ ਆਰਐਸਪੀ ਲੈਣੀ ਅਗਲੀ ਮੈਂ ਕਰਨੀ ਹੈ ਦੋਸਤ ਹਾਂ ਮੈਂ ਕੀ ਕਰਾਂ ਇਹ ਚੀਜ਼ਾਂ ਵੀ ਸੈਲਫ EMPਲੋਇਡ ਅਸਲਿ ਚੀਜ਼ਾਂ ਨੇ ਤੁਸੀਂ ਕੰਪਨੀ ਦੇ ਰਿਟੇਨ ਅਰਨੀ ਯੂਜ਼ ਕਰ ਸਕਦੇ ਹੋ ਕਿਉਂਕਿ ਕਈ ਵਾਰੀ ਕਿਉਂਕਿ ਜਦੋਂ ਆਪਾਂ ਸਿੱਧਾ ਹੀ ਲਾਉਨੇ ਆ ਜ ਕੰਪਨੀ ਦਾ ਟੈਕ ਸਾਰਾ ਹੈਗਾ ਜੀ 13% ਅਪਰੋਕਸੀਮੇਟਲੀ ਜੇ ਆਪਾਂ ਤੁਸੀਂ ਆਪਦੀ ਪਰਸਨਲ ਇਨਕਮ ਹੈ ਉਹ ਜੇ ਕਿਸੇ ਹੋ ਗਿਆ ਜੇ ਉਸ ਹਿਸਾਬ ਨਾਲ ਹੀ ਦੇਖਦੇ ਯੂਜ਼ ਕਰਦੇ ਹੋ ਤੇ ਜੇ ਤੁਸੀਂ ਉਹੀ ਕੰਪਨੀ ਵਾਲੇ ਡਾਲਰ ਯੂਜ਼ ਕਰਦੇ ਹੋ ਤੁਹਾਨੂੰ ਕਾਫੀ ਫਾਇਦਾ ਹੈ ਜਿੰਨੇ ਵੀ ਸੈਲਫ এমਪਲੋਇਡ ਨੇ ਇਸ ਕਰਕੇ ਆਪ ਦਾ ਜ਼ਰੂਰਤਾਂ ਦੇ ਹਿਸਾਬ ਨਾਲ ਬਿਲਕੁਲ ਉਸ ਚੀਜ਼ ਬਾਰੇ ਸੋਚਣ ਉਹ ਚੀਜ਼ ਲੈਣ ਜਿਹੜੋਂ ਨਵਸਤੇ ਹਮੇਸ਼ਾ ਉੱਤੇ ਆ ਜਾਂਦੀ ਗੱਲ ਕਿਉਂਕਿ ਜਦੋਂ ਆਪਾਂ ਹਰੀ ਚੀਜ਼ ਵਧੀਆ ਲੱਗਦੀ ਪਰ ਜਦੋਂ ਆਪਾਂ ਦੇਖੀਏ ਸਾਡੇ ਵਾਸਤੇ ਟੁਕਮੀ ਕਿਹੜੀ ਹੈ ਵਧੀਆ ਨਹੀਂ ਹੋ ਸਕਦੀਆਂ ਡਿਪੈਂਡ ਹੈ ਜਿੰਨੇ ਵੀ ਸੈਲਫ EMPLOYEED ਨੇ ਕੁਝ ਵੀ ਆ ਡਿਸੇਬਿਲਟੀ ਬਾਰੇ ਹੈ ਕਿਉਂਕਿ ਜੇ ਤੁਸੀਂ ਇਕੱਲੇ ਕੰਮ ਚਲਾਉਂਦੇ ਹੋ ਜਾਂ ਕੋਈ ਵੀ ਪ੍ਰੋਫੈਸ਼ਨਲ ਤੁਹਾਡੇ EMPLOYEES ਨੇ ਤੁਸੀਂ ਆਪ ਜਿੰਨੇ ਵੀ ਬਿਜ਼ਨਸ OVERHEAD ਨੇ ਤੁਸੀਂ ਉਹ EXPENSE ਪਾ ਸਕਦੇ ਹੋ ਤੇ ਉਹ ਤੁਹਾਡੇ ਬੇਸਿਕਲੀ ਖਰਚੇ ਨੇ ਤੇ ਉਹ ਜਿੰਨੇ ਵੀ ਤੁਹਾਡੇ ਹੁਣ ਜੇ ਨੇ ਜਿਹੜੀਆਂ ਨੇ ਆਪਦੇ ਹਿਸਾਬ ਨਾਲ ਜਰੂਰ ਆਪ ਦਾ ਫਾਈਨੈਂਸ਼ੀਅਲ ਖੇਤਰ ਬਾਰੇ ਆਪ ਦਾ ਪੂਰਾ ਆਪਕੋਸ਼ ਪੜਤਾਲ ਮੇਨ ਚੀਜ਼ ਇਹ ਹੈ ਭਾਈ ਪਾਉਸਲ ਕਈ ਵਾਰੀ ਆਪਣੀ ਆਪਦੀ ਇਨਕਮ ਹੁੰਦੀ ਆਪਣਾ ਰੂਮ ਨਹੀਂ ਤੁਸੀਂ ਆਪਦੀ ਸਪੌਸਰ ਵੀ ਆਰਆਰਐਸਪੀ ਲੈ ਸਕਦੇ ਹੋ ਜਰੂਰੀ ਨਹੀਂ ਵੀ ਤੁਸੀਂ ਆਪ ਤੇ ਹੀ ਪਾਉਣੇ ਉਧਰ ਵੀ ਕੰਟ੍ਰਿਬਿਊਟ ਕਰ ਸਕਦੇ ਹੋ ਉਧਰ ਰੂਮ ਜ਼ਿਆਦਾ ਹੈਗਾ ਤਾਂ ਤੁਹਾਨੂੰ ਫਾਇਦਾ ਹੈ ਵੀ ਜਦੋਂ ਪੈਸੇ ਵੀ ਕਢਾਉਣੇ ਨੇ ਲੋਅ ਇਨਕਮ ਵਾਲਾ ਬੰਦਾ ਕਢਾਵੇ ਕਿਉਂਕਿ ਤੁਹਾਡੀ ਉਹ ਇਨਕਮ ਹੋ ਜਾਣੀ ਆ ਉਸ ਉਸ ਸਾਲ ਦੀ ਜਦੋਂ ਤੁਸੀਂ ਆਰਪੀਸੀ ਤੋਂ ਪੈਸੇ ਕਢਾਉਣੇ ਆਗੇ ਅੱਛਾ ਜੀ ਇੱਕ ਹੋਰ ਦੱਸਿਓ ਕਿ ਇੰਸ਼ੋਰੈਂਸ ਦੋਬਾਦ ਜਿਹੜੇ ਤੁਹਾਡੇ ਖਰਚੇ ਨੇ ਮੰਨ ਲਓ ਲੋਨ ਹੈ ਮੌਰਗੇਜ ਹੈ ਕੋਈ ਪ੍ਰਾਪਰਟੀ ਲਈ ਬੈਠੇ ਹੋ ਉਹਨਾਂ ਦੀ ਤੁਸੀਂ ਯੂਨੀਵਰਸਲ ਲੋਨ ਪ੍ਰੋਟੈਕਸ਼ਨ ਸ਼ਬਦ ਕਹਿੰਦੇ ਆ ਮੈਂ ਵੀ ਕਿਹਾ ਹੁੰਦਾ ਉਹ ਕੀ ਹੈ ਉਹ ਕਿਸ ਤਰ੍ਹਾਂ ਹੁੰਦੀ ਆ ਪ੍ਰੋਟੈਕਸ਼ਨ ਹਾਂਜੀ ਇਸ ਕਰਕੇ ਆ ਆਪਣੀਆਂ ਲੋਨਸ ਨੇ ਹੁਣ ਆਪਾਂ ਚਲੋ ਇੱਕ ਟਰੱਕ ਆਪਰੇਟਰ ਦੇ ਐਗਜ਼ਾਮਪਲ ਲੈਨੇ ਕਿਉਂਕਿ ਪਿਛੇ ਜਦੋਂ ਆਪਾਂ ਉਹਨਾਂ ਕਿਸੇ ਈ ਪਰਿਵਾਰ ਨੂੰ ਮਿਲੇ ਉਹਨਾਂ ਕੋਲੇ ਹੁਣ ਕਈ ਵਾਰੀ ਏਦਾਂ ਹੁੰਦਾ ਹੈ ਵੀ ਤੁਸੀਂ ਜਦੋਂ ਟਰੱਕ ਲਿਆ ਟਰੱਕ ਢਾਈ ਡੇ 3-3 ਲੱਖ ਦੇ ਹੈਗੇ ਜੀ ਜਦੋਂ ਲੈਣਾ ਕਿਉਂਕਿ ਉਹਨਾਂ ਦੀ ਕਿਸ਼ਤਾਂ ਕਾਫੀ ਹੈੀ ਹੁੰਦੀਆਂ ਨੇ ਉਦੋਂ ਤੁਸੀਂ ਇੱਕ ਤਾਂ ਉੱਥੇ ਖੜੇ ਪੈ ਰਹੇ ਆਪਾਂ ਬਗੈਰ ਅੰਡਰ ਰਿਟਨ ਹੁੰਦੇ ਨੇ ਕਿਉਂਕਿ ਉਹਨਾਂ ਨੇ ਉਹਦੇ 'ਚ ਕੋਈ ਪੁਸ਼ਪੜਤਾਲ ਨਹੀਂ ਕਰਦੇ ਤੁਸੀਂ ਪ੍ਰੂਵ ਹੁੰਨੇ ਹੋ ਪਰ ਉਹ ਬਾਅਦ 'ਚ ਤੁਹਾਨੂੰ ਅੰਡਰਰਾਈਟ ਸਕਦਾ ਪਹਿਲਾਂ ਦੇਖ ਸਕਦੇ ਤੁਹਾਡਾ ਉਹ ਡਾਕਟਰੀ ਕਰਕੇ ਤੁਹਾਡੀ ਫੋਨ ਤੇ ਪੁਸ਼ਪੜਤਾਲ ਕਰਕੇ ਵਾਕਿਆ ਤੁਸੀਂ ਐਲੀਜੀਬਲ ਹੋ ਕਿ ਨਹੀਂ ਉਸ ਚੀਜ਼ ਵਾਸਤੇ ਉਹ ਜਿੰਨੀਆਂ ਤੁਹਾਡੀਆਂ ਕਿਸ਼ਤਾਂ ਨੇ ਬਾਈ ਭਾਵੇਂ ਮੋੜ ਗਈ ਦੀ ਹੋਵੇ ਭਾਵੇਂ ਕਾਰ ਦੀ ਹੋਵੇ ਆਵੇ ਟਰੱਕ ਵੀ ਹੋਵੇ ਟਰੈਲਰ ਦੇ ਹੋਵੇ ਤੁਸੀਂ ਉਹ ਪਲਾਨ ਲੈਨੇ ਹੋ ਉਹਦੇ ਚ ਜੇ ਤੁਹਾਨੂੰ ਕੋਈ ਜਦੋਂ ਡਿਸੇਬਿਲਟੀ ਹੋ ਜਾਂਦੀ ਉਹ ਤੁਹਾਡੀਆਂ ਸਾਰੀਆਂ ਹੀ ਕਿਸ਼ਤਾਂ ਕਵਰ ਨੇ ਨਾ ਹੀ ਨਾਲ ਕੋ ਲੈਣਾ ਦੇਣਾ ਨਾ ਹੀ ਕੋਈ ਤੁਹਾਡਾ ਆਈਸੀਬੀਸੀ ਨਾਲ ਲੈਣਾ ਦੇਣਾ ਉਹ ਤੁਹਾਨੂੰ ਜੇ 6:00 ਵੱਜੂਗੀ ਉਹ ਕਿਸ਼ਤਾਂ ਤੁਹਾਨੂੰ ਮਿਲਣੀਆਂ ਨੇ ਉਦਾਂ ਹੀ ਟੈਕਸ ਫਰੀ ਜਿੱਦਾਂ ਤੁਹਾਡੇ ਜਿੱਦਾਂ ਤੁਸੀਂ ਆਪਾਂ ਕਿਸੇ ਹੋਰ ਨੂੰ ਕਿਸ਼ਤਾਂ ਪੇ ਕਰਦੇ ਕੰਪਨੀ ਨੇ ਆਪਾਂ ਨੂੰ ਉਹ ਪੈਸੇ ਦੇਣੇ ਆਪਾਂ ਆਪਣੀਆਂ ਕਿਸ਼ਤਾਂ ਅੱਗੇ ਜਾਂ ਲਾਈਨ ਅਪਰੇਡ ਦੀ ਕਿਸ਼ਤ ਹੈ ਉਹ ਅੱਗੇ ਆਪਾਂ ਉਹਨਾਂ ਨੂੰ ਪੇ ਕਰ ਸਕਦੇ ਹਾਂ ਉਹਨਾਂ ਨੂੰ ਆਪਾਂ ਜਿੰਨੇ ਲੋਨ ਨੇ ਲਿਓਨ ਲੋਨ ਸਾਡੇ ਨੇ ਆਪਣੇ ਕਈ ਵਾਰੀ ਆਪਾਂ ਰਲ ਕੇ ਕੋਈ ਚੀਜ਼ ਜੇ ਆਪਣੀ ਮੋੜ ਗਈ ਘਰ ਦੀ ਵੀ ਜਾਂਦੀ ਹੈ ਸ਼ੁਰੂ ਹੋ ਗਈ ਉਹ ਤੁਹਾਡੀਆਂ ਜਿੰਨੇ ਤੁਹਾਡੇ ਹਿੱਸੇ ਦੀਆਂ ਜਿੰਨੇ ਲੋਨ ਨੇ ਉਹ ਸਾਰੇ ਕਵਰ ਹੋ ਗਏਗੀ ਇਹ ਤਾਂ ਹੋ ਤੁਹਾਡੀਆਂ ਲੋਨ ਤੁਸੀਂ ਆਪ ਦੀਆ ਪਰਸਨਲ ਵੀ ਕਰ ਸਕਦੇ ਹੋ ਜੇ ਤੁਹਾਡਾ ਪੇ ਚੱਕਿਆ ਉਹ ਤੁਹਾਡਾ ਪਰਸਨਲ ਪੇਜ ਹੈ ਕਿ ਜਿੰਨੀ ਤੁਸੀਂ ਇਨਕਮ ਆਪਦੇ ਕੰਮ ਚੋਂ ਕਢਦੇ ਹੋ ਤੁਸੀਂ ਆਪ ਜੱਜ ਡਿਵੀਡੈਂਡ ਲੈਨੇ ਹੋ ਜਾਂ ਤੁਹਾਡਾ ਤੁਸੀਂ ਟੋਟਲ ਗ੍ਰੋਸ ਇਨਕਮ ਦੇ ਹਿਸਾਬ ਨਾਲ ਤੁਸੀਂ ਜਿੰਨੀ ਤੁਹਾਨੂੰ ਡਿਸੇਬਿਲਟੀ ਚਾਹੀਦੀ ਹੈ ਜੀ ਬਿਲਕੁਲ ਉਹ ਨਿਰਵਰਗ ਦੀ ਯਾਰ ਦੁਖੀ ਜਾਂਦੀ ਆ 5-6 ਮਹੀਨੇ ਲੌਂਗ ਦਾ ਤੇਲ ਇਹ ਪਾਈ ਜਾਂਦਾ ਵੀ ਕਦ ਪੰਜਾਬ ਜਾਊ ਕਦ ਕਢਾਊ ਮਹਿੰਗੀ ਬਹੁਤ ਐ ਜਿਹੜੀ ਕਵਰੇਜ ਐ ਕਈ ਵਾਰ ਮਾਲਕ ਨਹੀਂ EMPLOYER ਕਰਦੇ ਮੰਨ ਲਓ ਕੋਈ ਟ੍ਰਾਂਸਪੋਰਟ ਕੰਪਨੀ ਐ ਉਹਦੇ ਵਿੱਚ 20 ਆਨਰ ਆਪਰੇਟਰ ਨੇ ਇਹ ਕੰਪਨੀ ਕਹਿੰਦੀ ਆ ਵੀ ਨਹੀਂ ਤੁਹਾਡਾ ਤੁਸੀਂ ਸੈਲਫ ਐਮਲੌਇਡ ਆਪ ਹੀ ਕਰੋ 20 ਇਕੱਠੇ ਹੋ ਕੇ ਜੇ ਕੁਝ ਕਰਨਾ EMPLOYER ਹਿੱਸਾ ਨਾ ਪਾਵੇ ਜਾਂ ਡਰਾਈਵਰ ਨੇ ਵੀ ਉਹਨਾਂ ਦਾ ਕਿਸੇ ਇੱਕ ਪਾਸੇ ਸੂਤ ਬਹਿ ਸਕਦੀ ਹੈ ਗੱਲ ਬਿਲਕੁਲੀ ਦੇਖੋ ਜੀ ਜਦੋਂ ਤਾਂ ਹੀ ਕਹਿੰਦੇ ਆ ਵੀ ਜਦੋਂ ਆਪਣੇ ਕੋਲੇ ਜਿੰਨੇ ਪੈਸੇ ਲਾਉਣੇ ਕੋਲ ਦੇ ਕੋ ਹੱਕ ਹਕੂਕ ਬਹੁਤ ਨੇ ਆਪਸ਼ਨਲ ਵੀ ਹੈਗੀਆਂ ਨੇ ਕਿਉਂਕਿ ਹੈਗੀਆਂ ਤੁਸੀਂ ਆਪ ਦਾ ਵੀ ਜੁਦਾ ਵੀ ਤੁਸੀਂ ਗੱਲਾਂ ਬਾਤਾਂ ਸੁਣ ਕੇ ਹਟੇ ਹੋ ਇੰਸ਼ੋਰੈਂਸ ਇੰਡਸਟਰੀ ਦਾ ਬੜਾ ਤਜਰਬਾ ਉਹਨਾਂ ਜਰੂਰਤ ਹੋਵੇ ਤਾਂ ਸਲਾਹ مشورہ ਕਰਕੇ ਉਹਨਾਂ ਨੂੰ ਤੁਸੀਂ ਮਿਲ ਸਕਦੇ ਹੋ ਕਿਉਂਕਿ ਸਾਰਾ ਕੁਝ ਜੇ ਠੀਕ ਚੱਲਦਾ ਫੇਰ ਤਾਂ ਨਹੀਂ ਕੋਈ ਦੁੱਖ ਜਦ ਕਿਤੇ ਵਿਗੜੋ ਪੈਂਦੀ ਹੈ ਨਾ ਫੇਰ ਫੇਰ ਬੰਦਾ ਸਾਰਾ ਕੁਝ ਇਹ ਸੋਚਦਾ ਯਾਰ ਆਹ ਵੀ ਕਰ ਲੈਂਦੇ ਆਹ ਵੀ ਕਰ ਲੈਂਦੇ ਪਰ ਫੇ ਉਸ ਸਮੇਂ ਹੁੰਦਾ ਉਹੀ ਹੈ ਜਿਹੜਾ ਹੱਥ 'ਚ ਹੋਵੇ ਕੋਈ ਚੀਜ਼ ਮੁੜ ਕੇ ਨਹੀਂ ਗੱਲ ਬਣਦੀ ਇਸ ਤਰ੍ਹਾਂ ਦੇ ਵਾਕਏ ਹੋ ਜਾਂਦੇ ਆ ਜਦ ਫਿਰ ਮਨ ਦੇ ਵਿੱਚ ਰਹਿੰਦੀ ਹੈ ਗੱਲ ਕਿ ਕਿਸੇ ਤਰ੍ਹਾਂ ਦਾ ਵੀ ਸੇਫਟੀ ਦਾ ਜਿਹੜਾ ਕੰਸਰਨ ਹੈ ਉਹ ਬੜਾ ਜ਼ਰੂਰੀ ਹੈ ਮੈਨੂੰ ਯਾਦ ਆ ਗਿਆ ਕਿ ਇਸ ਤਰ੍ਹਾਂ ਹੀ ਕਿਸੇ ਦੋਸਤ ਦੀ ਅਚਾਨਕ ਇੱਥੇ ਮੌਤ ਹੋਈ ਇਨਸ਼ੋਰੈਂਸ ਕਰਵਾਇਆ ਹੋਇਆ ਪਰ ਚੈੱਕ ਨਹੀਂ ਭੇਜਿਆ ਪ੍ਰੀਮੀਅਮ ਦਾ ਕਿਸਮਤਾਂ ਦੇ ਸੌਦੇ ਨੇ ਨਹੀਂ ਤਾਂ ਵੀ ਡਾਲਰ ਪਾਰ ਨੂੰ ਮੁੱਕਦਾ ਇੱਥੇ ਪਰ ਉਹ ਚੀਜ਼ਾਂ ਨਾ ਬਣ ਸਕੀਆਂ ਕਿਉਂਕਿ ਉਹ ਕਹਿੰਦੇ ਕਿ ਕਿਉਂਕਿ ਉਸ ਸਮੇਂ ਇਹ ਸਾਰੀਆਂ ਜਿੰਨੀਆਂ ਵੀ ਕੰਪਨੀਆਂ ਹੈ ਇਹ ਤਾਂ ਕੋਸ਼ਿਸ਼ ਇਹਨਾਂ ਦੀ ਇਹ ਆ ਵੀ ਕਲੇਮ ਸਾਥੋਂ ਕੋਈ ਨਾ ਲਵੇ ਕਲੇਮ ਤੋਂ ਬਿਨਾ ਕਲੇਮ ਲੈ ਕੇ ਦੂਸਰੀ ਵਾਰ ਇੰਸ਼ੋਰੈਂਸ ਕਰਾਉ ਤਾਂ ਕਰਦੇ ਨੇ ਵਧਾ ਦਿੰਦੇ ਰੇਟ ਸਾਰਾ ਕੁਸ਼ ਕੁਸ਼ਲ ਮੰਗਲ ਵਾਲਾ ਸ਼ਬਦ ਹੈ ਉਹਦੇ 'ਚ ਹੀ ਹੈ ਪਰ ਫਿਰ ਵੀ ਸਿਕਿਉਰਿਟੀ ਕਰਾਉਣੀ ਪੈਂਦੀ ਆ ਉਸ ਤਰ੍ਹਾਂ ਦੀ ਜੇ ਗੱਡੀ ਚਾਹੁੰਦੇ ਨਹੀਂ ਆਪਾਂ ਲੱਗੇ ਕਿਤੇ ਪਰ ਇੰਸ਼ੋਰੈਂਸ ਕਰਾ ਕੇ ਰੱਖਣਾ ਪੈਂਦਾ ਇਹ ਗੱਲ ਖਬਰਾਂ ਦੀ ਸਾਝ ਪਵਾਮਾ ਜੀ ਦੁਨੀਆ ਦੀਆਂ ਖਬਰਾਂ ਦੇ ਵਿੱਚੋਂ ਜਸਟਨ ਟ੍ਰੂਡੋ ਅੱਜ ਐਂਗਲੀਆ ਮਾਰਕਲ ਨੂੰ ਚਾਂਸਲਰ ਨੂੰ ਮਿਲੇ ਨੇ ਬਹੁਤ ਔਖੇ ਸਮੇ ਦੇ ਵਿੱਚੋਂ ਇਸ ਸਮੇਂ ਮਾਰਕਲ ਲੰਘ ਰਹੀ ਹੈ ਕਾਰਨ ਕਿ ਜਿਹੜਾ ਫਿਊਜੀ ਕ੍ਰਾਈਸਿਸ मिलियन ਬੰਦਾ ਉਸਨੇ ਸੱਦਿਆ ਅਜ ਤੋਂ 1.5 ਸਾਲ ਪਹਿਲਾਂ ਗੱਲਬਾਤ ਸ਼ੁਰੂ ਹੋਈ ਜਦ ਤੁਰਕੀ ਵਾਲੇ ਪਾਸਿਓਂ ਬੋਟ 'ਚ ਠਿੱਲ ਕੇ ਲੋਕ ਗ੍ਰੀਸ ਸੌਣ ਲੱਗੇ ਗ੍ਰੀਸ ਤੋਂ ਤੁਰਦੇ ਤੁਰਦੇ ਉਹ ਹੰਗਰੀ ਆ ਗਏ ਲੋਕ ਹੰਗਰੀ ਬੂਡਾ ਦੇ ਰੇਲਵੇ ਸਟੇਸ਼ਨ ਤੇ ਬੈਠ ਗਏ ਉੱਥੇ ਹੀ ਦਰੀਆਂ ਵਿਛਾਲੀਆਂ ਉੱਥੇ ਸੌਂ ਗਏ ਜਿਹੜੀਆਂ ਜਰਮਨੀ ਨੂੰ ਟ੍ਰੇਨਾਂ ਆਉਂਦੀਆਂ ਸੀ ਉਹ ਬੰਦ ਉਹਨਾਂ ਨੇ ਕਰਤੀਆਂ ਤੇ ਫਿਰ ਉਹ ਲੋਕ ਤੁਰ ਪੇ ਰੁਪੇਤੇ ਆਸਟਰੀਆ ਪਹੁੰਚ ਗਏ ਆਸਟਰੀਆ ਤੋਂ ਉਹ ਬਾਰਡਰ ਟੱਪ ਕੇ ਗੱਲ ਕੀ ਹੋਈ ਐ ਇੰਗਲੀਆ ਮਾਰਕਲ ਇੱਕ ਟੌਨ ਹਾਲ ਮੀਟਿੰਗ ਦੇ ਵਿੱਚ ਸੀ ਉੱਥੇ ਫਲਸਤੀਨੀ ਇੱਕ ਲੜਕੀ ਕਹਿੰਦੀ ਵੀ ਮੇਰੇ ਮਾਪੇ ਜਿਹੜੇ ਨੇ ਉਹ ਮੈਥੇ ਕੱਲੀ ਪਤਾ ਨਹੀਂ ਸਮ ਉਸ ਨੂੰ ਕੌਣ ਉੱਥੇ ਬੱਚੀ ਨੂੰ ਲੈ ਕੇ ਆਇਆ ਇੰਗਲੀਆ ਮਾਰਕਲ ਉਸ ਨਾਲ ਗੱਲ ਕਰਦੀ ਕਹਿੰਦੀ ਕਹਿੰਦੀ ਵੀ ਨੋ ਸਾਡੇ ਕੋਲ ਇਹ ਜੀ ਕੋਈ ਕਿਸੇ ਕਿਸਮ ਦੀ ਸਾਡੇ ਕੋਲ ਰਿਫਿਊਜੀ ਫਲਸਤੀਨੀ ਲੋਕਾਂ ਲਈ ਸੱਦਣ ਲਈ ਇੱਥੇ ਨਹੀਂ ਜਾਂਦਾ ਤੁਸੀਂ ਲਬਨਾਨ ਚ ਰਹੇ ਨੇ ਜਾਂ ਜਾਰਡਨ ਚ ਸਾਡੇ ਕੋਲ ਐਸਾ ਜਿਹਾ ਕੋਈ ਹੀਲਾ ਉਹ ਕਹਿੰਦੀ ਮੇਰੇ ਪੇਰੈਂਟਸ ਫਿਰ ਕਦੇ ਵੀ ਨਹੀਂ ਆਉਣਗੇ ਉਹ ਮਾਰਕਲ ਨੇ ਇਨਸਾਨ ਜਿਹੜੀ ਗੱਲ ਅਸਲ ਕਿੱਥੋਂ ਚੱਲਦੀ ਹੈ ਚੈਸਲ ਮਾਰਕਲ ਨੇ ਉਸ ਬੱਚੀ ਨੂੰ ਪਿਆਰ ਕੀਤਾ ਤੇ ਉਹ ਕਹਿੰਦੀ ਚੰਗਾ ਮੈਂ ਹੁਣ ਰਿਫਿਊਜੀਆਂ ਬਾਰੇ ਸੋਚਾਂ ਉਸ ਗੱਲ ਤੋਂ ਚੱਲਦੇ ਹੋਏ ਮਿਲੀਅਨ ਲੋਕ ਉਸ ਜਰਮਨੀ ਚ ਭਾਰਤ ਅਤੇ ਸਿਰਿਆਨ ਲੋਕ ਆ ਗਏ ਤੇ ਉਹਦਾ ਵਿਰੋਧ ਹੋਣ ਲੱਗ ਗਿਆ ਤੇ ਅਲਟਰਨੇਟਿਵ ਫਰ ਜਰਮਨੀ ਕੰਪਨੀ ਇੱਕ ਪਾਰਟੀ ਆ ਗਈ ਇਮੀਗ੍ਰੈਂਟਸ ਦੇ ਖਿਲਾਫ ਕਿਉਂਕਿ ਇਹੀ ਜਰਮਨੀ ਆ ਕਦੇ ਉਹ ਯਹੂਦੀਆਂ ਦੇ ਖਿਲਾਫ ਆ ਜੋ ਮੁਸਲਮ ਦੇ ਖਿਲਾਫ ਆ ਪੈਟ੍ਰਿਓਟਿਜ਼ਮ ਆ ਉਹ ਦੇਸ਼ ਨੂੰ ਆਪਣੇ ਲੋਕ ਪਿਆਰ ਕਰਦੇ ਆ ਬਾਹਰ ਨੂੰ ਨਹੀਂ ਚੱਲਦੇ ਹੋ ਦੇਖ ਲਓ ਤੁਸੀਂ ਸੋਚ ਇੱਕ ਸਮੇਂ ਯਹੂਦੀ ਉੱਥੋਂ ਕੱਢੇ ਮਾਰਿਆ 60 ਲੱਖ ਯੂ ਯੂਦਿ ਲੋਕ ਅੱਜ ਬਹੁਤਾਂ ਚ ਲੋਕ ਜਰਮਨੀ ਦੇ ਰਿਫਿਊਜੀਆ ਦੇ ਖਿਲਾਫ ਹੋ ਗਏ ਹੁਣ ਗੱਲ ਜਦ ਉਹਨਾਂ ਦੇ ਨਾਲ ਦੋ ਇਸਤਰੀਆਂ ਨੇ ਜਿਹੜੀਆਂ ਇਹ ਜਿਹੜੀ ਪਾਰਟੀ ਉਹਨਾਂ ਨੇ ਸੰਗਠਨ ਕੀਤਾ ਅਲਟਰਨੇਟਿਵ ਫਾਰ ਜਰਮਨੀ ਉਹਦੇ ਵਿੱਚ ਉਹਨਾਂ ਨੂੰ ਪੱਤਰਕਾਰ ਪੁੱਛ ਰਿਹਾ ਵੀ ਤੁਸੀਂ ਮੁਸਲਮ ਧਰਮ ਦੇ ਖਿਲਾਫ ਹੋ ਕਹਿੰਦਾਓ ਅਸੀਂ ਤਾਂ ਬਾਹਰਲੇ ਬੰਦਿਆਂ ਦੇ ਖਿਲਾਫ ਧਰਮ ਦਾ ਇੱਥੇ ਮਤਲਬ ਕੋਈ ਨਹੀਂ ਸਾਡੇ ਕੋਲ ਆਪਣੇ ਖਾਣ ਲਈ ਰੋਟੀ ਨਹੀਂ ਕਿਉਂਕਿ ਜਰਮਨੀ ਦੀ ਆਰਥਿਕਤਾ ਵਧੀਆ ਨਹੀਂ ਐਕਸਪੋਨ ਲੱਗੇ ਹੈਨਓਵਰ ਦੇ ਵਿੱਚ ਕਦੇ ਕੁਝ ਲੱਗਿਆ ਪਰ ਹਲਾਰਾ ਖਾਧਾ ਨਾ ਆਰਥਿਕ ਤਨ ਬਹੁਤ ਨੇੜਿਓਂ ਵੇਖਿਆ ਆਪਣੇ ਬਹੁਤ ਪਰਿਵਾਰ ਉੱਥੇ ਰਹਿੰਦੇ ਆ ਨੇੜੇ ਤੇ ਆਰਥਿਕ ਤਕ ਤਰਾਬ ਹੈ ਹੁਣ ਮਿਲੀਅਨ ਲੋਕ ਆ ਗਏ ਈਸਟਰਨ ਪਾਰਟ 'ਚ ਰਹਿ ਗਏ ਇਹ ਈਸਟਰਨ ਜਰਮਨੀ ਦੇ ਵਾਲੇ ਪਾਸੇ ਤੇ ਹੁਣ ਲੋਕ ਦੁਖੀ ਹੋਗੇ ਔਰ ਅਗਲੀਆਂ ਇਲੈਕਸ਼ਨਾਂ ਜਿਹੜੀਆਂ ਹੋ ਰਹੀਆਂ ਉਹਦੇ ਵਿੱਚ ਚਾਸਟਰ ਮਾਰਕਲ ਜਿੱਤਦੀ ਨਹੀਂ ਲੱਗਦਾ ਤੁਸੀਂ ਇਹ ਗੱਲ ਮੰਨ ਲਿਓ ਇਸ ਟੋਨ ਤੇ 19 ਦੀਆਂ ਇਲੈਕਸ਼ਨਾਂ ਜਿਹੜੀਆਂ ਤੁਹਾਡੇ ਦੇਸ਼ ਚ ਹੋਣੀਆਂ ਯਾਦ ਰੱਖਿਓ ਇਹੀ ਚੀਜ਼ ਦੇ ਨਾਂ ਤੇ ਐਮਪੀ ਮਿਸਟਰ ਸਾਗਾ ਦੀ ਜਿਸ ਨੇ 103 ਜਿਹੜਾ ਪ੍ਰਾਈਵੇਟ ਬਿੱਲ ਲੈ ਕੇ ਆਉਂਦਾ ਹੈ ਸਲਾਬੋਫੋਬੀਆ ਦੇ ਖਿਲਾਫ ਉਹਨੂੰ 50000 ਦੇ ਕਰੀਬ ਸਨੇਹੇ ਗਏ ਨੇ ਪਿਛਲੇ 3 ਦਿਨਾਂ ਚ ਤੈਨੂੰ ਮਾਰ ਦੇਣਾ ਤੂੰ ਅੱਤਵਾਦੀ ਆ ਤੂੰ ਜੇ ਤੇ ਅੱਗ ਹਲਾਇਆ ਤੇ ਅਹਿਜੀ ਕਦੇ ਭਾਵਨਾ ਇੱਥੇ ਨਹੀਂ ਸੀ ਇਹ ਜਿਹੜੀ ਵੇਵ ਇੱਕ ਨਵੀਂ ਚੱਲੀ ਆ ਇਮੀਗ੍ਰੈਂਟ ਦੇ ਖਿਲਾਫ ਰਿਫਿਊਜੀਆ ਦੇ ਖਿਲਾਫ ਇਹ ਵੇਵ ਜਿਹੜੀ 1 ਬਾਈ 1 ਜਿਹੜੀ ਆਊਗੀ ਛਟ ਗਿਣਤੀਆਂ ਇਸ ਸ਼ਿਕਾਰ ਹੋਣ ਪਰ ਦੁਨੀਆ ਦੇ ਵਿੱਚ ਹੋਏ ਵੱਡੇ ਹਮਲੇ ਜਿਹੜੇ ਨੇ ਪਿਛਲੇ ਦਸਾਂ ਸਾਲਾਂ ਚ ਦਹਾਕੇ ਚ ਉਹ ਜਿਹੜੇ ਅੱਤਵਾਦੀ ਸੰਗਠਨ ਮੁਸਲਮ ਧਰਮ ਦੇ ਵਿੱਚੋਂ ਨੇ ਮੈਂ ਮੁਸਲਮ ਅੱਤਵਾਦੀ ਨਹੀਂ ਇਹਨੂੰ ਕਹਿ ਸਕਦਾ ਜਿਵੇਂ ਸਿੱਖ ਅੱਤਵਾਦੀ ਮੁਸਲਮ ਧਰਮੋਂ ਕਹਿੰਦੇ ਨੇ ਸਾਡਾ ਪਰ ਅੱਤਵਾਦੀ ਸੰਗਠਨ ਨੇ ਉਹਨਾਂ ਦੇ ਕਰਨ ਕਰਕੇ ਦੁਨੀਆ ਇੱਕ ਪਾਸੇ ਖੜ ਗਈ ਵੈਸਟਰਨ ਵਰਲਡ ਇੱਕ ਪਾਸੇ ਖੜ ਗਿਆ ਅੰਦਰੋਂ ਇਹ ਗੱਲਾਂ ਹੋ ਗਈਆਂ ਫਰਾਂਸ ਹਲਾਤਾ ਇਟਲੀ ਹਲਾਤੀ ਉਹਦੇ ਬਾਅਦ ਬੈਲਜੀਅਮ ਹਲਾਤਾ ਤੇ ਜਰਮਨੀ 'ਚ ਹਮਲੇ ਹੋ ਗਏ ਤੇ ਇੱਥੇ ਹੋ ਗਏ ਉਸ ਕੱਲ੍ਹ ਨੇ ਇੱਕ ਆਮ ਰਾਏ ਬਣਾਈ ਜੀਨੂੰ ਇਹ ਲੋਕ ਬਾਹਰ ਨਹੀਂ ਕਰ ਰਹੇ ਬਹੁਤ ਵੱਡੀ ਵੇਵ ਹੈ ਜਿਹੜੀ ਉਹ ਇੰਗਲੈਂਡ ਦੇ ਵਿੱਚ ਚੱਲ ਰਹੀ ਹੈ। ਇਹੀ ਕਿਸਮ ਦੀ ਲੋਕ ਸੁਰੱਖਿਆ ਪਾਲਦੇ ਨੇ। ਫਰਾਂਸ ਕਰਫਿਊ ਵਰਗੀ ਸਥਿਤੀ ਦੇ ਵਿੱਚੋਂ ਲੰਘ ਰਿਹਾ ਲੋਕ ਇਹ ਇਹ ਟੂ ਨਹੀਂ ਹੈ। ਇਤਾਂ ਖੁੱਲੇ ਕੈਫੇਟੇਰੀਆ 'ਚ ਬਾਹਰਲੇ ਬੰਨੇ ਸ਼ੈਂਪਨ ਪੀ ਕੇ ਤੇ ਬਹਿਣ ਵਾਲੇ ਨਾਲ ਖੁੱਲੀਆਂ ਖੇਡਾਂ ਕਰਨ ਵਾਲੇ ਲੋਕ ਅੱਜ ਆਪਣੇ ਆਪ ਨੂੰ ਕਰਫਿਊ ਚ ਦੇ। ਫਰਾਂਸ ਹਲੇ ਵੀ ਕਰਫਿਊ ਦੀ ਸਥਿਤੀ ਦੇ ਵਿੱਚ ਅਜਾਦੂ ਦੇ ਤੇ ਹਮਲੇ ਹੋਏ। ਜਿੱਥੇ ਬੈਠ ਕੇ ਰੋਟੀ ਪਾਣੀ ਖਾਂਦੇ ਸੀ ਉਹ ਰੋਟੀ ਥਾਲੀਆਂ ਦੇ ਵਜ੍ਹਾ ਛੇਦ ਕਰਤੇ ਫਰਾਂਸ ਦੇ ਵਿੱਚੇ ਜੰਮੇ ਪਾਲੇ ਉੱਥੇ ਹੀ ਆ ਗਏ ਉੱਥੇ ਰਿਫਿਊਜੀ ਬਣ ਕੇ ਪੱਕੇ ਹੋਏ ਲੋਕਾਂ ਦੇ ਏਕੇ 47ਾਂ ਤੇ ਬੰਬ ਚੱਕ ਕੇ ਹਾਲਾਤ ਆ ਸਾਰਾ ਫਰਾਂਸ ਕੋ ਦਿਨ 200 ਜਦ ਬੰਦਾ ਮਾਰਿਆ ਕਾਨਸਰਟ 'ਚ ਬੈਠੇ ਸੌਕ ਸਟੇਡੀਅਮ 'ਚ ਬਿਠੇ ਉਹ ਲੋਕਾਂ ਦਾ ਜੀਣਾ ਮਹਾਲ ਹੋ ਗਿਆ ਗਾਰਬੇਜ ਟਰੱਕਾਂ ਨਾਈਟ ਦੇ ਵਿੱਚ ਸਿਰ ਤੇ ਚੜਤਾ ਇਸ ਤਰ੍ਹਾਂ ਹੀ ਜਿਹੜਾ ਬਰਲਿਨ ਦੇ ਵਿੱਚ ਹੋਇਆ ਇਹ ਲੋਕ ਦੁਖੀ ਹੋ ਹੁਣ ਉਹ ਸਰਕਾਰਾਂ ਬਦਲਣਗੇ ਕੰਜ਼ਰਵੇਟਿਵ ਲੋਕਾਂ ਦੇ ਰਵਿੰਗ ਲੋਕ ਹੋਗੇ ਉਹਨਾਂ ਨੇ ਖਿੱਚ ਦੇਣਾ ਕੱਬ ਨਹੀਂ ਬੰਨ੍ਹ ਦੇਣਾ ਉਹਦਾ ਹੁਣ ਇਉਂ ਤਾਂ ਹੈ ਨਹੀਂ ਵੀ 1 ਮਿਲੀਅਨ ਬੰਦਾ ਜਿਹੜਾ 10 ਲੱਖ ਆ ਗਿਆ ਉਹ ਆ ਕੇ ਆ ਕੇ ਉਹ ਰੱਖਣਾ ਬਹੁਤ ਆ ਮੈਂ ਰਫਿਊਜੀ ਬੰਦੇ ਨੂੰ ਸਾਂਭਣਾ ਰੱਖਣਾ ਉਹਦੀ ਸੇਵਾ ਰੋਟੀ ਪਾਣੀ ਉਹਦਾ ਹੀਲਾ ਬਹੁਤ ਔਖਾ ਆਰਥਿਕਤਾ ਤੇ ਗੱਲ ਸਾਰਾ ਕੁਝ ਚੱਲੀ ਜਾਂਦਾ ਜਦ ਜੇਬ 'ਚ ਪੈਸੇ ਹੋਣ ਜਾਂ ਜੇਬ 'ਚ ਪੈਸੇ ਹੈ ਨਹੀਂ ਫਿਰ ਨਹੀਂ ਖੁਆਇਆ ਜਾਂਦਾ ਕਿਸੇ ਆਪਣੇ ਕੋਲ ਤਾਂ ਆਇਆ ਹੀ 50-60 ਹਜ਼ਾਰ ਹੈ। ਪਰ ਇਸਲਾਮਾ ਉਹ ਵੀ ਆ ਤੇ ਜਿਹੜਾ ਉਹਨੇ ਪ੍ਰਾਈਵੇਟ ਬਿੱਲ ਇਰਕਾ ਨੇ ਐਮਪੀ ਨੇ ਖਬਰਾਂ 50 ਹਜ਼ਾਰ ਉਹਨੂੰ ਮੈਸੇਜ ਆਇਆ 50 ਹਜ਼ਾਰ ਮੈਸੇਜ। ਉਹਨੂੰ ਚ ਪਤਾ ਹੀ ਉਹਨੂੰ ਕੀ ਕਿਹਾ ਤੈਨੂੰ ਚੇਹੇ ਇਨਸਾਨਾਂ ਦੇਣਾ ਚਾਹੀਦਾ ਤੂੰ ਅੱਤਵਾਦੀਆਂ ਦੀ ਸਪੋਰਟਰ ਆਂ ਤੂੰ ਜੇ ਆ ਤੂੰ ਤੂੰ ਤਾਂ ਦੇਖਾਂਗੇ ਜੇ ਹੋਵੇਗਾ ਉਹ ਹੋ ਗਿਆ। ਅੱਜ ਕੱਲ ਪਿੱਠ ਪਿੱਠ ਕੇ ਦੱਸਿਆ ਮੈਨੂੰ ਨਹੀਂ ਸੀ ਪਤਾ ਇਨੀ ਤਪਸ਼ੋ। ਕਹਿੰਦੀ ਇਸਲਾਮੋਫੋਬੀਆ ਨਹੀਂ ਕਿਸੇ ਦੇ ਵੀ ਦੇ ਖਿਲਾਫ ਹੇਟ ਕਰਾਇਮ ਦੇ ਥੱਲੇ ਉਹ ਕਹਿੰਦੀ ਇਹ ਬਿਲ ਬਣਨਾ ਚਾਹੀਦਾ ਧਰਮ ਦਾ ਰੌਲਾ ਲੋਕਾਂ ਦਾ ਰੌਲਾ ਪਹਿਲਾਂ ਜਰਮਨੀ ਦੇ ਵਿੱਚ ਪੱਤਰਕਾਰ ਜਰਸੀ ਵੀ ਸੀ ਦਾ ਇੰਟਰਵਿਊ ਕਰ ਰਿਹਾ ਦੋ ਨਿਸਤਰੀਆਂ ਨੂੰ ਫਿਰ ਇਹ ਸ਼ਾਇਦ ਉਹ ਜਿਹੜੀ ਅੱਗੇ ਐ ਸਭ ਤੋਂ ਕਹਿੰਦੀ ਨਾ ਮੈਂ ਨਹੀਂ ਧਰਮ ਦੇ ਖਿਲਾਫ ਉਹ ਕਹਿੰਦਾ ਤੂੰ ਮੁਸਲਮਾਨ ਦੇ ਖਿਲਾਫ ਇਹਨਾਂ ਕੀ ਦੇ ਖਲਾਮ ਕਰਨੀ ਲੋਕਾਂ ਦੇ ਲੋਕ 1 ਮਿਲੀਅਨ ਆ ਗਿਆ ਸਾਡੇ ਕੋਲ ਰੋਟੀ ਆਪ ਖਾਣ ਨੂੰ ਹੀ ਸਾਡੇ ਬੰਦੇ ਭੁੱਖੇ ਮਰਦੇ ਆ ਅਸੀਂ ਕੀ ਕਰੀ ਸ਼ਿਫਟ ਵੇਖੋ ਅੱਜ ਤੋਂ 70 75 ਸਾਲ ਪਹਿਲਾਂ ਵਰਲਡ ਵਾਰ ਦੂਜੀ ਦੇ ਵਿੱਚ ਜਹੂਦੀ 65 ਲੱਖ ਮਾਰਤਾ ਹਿਟਲਰ ਨੇ ਉਸ ਸਮੇਂ ਜਰਮਨੀ ਸੀ ਅੱਜ ਉਹ ਬਸੰਤਰਨ ਦੇ ਮਤਲਬ ਆਊਟਸਾਈਡਰ ਮੀਨਸ ਆਊਟਸਾਈਡਰ ਆ ਉਹਨਾਂ ਨੂੰ ਚਾਹੇ ਦੂਜੀ ਪੀੜ੍ਹੀ ਪਾਸਪੋਰਟ ਲੈ ਲਓ ਜੇ ਤੁਸੀਂ ਮੈਂ ਕਹਿੰਦੇ ਆ visible minority ਦਾੜੀ ਕੇਸ ਰੱਖੇ ਸਾਡਾ ਭੂਰੀ ਚੰਬੜੀਆ ਚਾਹੇ ਸਾਡੇ ਜਵਾਕ ਤੀਜੀ ਜਨਰੇਸ਼ਨ ਚੋਂ ਪਾਸਪੋਰਟ ਲੈ ਕੇ ਇੱਥੇ ਜੰਮਣ ਅਸੀਂ ਪਾਸਪੋਰਟ ਲੈ ਲਿਆ ਸਟਿਲ ਆਊਟਸਾਈਡਰੋਂ ਤੁਸੀਂ ਇੱਕ ਛੱਡ ਦਿਓ ਗੱਲ ਮਨ ਦੀ ਅਮੀਨ 100 ਸਾਲ ਰਹਿੰਦੇ ਲੋਕ ਕੱਢੇ ਮੈਂ ਇਹ ਨਹੀਂ ਕਹਦਾ ਤੁਹਾਨੂੰ ਕੱਢ ਦੂ ਇੱਥੋਂ ਪਰ ਮੈਂ ਦੱਸਦਾ ਇੱਕ ਇਨਸਾਨ ਦੇ ਅੰਦਰ ਚੀਜ਼ਾਂ ਵੱਸਦੀਆਂ ਪੰਜਾਬ ਦੇ ਕਿਸੇ ਪਿੰਡ ਚ ਵੋਟ ਬਣਾ ਕੇ ਬਿਹਾਰ ਦਾ ਆ ਕੇ ਪ੍ਰਵਾਸੀ ਰਹਿ ਰਿਹਾ ਉਹਦੇ ਉੱਥੇ ਬੱਚੇ ਸਾਡੇ ਸਕੂਲਾਂ ਦੇ ਬੱਚਿਆਂ ਨਾਲ ਪੜ ਰਹੇ ਨੇ ਸਟਿਲ ਉਹ ਗੋਪਾਲ ਭਈਆ ਹੀ ਹੈ ਪਿੰਡ ਜੜੂ ਉਹ ਕਹਿੰਦਾ ਸੂਚਾ ਕੋ ਸਮਾਨ ਪਹਿਲਾਂ ਅਸੀਂ ਤਾਂ ਫਿਰ ਚਾਚੇ ਦੇ ਪੋਤਾਂ ਤ ਬਾਹਰ ਲਾ ਤੋਰ ਇੱਕ ਇਹ ਗੱਲ ਹੁੰਦੀ ਹੈ ਔਰ ਕੁਦਰਤੀ ਵਰਤਾਰ ਹੈ ਕੁਦਰਤੀ ਵਰਤਾਰ ਹੈ ਕੁਦਰਤੀ ਕੋਈ ਜਾਣ ਕੇ ਨਹੀਂ ਕਰਦਾ ਜਾਨਵਰ ਇੱਕ ਖਿੱਤੇ ਦੇ ਵਿੱਚ ਪਾਣੀ ਸ਼ੇਰ ਹੈ ਜਿਹੜਾ ਉਹ ਆਪਣੇ ਪ੍ਰਾਈਡ ਦੇ ਨਾਲ ਦੋ ਮੇਲ ਨੇ 6 ਚ ਸ਼ੇਰਨੀਆਂ ਨੇ ਗਾਹ ਉਹਨਾਂ ਦੇ ਬਾਲ ਬੱਚਾ 50 ਤੋਂ 100 ਕਿਲੋਮੀਟਰ ਸਕਰ ਕਿਲੋਮੀਟਰ ਦੇ ਏਰੀਆ ਚ ਰਹਿੰਦਾ ਉੱਚ ਬਾਹਰਲੇ ਸ਼ੇਰ ਨੂੰ ਉਹ ਸ਼ੇਰਨੀ ਨੂੰ ਬੰਨ ਨਹੀਂ ਦਿੰਦਾ ਸਾਰਾ ਮਹੀਨਾ ਪਟ੍ਰੋਲਿੰਗ ਹੀ ਕਰਦਾ ਰਹਿੰਦਾ 100 ਕਿਲੋਮੀਟਰ ਦੀ ਬਸ ਸਿਰਫ ਸਿਰਫ ਕੋਈ ਕੋਈ ਬਾਹਰਲਾ ਕੋਈ ਰੂਡ ਅੰਦਰ ਨਾ ਵਜਿਆ ਇਹਦੇ ਸਾਡੇ ਇਹਦੇ ਵਿੱਚਲੇ ਜਾਨਵਰ ਸੀ ਮਾਰਕਟ ਆਣਿਆ ਇੱਥੇ ਪਾਣੀ ਸਾਡਾ ਬਾਹਰਲਾ ਜਾਨਵਰ ਦੇ ਸਿਰ ਦੇ ਵਿੱਚ ਇਹ ਗੱਲ ਹੈ ਸੋ ਐਂਗਲੀਆ ਮਾਰਕਲ ਨੂੰ ਬਹੁਤ ਵੱਡੀ ਮੁਸ਼ਕਲ ਹੈ ਔਰ ਉਹ ਬਹੁਤ ਦੁਖੀ ਹੈ ਕਿਤੀ ਤਾ ਇਨਸਾਨੀਅਤ ਲਈ ਉਹਨੇ ਗੱਲ ਪਰ ਲੋਕ ਖਿਲਾਫ ਹੋ ਗਏ ਉਹ ਕਹਿੰਦੀ ਵੀ ਜਰਮਨੀ ਦੇ ਤੌਰ ਤੇ ਵੀ ਦੇ ਤੌਰ ਤੇ ਕਹਿੰਦੀ ਅਸੀਂ ਵੀ ਐਕਸੈਪਟ ਉਹ ਦੂਜੇ ਹੁਣ ਵਿਰੋਧੀ ਤਰ੍ਹਾਂ ਕਹਿੰਦੇ ਕਹਿੰਦੇ ਵੀ ਕਿਵੇਂ ਆਈ ਤੂੰ ਕੀਤੀ ਹੈ ਤੈਂ ਆਪਣੇ ਤੌਰ ਤੇ ਕੀਤੀ ਅਸੀਂ ਤੇਰਾ ਹਿੱਸਾ ਨਹੀਂ ਸਾਨੂੰ ਨਹੀਂ ਤੂੰ ਪੁੱਛਿਆ ਔਰ ਇਹ ਜਿਹੜੀ ਚੀਜ਼ ਜਿੱਥੇ ਹੁਣ ਕੰਜ਼ਰਵੇਟਿਵ ਦੇ ਕਹਲੇ ਲੀ ਚਾਰ ਕੈਨੇਡੀਅਨ ਵੈਲਿਊਜ਼ ਦੀ ਗੱਲ ਕਰਦੇ ਅੰਤਰੀਵ ਆ ਹੈ ਬਈ ਮੈਂ ਐਜ਼ ਅ ਕੈਨੇਡੀਅਨ ਇਹ ਦੇਸ਼ ਨੂੰ ਸੁਰੱਖਿਅਤ ਰੱਖਣੀ ਚਾਹੁੰਦੀ ਆ ਮੈਂ ਨਹੀਂ ਬਾਹਰਲੇ ਬੰਦੇ ਬਣਨੇ ਚਾਹੁੰਦੇ ਚਾਹੁੰਦੀ ਕਿਉਂਕਿ ਆਉਣ ਵਾਲੇ ਦਸਾਂ 20ਾਂ 30ਾਂ ਸਾਲਾਂ ਵਿੱਚ ਦੁਨੀਆ ਦੇ ਵਿੱਚ ਮੈਸ ਮਾਈਗ੍ਰੇਸ਼ਨ ਹੋਣੀ ਆ ਭੁੱਖੇ ਮਰਦੇ ਲੋਕਾਂ ਨੇ ਆਪਣੇ ਆਪ ਨੂੰ ਠੱਲਣਾ ਵੈਸਟ ਵਾਲੇ ਪਾਸੇ ਨੂੰ ਤੁਹਾਡੇ ਸਾਹਮਣੇ ਆ ਮੈਂ ਅੱਜ ਤੋਂ 20 ਸਾਲ ਪਹਿਲਾਂ ਅਫਰੀਕਨ ਲੋਕ ਕਦੇ ਸੁਣੇ ਸੀ ਭੂਮਤ ਸਾਗਰ ਦੇ ਵਿੱਚ ਡੁੱਬਦੇ ਨਹੀਂ ਸੁਣੇ ਸੀ ਗਦਾਫੀ ਹਾਲਾਤਾਂ ਤੇ ਉਹ ਲੋਕ ਤੁਰਪੇ ਸਭ ਦੇ ਵਿੱਚੋਂ ਤੁਰ ਕੇ ਆ ਕੇ ਉਹ ਆ ਕੇ ਲਿਬੀਆ ਦੇ ਤੱਕ ਤੇ ਚੜ ਕੇ ਆ ਕੇ ਪਾਣੀਆਂ 'ਚ ਉਹ ਡੁੱਬ ਰਹੇ ਨੇ ਸਿਜ਼ਲੀ ਦੀ ਬੰਦਰਗਾਹ ਨੂੰ ਕੋਈ ਜਾ ਰਿਹਾ ਕੋ ਕਿਤੇ ਕੋਈ ਸੌਰੀ ਟਾਪੂ ਤੇ ਕੋਈ ਫੜ ਰਿਹਾ ਉਧਰ ਤੁਰਕੀ ਵਾਲੇ ਪਾਸਿਓਂ ਬੰਦੇ ਵੜ ਕੇ ਗ੍ਰੀਸ ਨੂੰ ਆ ਗਏ ਗ੍ਰੀਸ ਤੋਂ ਈਸਟਰਨ ਯੂਰਪ ਵੱਲ ਤੁਰ ਕੇ ਹੀ ਹੰਗਰੀ ਆ ਬੜੇ ਉਹ ਠੰਡ ਦੇ ਵਿੱਚ ਬੁਰੇ ਹਾਲ ਬੁਦਾਪੇਸਟ ਉਹਨਾਂ ਨੇ ਡੇਰਾ ਲਾ ਲਿਆ ਲੋਕ ਚੰਗੇ ਸੀ ਜਦੋਂ ਗਰਮੀ 'ਚ ਸੌਰੀ ਗਰਮੀ ਸੀ ਜਦੋਂ ਗਰਮੀ ਤੁਰਨ ਲੱਗੇ ਹੰਗਰੀ ਦੀ ਦੇਸ਼ ਦੀ ਜਿਹੜੇ ਸਰਕਾਰ ਆ ਪੁਲਿਸ ਆ ਉਹਨਾਂ ਨੂੰ ਬੰਨ ਰਹੀ ਆ ਉਹ ਤੁਰੇ ਜਾ ਰਿਹਾ ਸਟੋਰੀਆਂ ਲੋਕ ਹੰਗੇਰੀਅਨ ਲੋਕ ਤੁਰ ਕੇ ਪਾ ਨਹੀਂ ਗਿਆ ਉਹਨਾਂ ਨੂੰ ਦੇ ਰਹੇ ਕਿਉਂਕਿ ਸਾਨੀਅਤ ਮੱਦਾ ਹੀ ਆ ਇਨਸਾਨ ਦੇ ਸਾਹਮਣੇ ਇਨਸਾਨ ਤਰਫ ਕਦੇ ਨਹੀਂ ਦੇਖ ਸਕਦਾ ਪਰ ਉਹ ਗਲੇ ਵੀ ਆਪਣੀਆਂ ਜ਼ਰੂਰਤਾਂ ਜਦ ਤੱਕ ਵੇਛ ਦੀਆਂ ਪੂਰੀਆਂ ਨਹੀਂ ਹੁੰਦੀਆਂ ਉਹ ਬਾਰਲੇ ਬੰਦੇ ਜਲ ਨਹੀਂ ਔਰ ਸਾਰਾ ਵਰਤਾਰਾ ਆਰਦ ਵਾਲੇ ਜਸਟਨ ਰੂਡੋ ਵੇਖ ਰਿਹਾ ਉਹ ਹਰ ਵੀ ਅੱਗ ਨਾਲ ਖੇਲ ਰਿਹਾ ਰਾਜ ਸੀ ਜੀਵਨ ਦਾਤੇ ਲੱਗ ਜਾਣਾ ਦਾਤੇ ਤੁਹਾਡੇ ਸਾਹਮਣੇ ਆ ਵੇਖਿਓ 17 ਤੇ 18 ਲੰਘਣ ਦੇ 19 ਦੀਆਂ ਇਲੈਕਸ਼ਨਾਂ ਚ ਬਣਦੀ ਕਹਾਣੀ ਕੀ ਜੇ ਰਫਾਰਮ ਨਾ ਕੀਤਾ ਜੇ ਸਿਸਟਮ ਨਾ ਚੇਂਜ ਕੀਤਾ ਵੈਸੇ ਉਹ ਵੇਖ ਰਿਹਾ ਸਰਪੰਚ ਨੂੰ ਮਿਲਣ ਤੋਂ ਬਾਅਦ ਐਂਗਲਿਆਨਾਂ ਨੂੰ ਮਿਲ ਕੇ ਫਰਾਂਸ 'ਚ ਉਹ ਦੇਖ ਰਿਹਾ ਵੀ ਬਣ ਕੀ ਰਿਹਾ ਕਿਉਂਕਿ ਕੱਲਾ ਜਿਉਂ ਦਰਵਾਜ਼ੇ ਖੋਲ ਕੇ ਰੱਖਦਾ ਨਾਲੇ ਇਹਦੇ 'ਚ ਹੋਰ ਦੱਸਾਂ ਕਿ ਅਮੀਰ ਲੋਕ ਜਿਨ੍ਹਾਂ ਕੋਲ ਪੈਸਾ ਉਸ ਸਿਸਟਮ ਨੂੰ ਵਰਤ ਕੇ ਇੱਥੇ ਪਹੁੰਚ ਰਹੇ ਨੇ ਜਿਹੜੇ ਗਰੀਬ ਉਜੜ ਰਹੇ ਹੋਏ ਨੇ ਉਹ ਉੱਥੇ ਹੀ ਬੈਠੇ ਤੁਰਕੀ ਲੈਬਨਾਨ ਦੇ ਵਿੱਚ ਉਹਨਾਂ ਨੇ ਉੱਥੇ ਹੀ ਬੈਠੇ ਰਹਿ ਜਾਣਾ ਹੁਣ ਵੀ 엘ੀਟ ਕਲਾਸ ਜਿਹੜੀ ਸੀਰੀਅਨ ਦੀ ਆ ਉਹੀ ਆ ਰਹੇ ਨੇ ਲੋਕ ਹੁਣ ਸੀਰੀਅਨ ਦੇ ਦੀ ਉੱਥੇ ਕੱਲ ਇੰਟਰਵਿਊ ਸੀ ਉਹ ਕਹਿੰਦਾ ਮੇਰਾ ਕੀ ਕਸੂਰ ਹੈ ਮੈਂ ਤਾਂ ਇੱਕ ਇਨਸਾਨ ਹੈ ਮੈਂ ਮੇਰਾ ਧਰਮ ਮੁਸਲਮ ਹੈ ਮੈਂ ਇੱਥੇ ਆ ਗਿਆ ਜਿਵੇਂ ਜਰਮਨੀ ਤੁਸੀਂ ਕ੍ਰਿਸਚੀਅਨ ਹੋ ਇਸ ਤਰ੍ਹਾਂ ਮੈਂ ਮੈਂ ਮੇਰਾ ਗੱਲ ਉਹਦੀ ਠੀਕ ਹੈ ਪਰ ਮਾਨਸਿਕਤਾ ਨਹੀਂ ਐਕਸੈਪਟ ਕਰਦੀ एयर इंडिया ਬੰਬਿੰਗ ਹੋਈ ਬੰਦੇ ਫੜੇ ਗਏ ਟੈਕਸੀ ਅਸੀਂ ਚਲਾਉਂਦੇ ਸੀ ਹਰ ਦੂਜਾ ਗੈਸ ਸਾਨੂੰ 에어ਪੋਰਟ ਤੇ ਪੁੱਛਦਾ ਸੀ ਕੀ ਬਣਿਆ ਤੁਹਾਡੀ 에어 ਇੰਡੀਆ ਦਾ ਉਹ ਬੰਦੇ ਕੌਣ ਨੇ ਜਿਹੜੇ ਦੋ ਫੜੇ ਨੇ ਇਹੀ ਕਹਿੰਦੇ ਰਹੇ ਦੇ ਆਰ ਇਨੋਸੈਂਟ ਟਿਲ ਗਿਲਟੀ ਟਿਲ ਪ੍ਰੂਵਨ ਗਿਲਟੀ ਹੋਰ ਕਹਿਣਾ ਕੀ ਆ ਬੜਾ ਇੰਨਾ ਹੋਇਆ ਹਰੇਕ ਪੁੱਛਦਾ ਸੀ ਇਹ ਮਾਨਸਿਕਤਾ ਤੋ ਇਹ ਰਸੂਜੀ ਕ੍ਰਾਈਸਿਸ ਠੀਕ ਹੈ ਉਹਨਾਂ ਨੂੰ ਜ਼ਰੂਰਤ ਹੈ ਉਹ ਬੰਦੇ ਤੜਫ ਰਹੇ ਨੇ ਮਰ ਰਹੇ ਨੇ ਪਾਣੀ ਬਿਨਾ ਬੁਰਾ ਹਾਲ ਹੈ ਪਰ ਹਰ ਇੱਕ ਦੇਸ਼ ਦੀ ਆਪਣੀ ਕਪੈਸਿਟੀ ਹੈ ਲੱਖ ਬੰਦਾ ਨੈਸ਼ਨਲ ਸ਼ੰਗਾਰ ਦਾ ਰੈਡੀ ਕੀਤਾ ਪਿਆ ਅੰਦਰ ਗੱਲ ਨਿਕਲ ਗਈ ਡੋਨਲਡ ਟਰੰਪ ਦੀ 11 ਮਿਲੀਅਨ ਇਲਲੀਗਲ ਬੰਦਾ ਹੈ ਨੂੰ ਫੜਨ ਦੇ ਲਈ 8 ਸਟੇਟਾਂ ਦੇ ਵਿੱਚ ਵਪਾਰਕ ਸੰਦੇਸ਼ਾਂ ਤੋਂ ਬਾਅਦ ਮੈਂ ਤੁਹਾਨੂੰ ਖਬਰ ਸੁਣਾਉਣਾ ਅਮਰੀਕਾ ਦੀ ਖਬਰ ਹੈ ਜਨ ਕੈਲੀ ਜਿਹੜਾ ਸੈਕਟਰੀ ਆ ਹੋਮਲੈਂਡ ਸਕਿਉਰਿਟੀ ਦਾ ਉਹਨੇ ਮੀਮੋ ਤੇ ਮੀਮੋ ਭੇਜੀ ਆ ਜੂ ਐਸਟੇਟਮ ਐਂਡ ਬੋਰਡ ਪ੍ਰੋਟੈਕਸ਼ਨ ਨੂੰ ਪ੍ਰੋਟੈਕਸ਼ਨ ਨੂੰ ਯੂ ਐਸ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੂੰ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਨੂੰ ਐਕਟਿੰਗ ਡਿਪਟੀ ਅਸਿਸਟੈਂਟ ਸੈਕਟਰੀ ਆਫ ਪਾਲਿਸੀ ਨੂੰ 11 ਪੇਜ ਨੇ 1 ਲੱਖ ਨੈਸ਼ਨਲ ਗਾਰਡ ਡੈਪਿਊਟ ਕਰਨ ਦੀ ਗੱਲ ਚੱਲ ਰਹੀ ਹੈ ਕਿ ਫੜ ਕੇ ਇਲਲੀਗਲ ਨੇ ਜਿਹੜੇ ਕੱਟ ਕੱਢਦੇ ਕੈਲੀਫੋਰਨੀਆ ਅਰੀਜ਼ੋਨਾ ਨਿਊ ਮੈਕਸੀਕੋ ਤੇ ਟੈਕਸ ਚਾਰ ਸਟੇਟਾਂ ਓਰੇਗਨ ਨਿਵਾਡਾ ਯੂਟਾ ਕੋਲਰਾਡੋ ਓਕਲਾਹੋਮਾ ਆਰਕਾਂਸਾ ਲੂਜ਼ੀਆਨਾ ਹੁਣ ਇਸ ਗੱਲ ਤੇ ਵਾਈਟ ਹਾਊਸ ਕੰਦਰ ਸਾਨੂੰ ਪਤਾ ਨਹੀਂ ਐਸੋਸੀਏਟਿਡ ਪ੍ਰੈਸ ਨੇ ਗੱਲ ਕੱਢ ਲਈ ਇਹ ਪਿਛਲੇ 2 ਹਫ਼ਤੇ ਦੀ ਗੱਲ ਚੱਲ ਰਹੀ ਹੈ ਹੋਮਲੈਂਡ ਸਿਕਿਉਰਿਟੀ ਨੇ ਕਹਿ ਦਿੱਤਾ ਕਿ ਇਹ ਜਿਹੜੀ ਪਿਛਲੇ ਫਰਾਈਡੇ ਪ੍ਰਪੋਜ਼ਲ ਡਿਸਕਸ ਹੋਈ ਹੈ ਆ ਲੈਵਲ ਹੈ 11 ਮਿਲੀਅਨ ਇਲੀਗਲ ਲੋਕ ਨੇ ਦੂਸਰੇ ਆਪਣੇ ਵਾਸ਼ਿੰਗਟਨ ਡੀਸੀ ਦੇ ਵਿੱਚ ਅੱਜ ਚਾਈਲਡ ਕੇਅਰ ਬਰਗਰ ਤੇ ਖੋਰ ਜਿਹੜੀਆਂ ਆਮ ਲੋਕਾਂ ਦੀਆਂ ਸਰਵਿਸਿਜ਼ ਸੀ ਉੱਥੇ ਉਹਨਾਂ ਨੇ ਕੀ ਕੀਤਾ ਅੱਜ ਦਰਵਾਜ਼ੇ ਬੰਦ ਕਰ ਦਿੱਤੇ ਇਮੀਗ੍ਰੈਂਟ ਡੇ ਦੇ ਤੌਰ ਤੇ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਜੇ ਦਾ ਦੇ ਵਿਦਆਊਟ ਇਮੀਗ੍ਰੈਂਟਸ ਬਾਹਰਲੇ ਬੰਨ ਕਿ ਲੋਕਾਂ ਨੂੰ ਪਤਾ ਲੱਗੇ ਜੇ ਇਮੀਗ੍ਰੈਂਟਸ ਹੈ ਨਹੀਂ ਆ ਨਹੀਂ ਮਿਲ ਰਹੀਆਂ ਲੋਕ ਗੁੱਪਰਿਆਂ ਦੇ ਕਰਨ ਇਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਤੋਂ ਬਿਨਾ ਇਹ ਦੇਸ਼ ਨਹੀਂ ਚੱਲ ਸਕਦਾ ਕਹਲੇ ਫੋਰਵੀ ਅਸਲੀਨਸ ਦੇ ਫਾਰਮਾਂ ਦੇ ਵਿੱਚ ਸਰੀਰ ਝੁੜਸ ਜਾਂਦਾ 40 ਡਿਗਰੀ ਦੇ ਵਿੱਚ ਪ੍ਰੋਡਿਊਸ ਜਿਹੜਾ ਤੋੜਨਾ ਮੀਘੋਆ ਨਹੀਂ ਟੁੱਟਣਾ ਕਿਸੇ ਤੋਂ ਅਸਨਕਾ ਰੰਗ ਤਾਂ ਚੱਬਿਆਂ ਦਾ ਰੇਤਾ ਉਈਓ ਢਲ ਜੂ ਇਹ ਜਿਹੜੀਆਂ ਗੱਲਾਂ ਚੱਲਦੀਆਂ ਨਾ ਵਾਸ਼ਿੰਗਟਨ ਡੀਸੀ ਦੇ ਵਿੱਚ ਬਹਿ ਕੇ ਡੋਨਾਲਡ ਟਰੰਪ ਕਹਿੰਦਾ ਨਿਕਲ ਨੂੰ ਕੜਕਦਾ ਇਹ ਜਿਹੜੇ ਬੰਦੇ 11 ਬਿਲੀਅਨ ਨਿਕਲਗੇ ਇਹਨਾਂ ਦਾ ਬਦਲ ਕਿੱਥੋਂ ਲਵੋਗੇ ਕੌਣ ਕੰਮ ਕਰੂਗਾ ਵਾਈ ਬਾਲਰ ਜੌਬ ਸਾਰੇ ਭਾਰ ਦੇ ਸਿਲੀਕਨ ਵੈਲੀ ਚ ਸਾਰੇ ਨਹੀਂ ਵੇਚ ਸਕਦੇ ਅਜੋੜਾ ਨੇ ਸੈਂਡਵਿਚਸ ਚਾਈਲਡ ਕੇਅਰ ਫਿਟਨੈਸ ਕਲਾਸਸ ਸਭ ਬੰਦ ਕਰ ਦਿੱਤੀਆਂ ਉਹ ਬਾਹਰਲੇ ਬੰਨ ਲਿਖਦਾ ਡੇ ਵਿਦਆਊਟ ਇਮੀਗ੍ਰੈਂਟਸ ਨੋ ਸਰਵਿਸ ਕਿਉਂਕਿ ਇਮੀਗ੍ਰੇਸ਼ਨ ਦੇ ਖਿਲਾਫ ਯੂ ਐਸ ਗਵਰਨਮੈਂਟ ਕੰਮ ਕਰ ਰਹੀ ਹੈ ਹੁਣ ਯੂ ਐਸ ਸਰਕਾਰ ਦੀਆਂ ਉਧਰ ਦ ਬਸ਼ ਜਿੱਤੇ ਅਤੇ ਤੋਂ ਵੱਧ ਕਲਿੰਟਨ ਜਿੱਤੇ ਅਤੇ ਤੋਂ ਵੱਧ ਅਵਾਮਾ ਜਿੱਤੇ ਉਹ ਕਹਿੰਦਾ ਅੱਛਾ ਇਹ ਗੱਲ ਠੀਕ ਹੈ ਉਹ ਕਹਿੰਦਾ ਹਾਂ ਠੀਕ ਹੈ ਤੇ ਤੋਂ ਵੱਧ ਜਿੱਤੇ ਪੱਤਰਕਾਰਾਂ ਤੁਹਾਨੂੰ ਕਿਹਨੇ ਆਹ ਪ੍ਰੈਜ਼ੀਡੈਂਟ ਦੇਸ਼ ਠੀਕ ਹੈ ਉਹ ਆਪਣੇ ਦੇਸ਼ ਲਈ ਚੰਗਾ ਉਹਨੂੰ ਚਾਉਣ ਵਾਲੇ ਹਲੇ ਵੀ ਉਹਨੇ ਹੀ ਚਾਹ ਰਹੇ ਨੇ ਕਿ ਜਿਹੜੀਆਂ ਗੱਲਾਂ ਕਹੀਆਂ ਉਹ ਪੂਰੀਆਂ ਕਰ ਰਿਹਾ ਪਰ ਇਹਨਾਂ ਦੇਸ਼ਾਂ ਦੇ ਨਾਲ ਕੰਧ ਤੇ ਕਾਰਟੂਨਿਕ ਦਿਖਾਇਆ ਕੰਧ ਦੇ ਦੂਜੇ ਬੰਨੇ ਮੈਂ ਫੇਸਬੁਕ ਤੇ ਪਾਇਆ ਸੀ ਗੁਰਪ੍ਰੀਤ ਸਿੰਘ ਸੇ ਨੇ ਕੰਧ ਦੇ ਦੂਜੇ ਪਨੇ ਬਾਰਡਰ ਗਾਰਡ ਖੜਾ ਉਧਰ ਬੋਲੇ ਬੰਦਾ ਆ ਰਿਹਾ ਉਹ ਕਹਿੰਦਾ ਮੈਂ ਕੰਧ ਖੱਬੇ ਪਾਸੇ ਆਜਮਾ ਉਹ ਕਹਿੰਦਾ ਨੋ ਸੱਜੇ ਪਾਸੇ ਦੀ ਆਜਮਾ ਕਹਿੰਦਾ ਨੋ ਕਹਿੰਦਾ ਕੰਧ ਟੱਪ ਕਹਿੰਦਾ ਨੋ ਕਹਿੰਦਾ ਕੰਧ ਬਣਾਉਣ ਨੂੰ ਬੰਦੇ ਚਾਹੀਦੇ ਆ ਕਹਿੰਦਾ ਹਾਂ ਹਾਂ ਆ ਜਾ ਆ ਜਾ ਵੀ ਬਣਾਉਣੀ ਆ ਉਹਦੇ ਤੇ ਲੇਬਰ ਕੌਣ ਕਰੂਗਾ ਇੱਥੇ ਤਾਂ ਸ਼ਿਕਾਰ ਕਰ ਲਿਆ ਗੰਨਾ ਚੱਲੀਆਂ ਮਾਸ ਭੁੰਨ ਲਿਆ ਬੀਅਰ ਪੀ ਲਈ ਬਰਮਾਸ਼ੀ ਰਾਤ ਨੂੰ ਕਰ ਲਈ 5 ਦਿਨ ਦਾ ਕਮਾਇਆ 6 ਤੇ 7 ਦਿਨਾਂ ਚ ਕਮਾ ਲਿਆ ਟਰੱਕ ਟ੍ਰੇਲਰ ਉਹਦੇ ਬਾਅਦ ਟਰਕਿੰਗ ਇੰਡਸਟਰੀ ਉਹਦੇ ਬਾਅਦ ਐਗਰੀਕਲਚਰ ਉਹਦੇ ਬਾਅਦ ਵੱਡੇ ਫਾਰਮ ਗ੍ਰੀਨ ਹਾਊਸ ਮਿਲਾਂ ਇਹਨੇ ਚਲਾਉਣੀਆਂ ਨੇ ਕੱਢ ਤਾਂ ਦੋਹੋਂਗੇ ਪਰ 11 ਮਿਲੀਅਨ ਦਾ ਬਦਲ ਕਿੱਥੇ ਆ ਸਵਾ ਕਰੋੜ ਬੰਦਾ ਕਿੱਥੋਂ ਲਿਆਉਂਗੇ ਜਿਹੜਾ ਉੱਥੇ ਆਪਣੇ ਆਪ ਜਿਹੜਾ ਪੱਠੀਆਂ ਚ ਸਿੱਟੂਗਾ 10 ਡਾਲਰ ਦੀ ਜਗ੍ਹਾ 5 ਡਾਲਰ ਚ ਕੰਮ ਕਰਨ ਵਾਲੇ ਕਿੱਥੋਂ ਲਿਆਉਂਗੇ ਦ ਨੈਸ਼ਨਲ ਗਾਰਡ 1 ਲੱਖ ਦੇ ਕਰੀਬ ਰੈਡੀ ਕੀਤਾ ਪਿਆ ਸੀ ਜਸਨ ਟਰੂਡੋ ਮਾਰਕਲ ਨੇ ਕਹਿੰਦੇ 10 ਸਾਲ ਲਈ ਤੇਰਾ ਪਿਤਾ ਇੱਥੇ ਆਇਆ ਉਹ ਫੋਟੋਆਂ ਫੋਟੋਆਂ ਦਾ ਬੜਾ ਬਾਜ਼ਾਰ ਕਰਦਾ ਜਸਨ ਟਰੂਡੋ ਡੋਨਲਡ ਟਰੰਪ ਕੋਲ ਜਾਂਦਾ ਤਾਂ ਬਾਪੂ ਦੀ ਫੋਟੋ ਲੈ ਜਾਂਦਾ ਕਿਊਬਾ ਜਾਂਦੇ ਆ ਤਾਂ ਕਿਊਬਾ ਵਾਲੀਆਂ ਫੋਟੋਆਂ ਦੇਖੀ ਜਾਂਦੇ ਆ ਕਿ ਬਹੁਤ ਹਲੇ ਹਨੀਮੂਨ ਪੀਰੀਅਡ ਦੇ ਵਿੱਚ ਸਾਡਾ ਪ੍ਰਧਾਨ ਮੰਤਰੀ ਫਿਰਦਾ ਪਰ ਵੇਖਣਾ ਪੈਣਾ ਇਸ ਸਾਡੇ ਦੇਸ਼ ਦੇ ਵਿੱਚ ਕਿਹੜੀਆਂ ਕੜੀਆਂ ਹੀ ਇਸ ਟਰਾਇੰਗ ਹਿਸ ਬੈਸਟ ਆਪਣਾ ਆਪਣਾ ਵਿਜ਼ਨ ਹੈ ਹਰ ਇੱਕ ਬੰਦੇ ਦੀ ਆਪਣੀ ਆਪਣੀ ਆਈਡੀਓਲੋਜੀ ਹੈ ਚੇਂਜ ਨਹੀਂ ਹੁੰਦੀਆਂ ਹੁੰਦੀਆਂ ਚੀਜ਼ਾਂ ਕੁਝ ਉਹਦੇ ਇਨ ਹੈਰੀਡਿਟ ਹੁੰਦੀਆਂ ਚੀਜ਼ਾਂ ਜਿਹੜੀਆਂ ਉਸ ਤਰ੍ਹਾਂ ਹੀ ਜਾਣੀਆਂ ਚੈਲਡਰ ਆਫ ਰਾਈਟਸ ਟ੍ਰੂਡੋ ਫੈਮਿਲੀ ਦਾ ਨੌ ਹੈ ਉਹ ਟ੍ਰੂਡੋ ਫੈਮਿਲੀ ਕਰਕੇ ਹੀ ਤਿੰਨਾਂ ਸਾਲਾਂ ਦੇ ਵਿੱਚ ਲੀਡਰ ਬਣ ਕੇ ਬੰਦਾ ਪ੍ਰਧਾਨ ਮੰਤਰੀ ਬਣ ਗਿਆ ਕ੍ਰਿਸਮੈਟਿਕ ਇਨਸਾਨ ਬਹੁਤ ਚੰਗਾ ਪਰ ਕੁਝ ਪਾਲਿਸੀਜ਼ ਨੇ ਜਿਹੜੀਆਂ ਦੁਆਰਾ ਉਸ ਨੂੰ ਖੋਖਣੀਆਂ ਇਲੈਕਸ਼ਨ ਵਰੇ ਕਰਕੇ ਵਾਦਾ ਕਰਦਾ ਵਾਦਾ ਪੂਰਾ ਕਰਦਾ ਪਰ ਉਹਦੇ ਨੀਤੀ ਘਾੜੇ ਉਹਦੇ ਕੰਨ ਚ ਵਲੇਲ ਕਰਨ ਕਿ ਇਹ ਤੇਰੇ ਖਿਲਾਫ ਜਾਣੀ ਐ ਦੂਜੇ ਬੰਨੇ ਕੰਜ਼ਰਵੇਟਿਵ ਕੈਲੀ ਲੀ ਚਰਗੇ ਥਾਪੀਆਂ ਮਾਰਦੇ ਫਿਰਦੇ ਆ ਕਿ ਅਸੀਂ ਕੈਨੇਡੀਅਨ ਵੈਲਿਊਜ਼ ਤੇ ਅਗਲੀ ਇਲੈਕਸ਼ਨ ਲੜਨੀ ਆ ਤੁਹਾਡੇ ਸਾਹਮਣੇ ਇਹ ਹੋਏਗੀ ਕਿਉਂਕਿ ਰਾਜਨੀਤਿਕ ਬੰਦਿਆਂ ਨੇ ਪੈਂਤੜਾ ਉਹ ਖੇਲਣਾ ਜਿਹੜੀ ਗੱਲ ਹੋਵੇ ਮੈਨੂੰ ਯਾਦ ਆਏ ਤਾਂ ਉਹ ਗੱਲ ਬਹੁਤ ਦੂਰ ਦੀ ਐ ਯੂਟਰਨ ਆ ਡੈਲਟਾ ਦੀ ਨੋਮੀਨੇਸ਼ਨ ਜਿਹੜਾ ਵੀ ਕੋਈ ਬੰਦਾ ਜਿੱਤਦਾ ਸੀ ਉਹਦੇ ਦਿਮਾਗ 'ਚ ਪਤਾ ਕੀ ਸੀ ਕਿ ਨੋਮੀਨੇਸ਼ਨ ਪੰਜਾਬੀ ਜਿਤਾਦਣ ਐਮਪੀ ਮੈਨੂੰ ਰਾਈਟ ਵਿੰਗ ਗੋਰਿਆਂ ਨੇ ਬਣਾ ਦੇਣਾ ਜਿਹੜੇ ਪੁਰਾਣੇ ਬਜ਼ੁਰਗ ਨੌਰਡਾੜੇ 'ਚ ਬੈਠਣੇ ਐ ਇਮੀਗ੍ਰੈਂਟ ਵਾਲੇ ਉਹਨਾਂ ਨੇ ਮੈਨੂੰ ਵੋਟਾਂ ਪਾ ਦੇਣੀਆਂ ਗਰਮੰਤ ਗਰੇਵਾਲ ਹੁਣੀ ਵੀ ਇਸ ਪੋਜੀਸ਼ਨ ਤੇ ਜਿੱਤੇ ਔਰ ਇਹ ਚੀਜ਼ ਗਾਹਤ ਹੋਗਾ ਸੰਦੀਪ ਪੁੰਦੇਰ ਨੋਮੀਨੇਸ਼ਨ ਜਿੱਤਿਆ ਬੈਠਾ ਬੈਠਾ ਉਹ ਕਹਿੰਦਾ ਹੁਣ ਪੰਜਾਬੀ ਬੰਦਿਆਂ ਦੀ ਮੈਨੂੰ ਲੋੜ ਹੀ ਨਹੀਂ ਵੀਰ ਮੈਂ ਕਿਉਂ ਉਹ ਕਹਿੰਦਾ ਹੁਣ ਤਾਂ ਪਾਉ ਨੂੰ ਗੋਰਿਆਂ ਨੇ ਵੋਟਾਂ ਪਾ ਦੇਣੀਆਂ ਤਾਂ ਰਾਦਰ ਆਪਾਂ ਇੰਟੀ ਤੇ ਗੱਲ ਕਰ ਸੋ ਲੋਕ ਫੋਲੋ ਕਰਦੇ ਆ ਵੋਟ ਨੂੰ ਹਾਲੇ ਤਾਂ ਸ਼ੋਭ ਚ ਪੂਣੀ ਵੀ ਨਹੀਂ ਸੀ ਕੱਤੀ ਪਹਿਲੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਸੋ ਚੀਜ਼ਾਂ ਜਿਹੜੀਆਂ ਉਹ ਉਸ ਤਰ੍ਹਾਂ ਹੀ ਨੇ ਰਾਜਨੀਤਿਕ ਪੰਚਦਾ ਜਿਹੜਾ ਰਾਜਨੀਤਿਕ ਬੰਦਾ اخلاق ਤੇ ਰਹਿ ਕੇ ਗੱਲਾਂ ਪੂਰੀਆਂ ਕਰਨ ਤੇ ਵਾਅਦੇ ਕੀਤੇ ਪੂਰੇ ਕਰਨ ਤੋਂ ਹਟਦਾ ਕਿਉਂ ਕਿ ਉਹਦੇ ਵਸਦੀ ਗੱਲ ਨਹੀਂ ਹੈ ਬਾਹਲੀਆਂ ਗੱਲਾਂ ਕਰ ਲੈਂਦਾ ਜਿੱਤਣ ਵੇਲੇ ਮੁੜ ਪੂਰੀਆਂ ਨਹੀਂ ਹੁੰਦੀ ਹਰ ਇੱਕ ਨੂੰ ਵੋਟ ਪਾਉਣ ਲਈ ਚੱਕ ਮੇਰਾ ਫੋਨ ਮੈਨੂੰ ਫੋਨ ਕਰੀ 24 ਘੰਟੇ ਤੇਰਾ ਕੰਮ ਉਹ ਦਫ਼ਤਰ ਆਪ ਮੈਂ ਭਾਈ ਆਉ ਇਹਦਾ ਕਹੇ ਸਾਰਾ ਕੁਝ ਹੋ ਹਰੇਕ ਇਹ ਮੇਰੇ ਦੇ ਅਰਕ ਸਰੰਗਲ ਤੇ ਮੁੰਡੇ ਤੇ ਰੱਖ ਕੇ ਬਜਾਈ ਤੁਰਿਆ ਜਾਂਦਾ ਪਤਾ ਜਾਦਲਾ ਨਾ ਜਦ ਅਗਲਾ ਸੌ ਚੁੱਕ ਲੈਂਦਾ ਐਮਪੀ ਐਮਐਲਏ ਤਾਂ ਦੂਰ ਆ ਪਰ ਲੋਕ ਨੂੰ ਲੋਕਲ ਕਾਉਂਸਲਰ ਨੂੰ ਫੋਨ ਕਰਕੇ ਦੇਖ ਜਿਹੜਾ ਕਾਉਂਸਲਰ ਤੇਰੇ ਪੈਰਾਂ 'ਚ ਬੈਠਾ ਵੋਟਾਂ ਜਿੱਤਣ ਤੋਂ ਪਹਿਲਾਂ ਉਹਨੂੰ ਕਹੀ ਕਿ ਤੂੰ ਚੱਕ ਕੇ ਦਿਖਾਵੇ ਫੋਨ ਮੇਅਰ ਜਾਂ ਮੇਅਰ ਦੇ ਕੈਂਡੀਡੇਟ ਵਿੱਚ ਵੱਜਦੇ ਫਿਰਦੇ ਹੁੰਦੇ ਵੋਟਾਂ ਵਾਲੇ ਜਿੱਥੇ ਮਰਜ਼ੀ ਬਿਠਾਦਾ ਕਾਫੀ ਪੀਣ ਵਾਲੀ ਨੂੰ ਕਹੇ ਵੀ ਚਾਹ ਪੀਣੀ ਪੈਣੀ ਆ ਲੌਂਗਾਂ ਵਾਲੀ ਉਹ ਕਹਿੰਦੀ ਪੀਊਂਗੀ ਆਈ ਵਿਲ ਹੈਵ ਇਟ ਵੈਰੀ ਟੇਸਟੀ ਚਾਈ ਇਸ ਟੀ ਲਾਟੇ ਆਈ نو ਸਮੋਸਾ ਵੀ ਖਾਉ ਮੈਂ ਤੇ ਜਿੱਦਣ ਦਸਤਰ ਚ ਬਹਿ ਕੇ ਫਿਰ ਕਰਕੇ ਦੇਖੀ ਕਰੋਗੇ ਟਾਕ ਟੂ ਮਾਈ ਸੈਕ੍ਰੇਟਰੀ ਆਮ ਬਿਜ਼ੀ ਇਹ ਪੈਂਤੜੇ ਐ ਇਹਨਾਂ ਨੂੰ ਮੁਰਚੇ ਤੋਂ ਫੜ ਕੇ ਰੱਖਿਆ ਕਰੋ ਮੁਰਚੇ ਤੋਂ ਫੇ ਠੂਕ ਫੇ ਠੀਕ ਆਉਂਦੇ ਆ ਜਿੰਨੀ ਵढਾਈ ਹੋਊ ਓਨੇ ਨੇੜੇ ਆਉਣਗੇ ਵਪਾਰਕ ਸੰਦੇਸ਼ ਸਿੰਘ ਸਰਦਲ ਦਲਵੀਰ ਸਿੰਘ ਬਰਲਿਨ ਦੇ ਵਿੱਚ ਟੈਕਸਟੀ ਚਲਾਉਂਦਾ ਉਹ ਕਹਿੰਦੇ ਪਾ ਦੇਸ਼ ਦੀ ਇਕਨੋਮੀ ਤਾਂ ਇਹਨਾਂ ਦੀ ਚੰਗੀ ਆ ਪਰ ਪਰਦੇਸੀਆਂ ਦੀ ਇਕਨੋਮੀ ਚੰਗੀ ਨਹੀਂ ਕਹਿੰਦਾ ਭਾਂਡੇ ਧੋਣ ਤੇ ਭਾਂਡੇ ਵਰਤੌਣ ਤੇ ਪੀਜ਼ਾ ਡਿਲੀਵਰੀ ਪਾਸਟਾ ਡਿਲੀਵਰੀ ਟੈਕਸੀ ਕਹਿੰਦਾ ਵੀ ਸਾਡੀ ਸਾਫ ਟੈਕਸੀ ਹੋਊ ਨਾਲ ਗੋਰਾ ਇੱਕ ਟੈਕਸੀ ਜਰਮਨ ਲਈ ਖੜਾ ਉਹਦੀ ਸੜੀ ਹੋਈ ਟੈਕਸੀ ਸਿਗਾਰ ਧੂਆ ਉਦੇ ਲੈਦਰ ਦੇ ਵਿੱਚ ਬੜਿਆ ਹੋਊ ਕਹਿੰਦਾ ਜਰਮਨ ਜਰਮਨ ਬੰਦਾ ਆ ਕੇ ਸਾਡੀ ਜਗਾ ਉਹਨੂੰ ਅਫਰ ਕਰਦਾ ਬੈਨ ਸੋ ਇਹ ਇੱਕ ਵੇਵ ਚੱਲ ਰਹੀ ਹੈ ਜਿਹੜੀ ਮੈਂ ਗੱਲ ਕਹਿ ਰਿਹਾ ਕਹਾਣੀ ਇਹ ਹੈ ਕਿ ਇਹਨਾਂ ਦੇਸ਼ਾਂ ਨੂੰ ਲੇਬਰਰ ਚਾਹੀਦੀ ਹੈ ਚੀਪ ਲੇਬਰ ਵੀ ਚਾਹੀਦੀ ਹੈ ਸੇਮ ਟੋਕਨ ਉਹ ਲੇਬਰ ਦੇ ਅਗੇਂਸਟ ਗੱਲ ਕਰਕੇ ਵੋਟਾਂ ਵੀ ਲੈਣੀ ਸਰ ਜੋਤ ਸਿੰਘ ਜੀ ਲਾਂ ਬਟੂ ਵਾਇਕੋਟੇ ਸਾਊਥ ਵਾਇਕੋਟੇ ਪੱਤੇ ਜੀ ਗੁਰਫਤੇ ਜੀ ਹਾਂ ਜੀ ਸਰ ਨਰਾ ਕੱਟਿਆ ਜਾਵੇ ਮੈਂ ਗੱਲ ਕਰਨੀ ਸੀ ਦੇਖੋ ਬਿਲਕੁਲ ਗੱਲ ਸਹੀ ਆ ਕਿ ਜਿਹੜਾ ਟੈਰਰਿਜ਼ਮ ਜਿਹੜਾ ਐਕਟ ਹੈਗੇ ਆ ਉਹਨਾਂ ਦਾ ਇਫੈਕਟ ਜ਼ਰੂਰ ਪੈਂਦਾ ਆ ਪਰ ਇਹ ਜਦੋਂ ਕੋਈ ਨਾ ਮੁਸਲਮਾਨ ਜਾਂ ਕੋਈ ਬਾਹਰਲੇ ਦੇਸ਼ ਦਾ ਆ ਉਹਨੂੰ ਇਹ ਟਾਈਟਲ ਕਰਦੇ ਮੁਸਲਮਾਨ ਟੈਰਰਿਸਟ ਆ ਜਾਂ ਉਹਨੂੰ ਇਹਨੇ ਕਹਿੰਦੇ ਹੋਮ ਗਰਾਉਂਡ ਟੈਰਰਿਸਟ ਆ ਜਦੋਂ ਅਮਰੀਕਾ ਦੇ ਵਿੱਚ ਵਿਜਤ ਸੈਦ ਚੌਂੜੀ ਨੇ ਕੋਈ ਵੀ ਕਿੰਨੀਆਂ ਕਾਰਵਾਈਆਂ ਕਿੰਨੇ ਸਕੂਲਾਂ ਦੇ ਸਨਮਿਆਂ ਘਰਾਂ ਦੇ ਜਾ ਕੇ ਉਹਨੇ ਅਸਲ ਵਾਸਤੇਆਂ ਕਾਰਵਾਈਆਂ ਕੀਤੀ ਐ ਜਦੋਂ ਟਿਮ ਇਥੇ ਨੇ ਕੋਕਲੋਹਾ ਮਾਤੇ ਬੌਮਿੰਗ ਕੀਤੀ ਸੀਗੀ ਪੈਟਰੋਲ ਬਿਲਡਿੰਗ ਢਾਈ ਸੀ ਉੱਥੇ ਬਹੁਤ ਸਾਰੇ ਬੱਚੇ ਤੇ ਦੂਜੇ ਕੋਈ 2-3 ਹਿਸਾਬ ਬੰਦਾ ਉਸ ਬਿਲਡਿੰਗ ਦੇ ਮਰ ਗਿਆ ਸੀ ਪਰ ਉਹਨੂੰ ਅੱਜ ਤਾਈਂ ਇਹ ਕਦੀ ਇਹ ਨਹੀਂ ਕਿਹਾ ਵੀ ਉਹ ਜਾ ਕੇ ਜਿਹੜਾ ਹੈ ਕ੍ਰਿਸਚੀਅਨ ਟੈਰਰਿਸਟ ਹੈ ਜਾਂ ਦੂਜੇ ਉਹ ਚਿੱਟਾ ਟੈਰਰਿਸਟ ਹੈ ਸਦਾ ਹੀ ਇਹੋ ਵਿਚਾਰ ਆ ਜਾਂਦਾ ਮੈਂ ਇਹ ਗੱਲ ਨੂੰ ਬਿਲਕੁਲ ਕੰਡਮਨ ਕਰਦਾ ਹਾਂ ਜੇ ਟੈਰਰਰイズਮ ਐਕਟ ਹੈ ਕੋਈ ਵੀ ਕਰਦਾ ਆ ਉਹ ਤੇ ਪ੍ਰੋਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਹੁਣ ਇਸੇ ਤਰ੍ਹਾਂ ਜਿਹੜਾ ਆ ਸਵਾਇਟ ਜੇ ਜਾਂ ਜਰਮਨੀ ਤੇ ਆ ਜਿਹੜਾ ਮੁਸਲਮਾਨਨ ਕੀਤਾ ਬਦਕਿਸਮਤੀ ਆ ਉਹ ਧਰਮ ਮੁਸਲਮਾਨ ਨਾਲ ਰਿਲੇਟਿਡ ਹੈਗੇ ਆ ਪਰ ਜਿਹੜੇ ਉਹ ਹੋਮ ਗ੍ਰੋਨ ਹੈਗੇ ਆ ਉਹਨਾਂ ਨੂੰ ਉਸ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਵਾੜਾ ਜਿਹੜਾ ਇਮੀਗ੍ਰੈਂਟਾਂ ਤੇ ਚੱਲਿਆ ਜਾਂਦਾ ਚਲਾਇਆ ਜਾਣਾ ਐਕਸਕਿਊਜ਼ ਮਾਰਤ ਕੇ ਹੁਣ ਇੱਥੇ ਵੀ ਜਿਹੜਾ ਜਿਹੜੇ ਦੂਜਾ ਕੇਨ ਕੈਲੀ ਲੀ ਚਾਲੀ ਗੱਲ ਕਰਦੇ ਆ ਤੁਸੀਂ ਬਿਲਕੁਲ ਇਹ ਗੱਲ ਸਹੀ ਹੈਗੀ ਆ ਕੈਲੀ ਲੀ ਦੇ ਚਾਂਸਸ ਆ ਪਰ ਉਹਦੇ ਵਿੱਚ ਜਿਹੜਾ ਜਿਹੜੇ ਜਿਹੜੇ ਲੋਕਲ ਹੈਗੇ ਆ ਉਹ ਨਹੀਂ ਉਹਨਾਂ ਸਾਥ ਨਹੀਂ ਦੇਣਾ ਜਿੰਨਾ ਅਸੀਂ ਸਾਥ ਦੇਣਾ ਕਿਉਂ ਅਸੀਂ ਇਹ ਭੁੱਲ ਜਾਂਦੇ ਅਸੀਂ ਬਾਹਰੋਂ ਆਏ ਆ ਸਾਨੂੰ ਵੀ ਇਹੋ ਹੋ ਜਾਂਦਾ ਯਾਰ ਜੇ ਹੁਣ ਬਾਹਰੋਂ ਅਸੀਂ ਕਿਸੇ ਤਰ੍ਹਾਂ ਰੋਕ ਲਈ ਆਉਣ ਮੇਰਾ ਚੈੱਕ ਵੱਡਾ ਹੋ ਮੇਰੀ ਇਨਕਮ ਜ਼ਿਆਦਾ ਹੋ ਜਾਊ ਕਿ ਬਾਹਰੋਂ ਖਾਤੇ ਆਉਂਦੇ ਅਸੀਂ ਅਸੀਂ ਦੇ ਵਿਕਤ ਤੁਹਾਡੇ ਦਾ ਹਿੱਸਾ ਬਣਨਾ ਆ ਸੋ ਇਸ ਗੱਲ ਦੀ ਮੈਨੂੰ ਚਿੰਤਾ ਆ ਚਿੰਤਾ ਇਹ ਨਹੀਂ ਵੀ ਜਿਹੜੇ ਇੱਥੇ ਦੇ ਲੋਕ ਆਏ ਇਸ ਗੱਲ ਨੂੰ ਜਾ ਕੇ ਵਰਤਦੇ ਆ ਗੱਲ ਇਹੋ ਕਿ ਅਸੀਂ ਵੀ ਉਹਨਾਂ ਨਾਲ ਰਲ ਕੇ ਅਸੀਂ ਜਸਤ ਨਹੀਂ ਕਰਨ ਦੀ ਮੰਗ ਕਰਦੇ ਅਸੀਂ ਓਟ ਜਿਹੜਾ ਪ੍ਰੋਪਾਗੈਂਡ ਦੇ ਦਾ ਹਿੱਸਾ ਵਾਣਦੇ ਆ ਵਾਏ ਬਕੇ ਖਾਲਸਾ ਵਾਏ ਬੀ ਬਲੇ ਸੱਜੀ ਕਾਲ ਸਾਹਿਬ ਅੱਜ ਦੀ ਬਤਾਏ ਬੂਟਾ ਸੰਧੂ ਜੀ ਲਾਈਨ ਨੰਬਰ 3 ਜੱਸੀ ਕਾਲ ਸਾਹਿਬ ਸਤਿ ਸ਼ਕਾਲ ਬਾਈ ਜੀ ਸਤੂ ਸਾਹਿਬ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਲੈਣੀ ਸੀ ਐਨ ਆਰ ਆਈ ਦਾ ਡੈਫੀਨੇਸ਼ਨ ਕੀ ਆ ਪੈਸਾ ਕਿਸ ਦਾਦਾ ਦੇ ਜੀ ਐਨ ਆਰ ਆਈ ਦਾ ਡੈਫੀਨੇਸ਼ਨ ਕੀ ਆ ਉਹ ਤਾਂ ਆਪਾਂ ਨੂੰ ਕਹਿੰਦੇ ਨੌਨ ਰੈਜ਼ੀਡੈਂਟ ਇੰਡੀਅਨਸ ਜਿਹੜਾ ਆਪਾਂ ਸ਼ਬਦ ਦੇ ਵਿੱਚ ਪਰ ਹੁਣ ਆਪਾਂ ਤਾਂ ਇੱਥੇ ਕੈਨੇਡੀਅਨ ਚੀਜ਼ ਹੈਗੀ ਆ ਮੈਂ ਤੁਹਾਡੇ ਨਾਲ ਇਹ ਗੱਲ ਸਰੋਤਰੀ ਕਾਣੀ ਸੀ ਕਿ ਸ਼ਹਿਰ ਦੇ ਹੋਰ ਵੀ ਕਿਸੇ ਦੇ ਨਾਲ ਇਹ ਗੱਲ ਹੋਈ ਹੋਵੇ ਮੇਰੇ ਭਾਈ ਤਾਂ ਇੰਡੀਆ ਗਿਆ ਸੀ ਥੋੜੀ ਦੇਰ ਹੋਈ ਰੁਕਾਪੇ ਇੱਥੇ ਜਾ ਕੇ ਕੁਛ ਇਹ ਲੈਦੇ ਗਏ 25000 ਰੁਪਇਆ ਇੰਡੀਆ ਦਾ ਦੇਵਨਾ ਨੇ ਜਾ ਕੇ ਇੰਡੀਆ 에ਰਪੋਰਟ ਤੇ ਜਾ ਕੇ ਉੱਥੇ ਰਜਿਸਟਰ ਕਰਾਇਆ ਤੇ ਮੇਰੇ ਕੋਲ ਇੰਡੀਅਨ ਕ੍ਰਾਫਟ ਹੈ ਗਿਆ ਤਾਂ ਕਿ ਮੈਂ ਆਰਬੀਆਈ ਜਾ ਕੇ ਉੱਥੋਂ ਆਪਣੇ ਪੈਸੇ ਚੇਂਜ ਕਰ ਸਕਾਂ ਤੇ ਉਹਨਾਂ ਨੇ ਕਿਹਾ ਵੇ ਤੁਸੀਂ ਤਾਂ ਐਨਆਰਆਈ ਹੈ ਹੀ ਨਹੀਂ ਤੁਸੀਂ ਤਾਂ ਸਾਹਿਬ ਉਹਨਾਂ ਕੋਲ ਸਿਟੀਜ਼ਨ ਕਿੱਥੇ ਵੀ ਸੀ ਜਾਦੋਂ ਗਏ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਸੀ ਬਿਲਕੁਲ ਫਿਰ ਨਾਨ ਰੈਜ਼ੀਡੈਂਟ ਇੰਡੀਅਨ ਹੈ ਹੀ ਨਹੀਂ ਉਹ ਨਾਨ ਰੈਜ਼ੀਡੈਂਟ ਇੰਡੀਅਨ ਉਹ ਨੇ ਜਿਹੜੇ ਇੰਡੀਅਨ ਪਾਸਪੋਰਟ ਨਾਲ ਬਾਹਰਲੇ ਦੇਸ਼ਾਂ 'ਚ ਰਹਿ ਰਹੇ ਨੇ ਉਹ ਨਾਨ ਰੈਜ਼ੀਡੈਂਟ ਇੰਡੀਅਨ ਨੇ ਉਹ ਕੈਨੇਡੀਅਨ ਸਿਟੀਜ਼ਨ ਹੈ ਨਾਰੀ ਕੋਟੇ 'ਚ ਆਉਂਦੇ ਹੀ ਨਹੀਂ ਹੈ ਉਹਨਾਂ ਨੇ ਗਲਤੀ ਕੀਤੀ ਬਿਲਕੁਲ ਲਾਜਾ ਨਹੀਂ ਸਕਦੇ ਉਹ ਆਇ ਤੇ ਠੀਕ ਠੀਕ ਆ ਬਈ ਹੈਗੀ ਨਹੀਂ ਲਿਆ ਸਕਦਾ ਇੰਡੀਆ ਦੇ ਵਿੱਚੋਂ ਨਹੀਂ ਲਿਆ ਸਕਦਾ ਨਹੀਂ ਲਿਆ ਸਕਦਾ आरआई નો નો રેસિડેન્ટ ઇન્ડિયન્સ ઓલ ਨੇ જેડે ઇન્ડિયન પાસપોર્ટ વાલે પીઆર ને ઓ જા ਸਕદે લેકે 25000 دی ਜਿਹੜੀ ਸ਼ੋਰਟ ਹੈ ਕੈਨੇਡੀਅਨ ਸਿਟੀਜ਼ਨ ਅਮਰੀਕਨ ਸਿਟੀਜ਼ਨ ਜਾਂ ਡਿਊਲ ਕਿਤੇ ਹੈ ਉੱਥੇ ਕੈਨੇਡੀਅਨ ਵੀਜ਼ਾ ਨਹੀਂ ਲਿਜਾ ਸਕਦਾ ਐਨ ਆਰ ਆਈ ਤੁਸੀਂ ਕਹਿ ਨਹੀਂ ਸਕਦੇ ਆਪਾਂ ਨੂੰ ਉਹ ਤਾਂ ਕਹੀ ਜਾਂਦੇ ਆਪਾਂ ਨੂੰ ਉਥੇ ਐਨ ਆਰ ਆਈ ਐਨ ਆਰ ਆਈ ਨਹੀਂ ਆਪਾਂ ਐਨ ਆਰ ਆਈ ਨਹੀਂ ਆਪਾਂ ਕੈਨੇਡੀਅਨ ਇੱਥੇ ਅਸੀਂ ਆਪਣੇ ਆਪ ਨੂੰ ਇੰਡੋ ਕੈਨੇਡੀਅਨ ਬ੍ਰਿਟਿਸ਼ ਕੈਨੇਡੀਅਨ ਇਹ ਕੈਨੇਡੀਅਨ ਲਿਖਵਾ ਲਿਆ ਉਹ ਗੱਲ ਅਲੱਗ ਹੈ ਸੋ ਦਲਵੀਰ ਸਿੰਘ ਉਹਨਾਂ ਦੀ ਗੱਲ ਠੀਕ ਹੈ ਜਰਮਨੀ ਚ ਉਹ ਕਹਿੰਦੇ ਹਾਂ ਇਹ ਗੱਲ ਠੀਕ ਚੱਲ ਰਹੀ ਹੈ ਨਾਲੇ ਤਾਂ ਸਾਡੇ ਕੰਮ ਵੀ ਚਾਹੀਦੇ ਆ ਹਾਂ ਕਹਿੰਦੇ ਆਮ ਲੋਕਾਂ ਦੇ ਵਿੱਚ ਇਹ ਰਿਫਿਊਜੀਆ ਕਰਕੇ ਬਹੁਤ ਤੜਪਤਨ ਜਰਮਨੀ ਦੇ ਲੋਕ ਉਹ ਕਹਿੰਦੇ ਅਸੀਂ ਸਿਟੀਜ਼ਨ ਆ ਇਮੀਗ੍ਰੈਂਟ ਆ ਸਾਨੂੰ ਨਹੀਂ ਚੱਲਦੇ ਹਲੇ ਨਾਲੇ ਸਾਡੇ ਤੋਂ ਹੀ ਸਾਰਾ ਕੁਝ ਕਰਾਉਂਦੇ ਉਸ ਸਮਾਂ ਸੀ 84 ਦੇ ਸਮੇਂ ਬਹੁਤ ਮੁਸਿੱਖ ਆਏ ਸਤਕਾਰ ਵੀ ਦਿੱਤਾ ਲੋਕਾਂ ਨੇ ਸੇਮ ਟੋਕਨ ਜਰਮਨੀ ਦੇ ਲੋਕਾਂ ਜਰਮਨ ਲੋਕਾਂ ਨੇ ਉਹ ਲੋਕ ਤੁਰੇ ਜਾਂਦੇ ਘਰਾਂ ਦੇ ਵਿੱਚ ਵੀ ਬਾੜੇ ਆ ਸਲਾਏ ਆ ਰੱਖੇ ਆ ਇਹ ਜੀ ਗੱਲ ਨੇ ਬਹੁਤ ਮਦਦ ਕੀਤੀ ਆ ਜਿਹੜੇ ਹੋਟਲਸ ਦੇ ਰੈਸਟੋਰੈਂਟਸ ਦੇ ਮਾਲਕ ਸੀ ਉਹਨਾਂ ਨੇ ਅਸਾਈਲਮ ਲੈ ਕੇ ਵਕੀਰ ਲੈ ਕੇ ਬਹੁਤ ਮਦਦ ਕੀਤੀ ਜਰਮਨੀ ਮੇਨ ਤੋਂ ਰਿਹਾ 84 ਦੇ ਬਿੜ ਪਰ ਕਿਤੇ ਕਿਤੇ ਫਿਰ ਅਸੀਂ ਗੜਬੜਾਂ ਵੀ ਕੀਤੀਆਂ ਫਿਰ ਉਹਨਾਂ ਸਾਰਿਆਂ ਨੂੰ ਉਸ ਤਰ੍ਹਾਂ ਲੈਣ ਲਾ ਕਰਾ ਧੀਆਂ ਛੱਡੜੀਆਂ ਗੱਲਾਂ ਬਹੁਤ ਹੋਈਆਂ ਲੋਕਾਂ ਨੇ ਆਸਟ੍ਰੇਲੀਆ ਦੇ ਵਿੱਚ ਇਹ ਕਹਾਣੀਆਂ ਬੜੀਆਂ ਛਪੀਆਂ ਇੰਗਲੈਂਡ ਦੇ ਵਿੱਚ ਗੋਰੀ ਨਾਲ ਤਾਂ ਪੱਕਾ ਹੀ ਹੋਣਾ ਪੱਕਾ ਹੋਣ ਕਰਕੇ ਗੱਲ ਕੀਤੀ ਜਾਵੇ ਬਹੁਤ ਠੀਕ ਹੈ ਇਹ ਆ ਲੈ ਚੱਕ 5000 ਮਾਰਕ ਤੇ ਮੈਨੂੰ ਪੱਕਾ ਕਰਾ ਉਹਦੇ ਬਾਅਦ ਤੂੰ ਕੌਣ ਮੈਂ ਕੌਣ ਠੀਕ ਹੈ ਪਰ ਜੇ ਵਿਆਹ ਕਰਾ ਕੇ ਪੱਕੇ ਹੋਣ ਦੀ ਕਹਾਣੀ ਹੈ ਫੇਰ ਕਿਤੇ ਕਿਤੇ ਅਸੀਂ ਵੀ ਜ਼ੁਲਮ ਕੀਤਾ ਫੇਰ ਅਸੀਂ ਉਹਨਾਂ ਨੂੰ ਵਰਤਿਆ ਉਹ ਲੋਕ ਸਾਡੇ ਖਿਲਾਫ ਤਾਂ ਹੀ ਸੋਚਦੇ ਐਨੀਵੇਜ਼ ਇਹ ਜਿਹੜੀ ਅਮਰੀਕਾ ਦੇ ਵਿੱਚ ਹੁਣ ਵੱਡੀ ਗੱਲ ਹੈ ਦੇ ਵਿੱਚੋਂ ਕੀ ਨਿਕਲੂਗਾ ਔਰ ਜਿਆਦਾ ਬੈਨ ਹੈ ਜਿਹੜਾ ਬੈਨ ਦੇ ਉਪਰ ਇਮੀਗ੍ਰੈਂਟਸ ਦੇ ਉਪਰ ਫਿਊਜ਼ੀਆਂ ਤੇ ਜਿਹੜਾ ਬੈਨ ਲਾਇਆ ਉਹ ਬੈਨ ਨੇ ਆਈਸਿਸ ਨੇ ਉਸ ਨੂੰ ਏਨਾ ਜ਼ਿਆਦਾ ਵਰਤਿਆ ਅ ਬਸਟ ਦੇ ਖਿਲਾਫ ਨਵੀਂ ਰਿਕਰੂਟਮੈਂਟ ਉਹਨਾਂ ਨੇ ਕੀਤੀ ਕਿ ਆ ਵੇਖ ਲਓ ਬੈਨ ਜਿਹੜਾ ਹੈ ਕਹਿੰਦੇ ਉਹ ਤਾਂ ਉਹਨਾਂ ਨੂੰ ਬਲੈਸਿੰਗਸ ਹੋ ਗਈ ਐਨਾ ਉਹਨਾਂ ਨੇ ਇਸ ਨੂੰ ਉੱਥੇ ਬਾਹਰ ਕੀਤੀ ਗੱਲ ਜਿੱਥੇ ਵੀ ਆਈਐਸ ਦਾ ਲੋਡ ਹੈ ਉਹਨਾਂ ਨੇ ਮੁਹੰਮਦ ਫਾਹਮੀ ਨੇ ਤੁਹਾਨੂੰ ਯਾਦ ਹੈ ਇੱਕ ਜਰਨਲਿਸਟ ਜਿਹੜਾ ਹੁਣ ਸੀਬੀਸੀ ਲਈ ਉਹ ਲਿਖ ਰਿਹਾ ਮੁਹੰਮਦ ਫਾਹਮੀ ਜਿਹੜਾ ਬਹੁਤ ਚਿਰ ਮਿਸਰ ਦੇ ਵਿੱਚ ਬੰਦ ਰਿਹਾ ਜਿਸ ਨੂੰ ਮੌਤ ਦੀ ਸਜ਼ਾ 20 ਸਾਲ 25 ਸਾਲ ਇਹ ਜਿਹੀਆਂ ਗੱਲਾਂ ਸੀ ਉਹ ਆ ਗਿਆ ਤੇ ਉਹਨੇ ਲਿਖਿਆ ਕਿ ਆਈਸਿਸ ਲਈ ਇਹ ਬਲੇਸਿੰਗ ਹੋ ਗਈ ਬੈਨਟ ਉਸਨੇ ਨਵੇਂ ਚੜ੍ਹਦੀ ਬਰੇਸ ਦੇ ਬੱਚਿਆਂ ਨੂੰ ਇਹ ਗੱਲ ਕਹਿਤੀ ਕਿ ਆ ਵੇਖ ਲੋ ਵੈਸਟਰਨ ਵਰਲਡ ਤੁਹਾਡੇ ਨਹੀਂ ਖਿਲਾਫ ਤੁਹਾਡੇ ਧਰਮ ਦੇ ਖਿਲਾਫ ਸੇਮ ਲਿਬਰਲ ਮੁਸਲਮ ਗਰੁੱਪਾਂ ਵੱਲੋਂ ਲੋਕਾਂ ਦੇ ਵਿੱਚ ਬਹਿ ਕੇ ਗੱਲਾਂ ਕੀਤੀਆਂ ਜਿਹੜੀਆਂ ਉਹ ਪਿੱਛੇ ਉਹਨਾਂ ਨੇ ਤੱਕ ਦਿੱਤੀ ਇਸ ਵਹਿਮ ਕਰਕੇ ਬਹੁਤ ਵੱਡਾ ਸਨੇਹਾ ਦੇਣ ਦੀ ਕੋਸ਼ਿਸ਼ ਮਸੂਮ ਲੋਕ ਕਰ ਰਹੇ ਨੇ ਕਿ ਸਾਡੀ ਕੁਰਾਨੇ ਸ਼ਰੀਫ ਦੇ ਵਿੱਚ ਅਜਿਹੀਆਂ ਚੀਜ਼ਾਂ ਨਹੀਂ ਲਿਖੀਆਂ। ਕੁਰਾਨ ਸਪੀਕ ਇੱਕ ਸ਼ੋਅ ਆਉਂਦਾ ਵਿਜ਼ਨ ਤੇ ਉਹਦੇ ਚ ਦੱਸਦੇ ਆ ਇੱਥੇ ਦੇ ਪੜ੍ਹੇ ਲਿਖੇ ਕਿ ਨਹੀਂ ਇਹ ਜਹ ਹੈ ਨਹੀਂ ਔਰ ਹੈ ਵੀ ਨਹੀਂ ਕਿਸੇ ਦੇ ਧਰਮ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਕਤਲੋਗਾਰਦ ਕਰੋ। ਪਰ ਫਿਰ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਕੰਟਰੋਲ ਚ ਢੀ। ਇਹ ਦੁਨੀਆ ਚੱਲਦੀ ਰਹਿਣੀ ਆ ਕੁਝ ਕਿਸਮਤ ਵੱਡ ਕਿਸਮ ਦੀ ਕਰਕੇ ਵੱਡੇ ਜਿਹੜੇ ਹਮਲੇ ਹੋਏ ਪਿਛਲੇ ਦਸ ਸਾਲਾਂ ਚ ਉਹਨਾਂ ਦੇ ਵਿੱਚ ਮੁਸਲਮਤਵਾਦੀ ਜਿਹੜੇ ਸੰਗਠਨ ਨੇ ਉਹ ਸ਼ਾਮਲ ਸੀ ਆਈਸਿਸ ਤੇ ਹਾਕਦਾ ਤੇ ਬੈਸਟ ਉਸ ਗਲਤ ਪੱਕਾ ਹੋ ਦੋਨੇ ਪਾਸਿਓਂ ਮਾਰਾ ਇਹਦੇ ਚ ਮੁਸਲਮ ਧਰਮ ਵੀ ਟਾਰਗੇਟ ਹੋ ਗਿਆ ਤੇ ਨਾਲ ਹੀ ਉਹਨਾਂ ਦੇ ਖਿਲਾਫ ਲੜਨ ਲਈ ਅਮਰੀਕਨ ਫੌਜਾਂ ਅਮਰੀਕਨ ਵਾਲਾ ਬਾਰੂਦ ਤੇ ਸਾਰੀਆਂ ਚੀਜ਼ਾਂ ਵੀ ਨਾਲੇ ਇੱਕ ਇੰਡਸਟਰੀ ਚੱਲ ਪਈ ਨਾਲ ਦੋਨੇ ਪਾਸੇ ਫਾਇਦਾ ਰਬੂਤਾ ਹੋ ਗਏ ਜਿੱਧਰ ਮਰਜੀ ਗਿਰਜੇ ਜਾਂ ਉੱਪਰ ਕਰਦ ਗਿਰਜੇ ਚਾਕੂ ਗਿਰਜੇ ਤਾਂ ਵੱਡੇ ਹੀ ਜਾਣਾ ਦੋਨੋਂ ਟਰੰਪ ਦਾ ਇਹ ਗੱਲ ਜਿਹੜੀ ਅੰਦਰੋਂ ਨਿਕਲ ਕੋਈ ਨਾ ਕੋਈ ਆ ਲੱਖ ਬੰਦਾ ਡੈਪਿਊਟ ਕਰਨ ਦੇ ਨੈਸ਼ਨਲ ਗਾਰਡ ਦੀ ਗੱਲ ਨਿਕਲੀ ਉਸ ਅੱਜ ਬਹੁਤ ਵੱਡੀ ਉਹਦੀ ਗੱਲ ਹੋਈ ਹੈ ਵਪਾਰਕ ਸੰਦੇਸ਼ ਔਰ ਕੀ ਦੇ ਸ਼ਰਬਰਾਨ ਸ਼ਹਿਰ ਉਹਨੂੰ ਵੀਰਾਨ ਸਹਿਰ ਉਹਦਾ ਵੀਆਈਆਰ ਐਡੀਸੀ ਐਸਈਚ ਆਈਆਰ ਯਾ ਪੰਜਾਬੀ ਚੁਣ ਕੇ ਵੀਰਾਂਨ ਸਹਿਰ ਹੋ ਕਿਜ਼ਤੀਕੇ ਨਾਲ ਕਹਿੰਦੇ ਹੋਣਗੇ ਉੱਥੇ ਜੱਜਾਂ ਦੇ ਘਰ ਕੋਲ ਇੱਕ ਬੰਬ ਫਟਿਆ ਇੱਕ ਜਣਾ ਮਾਰਿਆ ਗਿਆ ਕੁਰਦਿਸ਼ ਲੋਕ ਇੱਥੇ ਰਹਿੰਦੇ ਆ ਹਲੇ ਤੱਕ ਕਾਰਨ ਨਹੀਂ ਪਤਾ ਲੱਗਿਆ ਖਬਰਾਂ ਖਬਰਾਂ ਤੋਂ ਬਾਅਦ ਵਾਪਸ ਆਉਣਾ ਜੀ ਬੀਸੀ ਸਰਕਾਰ ਪਿੰਡਾਂ ਦੀ ਫੈਡਰਲ ਸਰਕਾਰ ਨਾਲ ਇੱਕ ਨਵੀਂ ਹੈਲਥ ਕੇਅਰ ਸਮਝੌਤੇ ਤੇ ਸਹੀ ਪਾਰਹੀ ਹੈ ਨਿਡਾਦੀ ਫੈਡਰਲ ਸਿਹਤ ਮੰਤਰੀ ਜੇਨ ਫਿਲਪਟ ਰਜਮੈਂਟ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਬੀਸੀ ਦੇ ਸਿਹਤ ਮੰਤਰੀ ਟੈਰੀ ਲੇਕਰੌਨ ਮਿਲ ਕੇ ਅਹਿਮ ਸਮਝੌਤੇ ਤੇ ਸਹੀ ਪਾਈ ਜਾ ਰਹੀ ਹੈ ਇਸ ਸਮਝੌਤੇ ਅਸਰੇ ਚਰਨ ਮਗਰੋਂ ਹੁਣ ਬੀਸੀ ਨੂੰ ਹੋਮ ਕੇਅਰ ਅਤੇ ਮੈਂਟਲ ਹੈਲਥ ਲਈ ਨਵੀਂ ਫੈਡਰਲ ਫੰਡਿੰਗ ਮਿਲਣੀ ਸ਼ੁਰੂ ਹੋ ਜਾਏਗੀ ਫੈਡਰਲ ਸਰਕਾਰ ਆਪਣਾ ਹਿੱਸਾ ਦੇਵੇਗੀ ਫੈਡਰਲ ਸਰਕਾਰ ਸੂਬੇ ਵਿੱਚ ਫੈਲੇ ਨਸ਼ਿਆਂ ਦੇ ਸੰਕਟ ਨਾਲ ਨਿਪਟਣ ਲਈ ਵੀ ਸੂਬਾਈ ਸਰਕਾਰ ਨੂੰ ਸਹਾਇਤਾ ਦੇਵੇਗੀ ਦਸਨ जोग है ਕਿ बीसी ਵਿੱਚ ਪਿਛਲੇ ਸਾਲ ਨਸ਼ਾ ਦਾ ਵਧੇਰੇ ਮਾਤਰਾ ਵਿੱਚ ਸੇਵਨ ਕਰਨ ਤੇ 900 ਤੋਂ ਵਧੇਰੇ ਮੌਤਾਂ ਹੋਈਆਂ डाउन ਵੈਨਕੂਰ इलाके ਡਾਊਨਟਾਊਨ ਇਲਾਕੇ ਵਿੱਚ ਇਹ ਸੰਕਟ ਗਹਿਰਾਇਆ ਹੋਇਆ ਹੈ ਬੀਸੀ ਸਰਕਾਰ ਪਹਿਲਾਂ ਹੀ ਇਸ ਸੰਕਟ ਨੂੰ ਨਿਪਟਨ ਲਈ ਸਿਭਾਈ ਪੱਧਰ ਤੇ ਸਿਹਤ ਹੋਰ ਵਧੇਰੇ ਫੰਡਾਂ ਦੀ ਮੰਗ ਕੀਤੀ ਜਾ ਰਹੀ ਸੀ ਦੱਸਣਯੋਗ ਹੈ ਕਿ 온ਟਾਰੀਓ, ਕੂਬੈਕ, ਮੈਨਟੋਬਾ ਤੇ ਅਲਬਰਟਾ ਵੱਲੋਂ ਹੈਲਥ케ਅਰ ਡੀਲ ਸੰਬੰਧੀ ਫੈਡਰਲ ਸਰਕਾਰ ਦੀ ਪੇਸ਼ਕਸ਼ ਪ੍ਰਵਾਨ ਨਹੀਂ ਕੀਤੀ ਗਈ ਜਦਕਿ ਪ੍ਰਿੰਸ ਐਡਵਰਡ ਆਈਲੈਂਡ, ਸਸਕੈਚੂਨ, ਨੂਨਾਵਟ, ਯੂਕੋਨ ਅਤੇ ਨਾਰਥ-ਵੈਸਟ ਟੈਰੀਟਰੀਜ਼ ਤੋਂ ਇਲਾਵਾ ਨਿਊ ਬ੍ਰਾਂਜ਼ਵਿਕ, ਨੋਵਾ ਡਾਊਨਟਾਊਨ ਵੈਨਕੂਵਰ ਤੋਂ ਡਾਊਨਟਾਊਨ ਵਿਕਟੋਰੀਆ ਲਈ ਇੱਕ ਨਵੀਂ ਲਗਜ਼ਰੀ ਪਸੰਦਰ ਫੈਰੀ ਬਹਾਰ ਦੀ ਰੁੱਤ ਤੋਂ ਆਪਣੀਆਂ ਸੇਵਾਵਾਂ ਦਿਨੀਆਂ ਸ਼ੁਰੂ ਕਰ ਦੇਵੇਗੀ ਇਸ ਮੌਕੇ ਵੈਨਪੂਰ ਵਿੱਚ ਕ੍ਰੂਜ਼ ਸ਼ਿਪ ਸੇਜ਼ਨ ਜੋਰਾਂ ਤੇ ਹੁੰਦਾ ਇੱਕ ਨਵੀਂ ਵੀ 2V ਐਮਪ੍ਰੈਸ ਫੈਰੀ ਕੈਨੇਡਾ ਪਲੇਸ ਤੋਂ ਚੱਲਿਆ ਕਰੇਗੀ ਅਤੇ ਵਿਕਟੋਰੀਆ ਦੇ ਇਨਰ ਹਾਰਬਰ ਤੱਕ 3.5 ਘੰਟਿਆਂ ਵਿੱਚ ਸਫ਼ਰ ਤੈਅ ਕਰੇਗੀ ਇਸ ਦਾ ਇੱਕ ਪਾਸੇ ਦਾ ਕਿਰਾਇਆ 120 ਡਾਲਰ ਤੋਂ ਲੈ ਕੇ 240 ਡਾਲਰ ਤੱਕ ਹੋਵੇਗਾ ਵਿਕਟੋਰੀਆ ਹਾਰਬਰ ਅਥਾਰਟੀ ਤੋਂ ਇयान ਰਾਬਰਸਟਨ ਨੇ ਕਿਹਾ ਕਿ ਨਵੀਂ ਚੱਲਣ ਵਾਲੀ ਫੈਰੀ ਦਾ BC ਫੈਰੀ ਦੀਆਂ ਸੇਵਾਵਾਂ ਨਾਲ ਕੋਈ ਮੁਕਾਬਲਾ ਨਹੀਂ ਹੋਵੇਗਾ ਉਨ੍ਹਾਂ ਕਿਹਾ ਕਿ ਇਸ ਲਗਜ਼ਰੀ ਫੈਰੀ ਵਿੱਚ ਮੁਸਾਫਰਾਂ ਨੂੰ ਭੋਜਨ ਵੀ ਪਰੋਸਿਆ ਜਾਇਆ ਗੋ ਪਾਰਤ ਦੇ ਕੇਂਦਰ ਸਰਕਾਰ ਨੇ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ਵਧਾਉਣ ਵਾਲੇ ਬਿੱਲ ਨੂੰ ਵਾਪਸ ਭੇਜ ਦਿੱਤਾ ਕੇਜਰੀਵਾਲ ਸਰਕਾਰ ਨੇ ਵਿਧਾਇਕਾਂ ਦੀ ਤਨਖਾਹ ਵਿੱਚ 400% ਵਾਧੇ ਦੀ ਯੋਜਨਾ ਬਣਾਈ ਸੀ ਕੇਂਦਰ ਸਰਕਾਰ ਨੇ ਇਸ ਯੋਜਨਾ ਤੇ ਪਾਣੀ ਫੇਰ ਦਿੱਤਾ ਪ੍ਰਸਤਾਵਿਤ ਬਿੱਲ ਵਿੱਚ ਵਿਧਾਇਕਾਂ ਦੀ ਬੇਸਿਕ ਸੈਲਰੀ ਨੂੰ 12000 ਤੋਂ ਵਧਾ ਕੇ 50000 ਕਰਨ ਅਤੇ ਉਹਨਾਂ ਦੀ ਮਹੀਨੇ ਦੀ ਤਨਖਾਹ 80000 ਤੋਂ ਵਧਾ ਕੇ 2 ਲੱਖ ਤੋਂ ਵਧੇਰੇ ਕਰਨ ਦੀ ਕਿਹਾਡਾ ਸੀ ਕੇਂਦਰ ਸਰਕਾਰ ਕੋਲੋਂ ਹਰੀ ਝੰਡੀ ਨਾ ਮਿਲਣ ਤੇ ਇਹ ਮਾਮਲਾ ਲਟਕਿਆ ਹੋਇਆ ਗ੍ਰਹਿ ਮੰਤਰਾਲੇ ਨੇ ਇੱਕ ਵਾਰ ਫਿਰ ਇਸ ਨੂੰ ਵਾਪਸ ਦਿੱਲੀ ਸਰਕਾਰ ਕੋਲ ਭੇਜ ਦਿੱਤਾ ਹੈ ਫੇਸਬੁੱਕ ਵੱਲੋਂ ਇੱਕ ਅਜਿਹਾ ਸਾਫਟਵੇਅਰ ਤਿਆਰ ਕੀਤਾ ਜਾ ਰਿਹਾ ਜੋ ਅੱਤਵਾਦੀਆਂ ਨੂੰ ਪਛਾਣੇਗਾ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਇੱਕ ਖੁੱਲੀ ਚਿੱਠੀ ਵਿੱਚ ਲਿਖਿਆ ਹੈ ਕਿ ਇੱਕ ਅਜਿਹਾ ਨਵਾਂ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਜੋ ਅੱਤਵਾਦ ਹਿੰਸਾ ਅਤੇ ਬੁਲੰਗ ਨੂੰ ਫੜ ਸਕੇਗਾ ਅਤੇ ਇੱਥੋਂ ਤੱਕ ਕਿ ਆਤਮ ਹੱਤਿਆ ਨੂੰ ਵੀ ਰੋਕ ਸਕੇਗਾ 5500 ਪੰਨਿਆਂ ਦੀ ਆਪਣੀ ਚਿੱਠੀ ਵਿੱਚ ਫੇਸਬੁੱਕ ਦੇ ਭਵਿੱਖ ਬਾਰੇ ਚਰਚਾ ਕਰਦਿਆਂ ਜ਼ੁਕਰਬਰਗ ਨੇ ਕਿਹਾ ਕਿ ਰੋਜ਼ਾਨਾ ਪੋਸਟ ਹੋਣ ਵਾਲੀਆਂ ਅਰਬਾਂ ਪੋਸਟਾਂ ਦੀ ਜਾਂਚ ਕਰਨੀ ਨਾ ਹੈ ਇਸ ਲਈ ਇੱਕ ਜਹਾਨ ਨਮਾ ਸਿਸਟਮ ਆਇਆ ਜਾ ਰਿਹਾ ਹੈ ਜੋ ਟੈਕਸਟ ਪੜ ਸਕੇਗਾ ਅਤੇ ਤਸਵੀਰਾਂ ਦੇ ਨਾਲ ਨਾਲ ਵੀਡੀਓ ਵੀ ਦੇਖ ਸਕੇਗਾ ਅਜਿਹੇ ਪੋਸਟਾਂ ਦੇ ਖਤਰਨਾਕ ਹੋਣ ਬਾਰੇ ਨਿਰਨੇ ਲੈ ਜਾ ਸਕਣਗੇ ਇਹ ਯੋਜਨਾ ਫਿਲਹਾਲ ਸ਼ੁਰੂਆਤੀ ਦੌਰ ਵਿੱਚ ਹੈ ਇੰਟਰਨੈਟ ਤੇ ਸੁਰੱਖਿਆ ਨੂੰ ਲੈ ਕੇ ਅੰਦੋਲਨ ਚਲਾਉਣ ਵਾਲੀ ਇੱਕ ਚੈਰਿਟੀ ਸੰਸਥਾ ਨੇ ਫੇਸਬੁੱਕ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ ਹੈ ਇਸ ਦੇ ਨਾਲ ਹੀ ਖਬਰਾਂ ਦਾ ਐਬਲੀਟਮ ਖਤਮ ਹੋਇਆ ਸੁਣਦੇ ਰਹੋ ਰੇਡੀਓ ਕੇ ਆਰ ਪੀ ਆਈ 1550 ਏ ਐਮ ਮੈਂ ਹਾਂ ਗੁਰਬਾਜ ਸਿੰਘ ਬਰਾੜ ਪਿਛਲੇ ਦਿਨੀ 컨ਟੇਨਰ ਟਰੱਕਿੰਗ ਦੇ ਵਿੱਚ ਰਕ ਚਲਾਉਂਦਾ ਮੁੰਡਾ ਕਮਲਜੀਤ ਸਿੰਘ ਹੁੰਦਲ ਉਹ ਪੂਰੇ ਹੋ ਗਏ ਆ ਦੇ ਸਬੰਧ ਵਿੱਚ ਯੂਟੀਏ ਵੱਲੋਂ ਇੱਕ ਫੰਡ ਰੇਜ਼ਿੰਗ ਇਸ ਐਤਵਾਰ ਨੂੰ 19 ਫਰਵਰੀ ਨੂੰ 11 ਤੋਂ 3:30 ਤੱਕ ਯੂਟੀਏ ਦੇ ਦਫ਼ਤਰ 86 ਤੇ 128 ਤੇ ਉਸ ਦੇ ਪਰਿਵਾਰ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਸਾਰਿਆਂ ਨੂੰ ਖੁੱਲਾ ਸੱਦਾ ਹੈ ਭਾਈਚਾਰੇ ਨੂੰ ਯੂਟੀਏ ਦਾ ਦਫ਼ਤਰ ਹੈ 4642 128 ਸਟਰੀਟ 11 ਤੋਂ ਲੈ ਕੇ 3:30 ਵਜੇ ਤੱਕ ਇਹ ਮਾਇਆ ਇਕੱਠੀ ਕੀਤੀ ਜਾਏਗੀ 604449 499 ਸੌਰੀ 8400 6044499 8400 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਯੂਟੀਏ ਦੇ ਦਫ਼ਤਰ ਚ 8642 128 ਸਟਰੀਟ ਤੇ ਕਮਲਜੀਤ ਸਿੰਘ ਹੁੰਦਲ ਦੇ ਨਿਮਿਤ ਪੈਸੇ ਇਕੱਠੇ ਡਾਲਰ ਕੀਤੇ ਜਾਣਗੇ ਉਸਦੇ ਪਰਿਵਾਰ ਦੇ ਲਈ 604 499 78100 ਤੇ ਹੋਰ ਜਾਣਕਾਰੀ ਲਈ ਜਾ ਸਕਦੀ ਸਖਤੀ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਅੱਜ ਗੱਲਾਂ ਚੱਲਣੀਆਂ ਦਾਦੀਆਂ ਦੀਆਂ ਤੇ ਨਾਨੀਆਂ ਨਾਨੇ ਤੇ ਦਾਦਿਆਂ ਦੀਆਂ ਜਿਹੜੇ ਬਤਾਂ ਸੁਣਾਉਂਦੇ ਸੀ ਛੋਟੇ ਹੁੰਦੇ ਆਪਾਂ ਬੈਂਦੇ ਆਲੇ-ਦਾਲੇ ਉਹਨਾਂ ਦੇ ਬੋਸਲੀ ਨਾਨਕੇ ਇਹ ਗੱਲਾਂ ਬਣਦੀਆਂ ਨਾਨਾ ਨਾਨੀ ਬਹੁਤ ਸੁਣਾਉਂਦੇ ਦੋਹਤਮਾਨ ਦੋਹਤਮਾਨਾਂ ਨਾਲ ਭੈਣਾਂ ਤੇ ਭਾਈ ਜੇ ਇਕੱਠੇ ਜਾਂਦੇ ਉੱਡੇ ਫਿਰਦੇ ਕਰਦਾ ਨਾ ਕੋਈ ਰੋਕ ਨਾ ਕੋਈ ਟੋਕਦਾ ਮਾਮੀਆਂ ਬੁੱਕਲ ਚ ਲੈ ਕੇ ਤੇ ਕਰਦੀਆਂ ਨਾਨਾ ਨਾਨੀ ਖੀਸੇ ਦੇ ਵਿੱਚੋਂ ਕੱਢ ਕੇ ਰੁਪਈਏ ਦਿੰਦੇ ਬੁੱਲੇ ਲੁੱਟਦੇ ਸਾਰਾ ਪਿੰਡ ਦੋਹਤਮਾਨ ਕਹਿੰਦਾ ਉਹ ਬਾਣ ਜਾ ਕੇ ਹੋਣਾ ਕੁਛ ਤੇ ਫਿਰ ਪੂਰੀ ਉਥੇ ਨਾਨਕਿਆਂ ਦੇ ਪਿੰਡ ਬਦਮਾਸ਼ੀ ਕਿਸੇ ਨੇ ਕੁਝ ਟੋਕਣਾ ਨਾ ਮਸਾਂ ਛੁੱਟੀਆਂ ਗਰਮੀ ਦੀਆਂ ਜਿਹ ਮਹੀਨਾ ਰਹਿੰਦੇ ਜਦ ਕਹਿਣਾ ਉਹ ਪੇਪ ਕ ਜਾ ਕੇ ਕਾगज ਪੱਤਰ ਵੀ ਤਿਆਰ ਕਰਨੇ ਆ ਕੰਮ ਸਕੂਲ ਦਾ ਹਲੇ ਕੀਤਾ ਨਹੀਂ ਹੱਥ ਤੱਕ ਪਹਿਲਾਂ ਜਦ ਮਾਵਾ ਨੇ ਲੈਣ ਜਾਣਾ ਫਿਰ ਕਹਿਣਾ ਰਹਿਣ ਦੋ ਇੱਕ ਦਿਨ ਹੋਰ ਰਹਿ ਲਓ ਇਸ ਤਰ੍ਹਾਂ ਕਰਦੇ ਕਰਦੇ ਛੁੱਟੀਆਂ ਮੁੱਕ ਜਾਣੀਆਂ ਫਿਰ ਦਿਨ ਰਾਤ ਕਰਕੇ ਟੋਪੋ ਚੱਲਣੀ ਅਕਸਰ ਕੁੜੀਆਂ ਪਹਿਲਾਂ ਕੰਮ ਕਰ ਲੈਂਦੀਆਂ ਉਹਨਾਂ ਤੋਂ ਪੇਪਰ ਚੱਕਣੇ ਉਹਨਾਂ ਦੀਆਂ ਕਾਪੀਆਂ ਚੱਕਣੀਆਂ ਦੇ ਲੈਂ ਨਕਲ ਤੇ ਨਕਲ ਫਿਰ ਦੂਜੇ ਦਿਨ ਹਿੰਦੀ ਵਾਲੀ ਭੈਣ ਜੀ ਦੇ ਸਰਮਖ ਹੋਣਾ ਜਾ ਕੇ ਪਹਿਲੇ ਦਿਨ ਕੰਮ ਹੀ ਚੱਕ ਹੋਣਾ ਬੈਂਤ ਲਿਆ ਕੇ ਰੱਖ ਲੈਣਾ ਬੈਂਤ ਉੱਥੇ ਰਹਿਣਾ ਤੇ ਮਾਸਟਰ ਬਦਲੀ ਜਾਣੇ ਪਰ ਨਾਨਕਿਆਂ ਦੇ ਪਿੰਡ ਨਾਨਾ ਨਾਨੀ ਦੀ ਬੁੱਕਲ 'ਚ ਬਹਿ ਕੇ ਠੰਡ ਦੇ ਸਮੇਂ ਜਾਂ ਗਰਮੀ ਦੇ ਸਮੇਂ ਕੋਠੇ ਤੇ ਬਾਤਾਂ ਸੁਣੀਆਂ ਜਾਂਦੀਆਂ ਬਾਤਾਂ ਬਹੁਤ ਪਾਉਂਦੇ ਬਾਤਾਂ ਤੇ ਕਿਤਾਬਾਂ ਬੜੀਆਂ ਲਿਖੀਆਂ ਮਾਲਵੇ ਦੀਆਂ ਬਾਤਾਂ ਮਾਝੇ ਦੀਆਂ ਦੁਆਬੇ ਦੀਆਂ ਬਸ ਉਹ ਤੋਰ ਲੰਦੇ ਇੱਕ ਰਾਜਾ ਹੁੰਦਾ ਸੀ ਉਹਦੇ ਤਿੰਨ ਰਾਣੀਆਂ ਸੀ ਤਿੰਨਾਂ ਰਾਣੀਆਂ ਦੇ ਘਾਂ 6 ਜਵਾਕ ਸੀ ਇੱਕ ਜਵਾਕ ਖਰੂਦੀ ਸੀ ਤੇ ਅਰਗਾ ਵਿੱਚ ਚੈਹ ਦੇਣਾ बस ओ जवाख ज्यों करो तुरया लबया ना पिछे राणा राजे ते उदे हलकर चले गए गाहा जंगल चले गए जंगल डाकू दाकु सी डाकू ने राजा फड़ लिया राजे नु ਛणावण गईया रानियां भी फाल लिया पर जा हाहाकार मच गई मुंडा लब्बे ना बस ज्यों गाहा गा, पक्का कुछ नहीं हुंदा ना बेसिक आइडिया हुंदा जाननी चोर ते किसे दहुद कहानियां इश्क मशूकी वाली नहीं सी सुनांदे धर्म कर्म वाली सुनांदे शाणी कौलां दी सुनांदे ਜੋ ਕੋਲਾ ਨੂੰ ਤੋਰਨਾ ਭੱਠੀ ਤੇ ਲਿਆ ਕੇ ਬਿਠਾਉਣਾ ਭੱਠੀ ਤੋਂ ਉੱਥੋਂ ਹੀ ਅੱਛਾ ਬਾਪੂ ਜੀ ਕੱਲ ਨੂੰ ਜਦ ਗੱਲਾਂ ਕਰਦੇ ਕਰਦੇ ਹੰਗਾਰਾ ਜੀ ਨੇ ਨਾਂ ਪੜਨਾ ਉਸੇ ਸਮੇਂ ਕਹਾਣੀ ਬੰਦ ਹੰਗਾਰਾ ਜਿਹੜਾ ਰਹੇ ਚਾਹੇ 10 ਵੱਜ ਜਾਣ 11 ਵੱਜ ਜਾਣ ਹੰਗਾਰਾ ਪਰਦੇ ਪਰਦੇ ਪਰਦੇ ਜਸ ਸੌਂਗੇ ਉੱਥੋਂ ਦੂਜੇ ਦਿਨ ਫੇਰ ਕਹਾਣੀ ਸ਼ੁਰੂ ਅੱਛਾ ਠੀ ਤੋਂ ਦਾ ਕੀ ਬਣਿਆ ਨਾਨਾ ਜੀ ਉੱਥੋਂ ਫੇਰ ਤੁਰ ਪੈਣੀ ਗੱਲ ਘੰਟਿਆਂ ਵੱਧੀ ਜਿਹੜਾ ਇਹ ਕਹਾਣੀ ਜਿਹੜੀ ਆ ਪੈਂਦੀਆਂ ਰਹਿੰਦੀਆਂ ਬਾਤਾਂ ਪੈਂਦੀਆਂ ਰਹਿੰਦੀਆਂ ਬਾਤਾਂ ਦੀ ਗੱਲ ਕਰਨੀ ਹੈ 1843 247 1550 ਵਪਾਰਕ ਸੰਦੇਸ਼ਾਂ ਤੋਂ ਬਾਅਦ ਮੇਰਾ ਪਿੰਡ ਮੇਰੇ ਖੇਤ ਚ ਹਾਜ਼ਰੀ ਲਵਾਓ ਸਹਾਇੰਦਰਪ ਸਿੰਘ ਟਵਾਣਾ ਜੀ ਲਾਈਨ ਨੰਬਰ 2 ਤੁਸੀਂ ਏਰ ਤੇ ਹੋ ਕੋਲ ਰਹਦੇ ਹੁੰਦੇ ਸੀਗੇ ਸ਼ੁਰੂ ਤੋਂ ਇਫ ਉਹ ਤੇ ਉਹ ਰਹਿੰਦੇ ਸੀ ਸੀ ਸਾਡੇ ਡੈਡੀ ਉਹਨਾਂ ਤੋਂ ਤੇ ਜਿਵੇਂ ਵੱਡੀ ਭੂਆ ਦਾਦੀ ਸਮਝ ਲਓ ਦਾਦੀ ਵਾਲੇ ਰੋਲ ਸੀਗਾ ਉਹਨਾਂ ਦਾ ਵੀ ਤੇ ਉਹਨਾਂ ਨੇ ਜਦੋਂ ਬਾਤ ਪਾਉਣੀ ਨਾ ਇੱਕ ਪਹਿਲਾਂ ਉਹ ਪਤਾ ਨਹੀਂ ਪੜਦੇ ਹੁੰਦੇ ਸੀ ਕੁਛ ਨਾ ਮਹਾਰਾਜਾ ਬਾਤ ਨੂੰ ਪਾਵਾ ਬਤੋਲੀ ਕੁਛ ਐ ਜੇ ਪਾਤਾ ਪਤਾ ਨਹੀਂ ਕੁਛ ਐ ਜੀ ਕੋਈ ਵਰਡ ਸੀਗਾ ਮੈਂ ਹੁਣ ਭੁੱਲ ਗਿਆ ਨਾ ਪਾਤਾ ਵਿੱਚੋਂ ਬਾਤ ਨੂੰ ਪਾਵਾ ਬਤੋਲੀ ਇੱਕ ਜਿਹੜੀ ਉਹ ਸੀਗਾ ਉਹਨਾਂ ਦਾ ਜਿਵੇਂ ਆਪਾਂ ਬਾਤਾਂ ਦਾ ਦੇਖ ਲਓ ਸੀਗਾ ਇੱਕੋ ਬਾਤ ਨੂੰ ਨਾ ਥੋੜੇ ਦਿਨਾਂ ਬਾਅਦ ਫੇਰ ਸੁਣਾ ਦਿਓ ਜੀ ਬਾਤ ਦਾ ਸਾਰਾ ਪਤਾ ਹੁੰਦਾ ਸੀ ਸਿਰਫ ਆਪਣਾ ਉਹਨਾਂ ਦਾ ਸੁਣਾਉਣ ਦਾ ਢੰਗ ਤੇ ਨੇ ਕਹਿਣਾ ਥੋੜੀ ਥੋੜੀ ਦੇਰ ਬਾਅਦ ਵੀ ਤੂੰ ਹੰਗਾਰਾ ਦਾ ਭਰਦਾ ਨਹੀਂ ਤੂੰ ਸੌਂ ਗਿਆ ਮੈਂ ਨਹੀਂ ਸੁਣਾਉਂਦੀ ਫਿਰ ਐ ਫਿਰ ਭੂਆ ਨੇ ਨਾ ਵੀ ਕਰਨਾ ਤੇ ਨਾਲ ਹੰਗਾਰਾ ਭਰਨਾ ਜ਼ਰੂਰੀ ਸੀਗਾ ਨਹੀਂ ਫਿਰ ਸਿਆਣੇ ਕਈ ਵਾਰੀ ਗੁੱਸੇ ਹੋ ਜਾਂਦੇ ਜਾਂ ਕਹਿੰਦੇ ਸੌਂ ਗਿਆ ਚੱਲ ਤੇ ਉਹ ਉੱਥੇ ਬੰਦ ਕਰ ਦਿੰਦੇ ਜਦੋਂ ਹੰਗਾਰਾ ਬੰਦ ਹੋ ਗਿਆ ਉਹਨੂੰ ਪਤਾ ਵੀ ਬੰਦਾ ਸੌ ਗਿਆ ਤੇ ਬਾਤ ਦਾ ਇੱਕ ਬਾਤ ਜਿਆਦਾ ਸੁਣਨ ਦਾ ਮਜ਼ਾ ਆਉਂਦਾ ਸੀ ਜਦੋਂ ਗਰਮੀਆਂ 'ਚ ਨਾ ਉੱਪਰ ਮੰੰਜਾ ਡਾਹਿਆ ਹੋਣਾ ਜਿਵੇਂ ਚ ਆਪਣੇ ਕੋਠੇ ਦੇ ਮਤਲਬ ਉਹ ਰਾਤ ਨੂੰ ਜਿਹੜਾ ਮਾਹੌਲ ਹੁੰਦਾ ਸੀ ਉਹ ਮਾਹੌਲ ਨੂੰ ਸਿਰਜਿਆ ਨਹੀਂ ਜਾ ਸਕਦਾ ਅੱਜ ਦੇ ਟਾਈਮ 'ਚ ਜਿਵੇਂ ਉੱਪਰ ਪੈ ਕੇ ਸਾਰਾ ਉੱਪਰ ਨੂੰ ਬੰਦੇ ਨੇ ਦੇਖੀ ਵੀ ਉੱਥੇ ਘੁੰਮਣਾ ਜਿਵੇਂ ਬਾਦਸ਼ਾਹ ਦੀ ਵੀ ਚਲੇ ਜਾਣਾ ਵੀ ਕਿਵੇਂ ਰਾਜਾ ਆਉਂਦਾ ਹੋਊਗਾ ਇੱਕ ਜਿਹੜਾ ਸੀਤਾ ਦੇ ਬਾਪ ਵਾਲੀ ਸੀਗੀ ਉਹ ਕੁੜੀ ਦੱਬੀ ਹੋਈ ਦੀ ਬਾਤ ਉਹ ਉੱਥੇ ਪਹੁੰਚ ਜਾਣਾ ਦਿਮਾਗ ਨੂੰ ਬੜਾ ਘੁੰਮਦਾ ਸੀ ਜਿਵੇਂ ਫਿਲਮ ਚੱਲਣ ਲਾਈ ਦੀ ਸੀ ਬਾਤ ਉਹਦੇ ਨਾਲ ਧੰਨਵਾਦ ਵੀਰ ਜੀ ਇਹ ਮੇਰੀ ਯਾਦ ਹਾਂਜੀ ਧੰਨਵਾਦ ਜੀ ਅੱਛਾ ਤਜ਼ਰਬਾ ਬਹੁਤ ਹੁੰਦਾ ਸੀ ਨਵੇੜ ਦੇ ਨੇ ਕਿਹੜਾ ਥੀਸਿਸ ਲਿਖਿਆ ਹੁੰਦਾ ਹੈ ਤਹੂਦ ਬਾਦਸ਼ਾਹ ਤੇ ਤੁਰਦਾ ਫਿਰਦਾ ਬਾਪੂ ਜਾਂਦਾ ਤੋਰੀ ਜਾਂਦਾ ਕਰ ਆਪਾਂ ਨੂੰ ਐ ਬਈ ਬੱਲਾ ਬੱਲਾ ਬੱਲਾ ਦੇਖ ਓਏ ਰਾਣੀ ਸੀ ਇਹ ਤਾਂ ਪੱਠੀ ਤੇ ਬਿਠਾਦੀ ਕੌਲਾ ਬੀਰੋਂ ਉਠਾ ਵਾਲਿਓ ਵੇ ਕਿਸਨੇਹਾ ਲੈ ਜਿਓ ਕੌਲਾ ਪੱਠੀ ਤੇ ਬੈਠੀ ਆ ਜੇ ਖਾਸਾ ਕੁਝ ਚੱਲਦਾ ਪਰ ਬਹੁਤ ਵੱਡੀਆਂ ਗੱਲਾਂ ਛੋਟੀ ਉਮਰ ਚ ਸੋਹਣੀਆਂ ਲੱਗਦੀਆਂ ਸ੍ਰੀ ਆਤਮਜੀਤ ਸਿੰਘ ਲਾਈ ਨੰਬਰ 3 ਜਲਸਾ ਸਸਿਕਾ ਜੀ ਹਮ ਜਲਸਾ ਸਸਿਕਾ ਜੀ ਆਪ ਥੋੜੀ ਜੀ ਗੱਲ ਆ ਪਰ ਬਹੁਤ ਦਿਲ ਦੁਖੀ ਹੋਇਆ ਭਾਈ ਜੀ ਦੀ ਡੈਕਸਾ ਸੁਣ ਕੇ ਇਟਸ ਰੀਲੀ ਸੈਡਨਿੰਗ ਬਟ ਤੁਸੀਂ ਵੀ ਬਹੁਤ ਪ੍ਰਚਾਰ ਕਰਦੇ ਹੋ ਤੇ ਥੋੜਾ ਇਹਨਾਂ ਨੂੰ ਹੋਰ ਵੀ ਤੁਸੀਂ ਮਿਲਦੇ ਹੋ ਪੰਟੇਰ ਵਾਲਿਆਂ ਨੂੰ ਸਾਰਿਆਂ ਨੂੰ ਤੇ ਬਾਈ ਸੈਂਡ ਹੋਣੀ ਵੀ ਬਹੁਤ ਵਾਰੀ ਆਉਂਦੇ ਇਹਨਾਂ ਦੀ ਇੰਸ਼ੂਰੈਂਸ ਦਾ ਜ਼ਰੂਰ ਕਰਾਇਆ ਕਰਨ ਆਪਣੇ ਬਾਈ ਹੋਣੀ ਆਪਾਂ ਸਾਰੇ ਘਰ ਕੇ ਕਰਦੇ ਆਂ ਜ਼ਿੰਮੇਵਾਰੀ ਵੀ ਚੱਕਣੀ ਚਾਹੀਦੀ ਗੱਲ ਕੋੜੀ ਲੱਗੂਗੀ ਕਈਆਂ ਨੂੰ ਬਟ ਤੁਸੀਂ ਬਹੁਤ ਪ੍ਰਚਾਰ ਕਰਦੇ ਹੋ ਫਿਰ ਵੀ ਸਾਡੇ ਲੋਕ ਦੇਖ ਲੋ ਹਿਸਾਬ ਨਾਲ ਕੰਮ ਕਰਦੇ ਬਹੁਤ ਧੰਨਵਾਦੀ ਧੰਨਵਾਦੀ ਆਤਮਜੀਤ ਸਿੰਘ ਦਿਵਾਨਾ ਜੀ ਆਲਮਜੀਤ ਸਿੰਘ ਜੀ ਜੀ ਬੱਤ ਡਾਡਾ ਦਾ ਦਰਸ਼ਨਾਂ ਸਰ ਤੇ ਬਾਪੂ ਜੀ ਨੇ ਬੇਬੇ ਹੀ ਸੁਣਾ ਦੇ ਹੁੰਦੇ ਸੀਗੇ ਉਹ ਸੁਣਾ ਦੇ ਬਾਈ ਕਹਾਣੀ ਰੂਪਕੰਤ ਦੀ ਹੂੰ ਸਾਦੀ ਉਸ ਠੀਕ ਆ ਜੀ ਦੱਸੋ ਹਾਂ ਜੀ ਰੂਪਕੰਤ ਦੀ ਕਹਾਣੀ ਸੁਣਾਉਣੀ ਸੀ ਫਿਰ ਅੱਜ ਕਹਾਣੀ ਸੁਣਾਉਣਾ ਸੌ ਜਾਣਾ ਫਿਰ ਦੂਜੇ ਫੇਰ ਅਸੀਂ ਕਹਿੰਦਾ ਸੁਣਾਓ ਜੇ ਉਹ ਕਹਾਣੀ ਨਾ ਫੇਰ ਸਾਡੇ ਰੂਪਕੰਤ ਉਹ ਵੀ ਕਈ ਕਹਾਣੀ ਸੁਣਾਉਂਦੇ ਸੀ ਪਰ ਸਾਨੂੰ ਰੂਪਕੰਤ ਦੀ ਵਾਈਫ ਸੁਣਾਉਣੀ ਸੀ ਅਸੀਂ ਕਹਿੰਦਾ ਵਹਾਸਤ ਫੇਰ ਕਹਿੰਦਾ ਹਾਂ ਤਾਂ ਦੀ ਹੀ ਸੁਣਾਓ ਸਨਵਾ ਜੀ ਨਵਦੀਪ ਸਿੰਘ ਸਿੱਧਾ ਪਾਈ ਨੰਬਰ 2 ਮਾਤੀਆ ਬਾਤਾਂ ਜਿਹੜੀਆਂ ਇੱਕ ਕਿਤਾਬ ਵੀ ਕਿਸੇ ਨੇ ਲਿਖੀ ਨੀ ਨਵਦੀਪ ਨੇ ਸ਼ਾਇਦ ਲਿਖੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਾਂ ਕਿਤਾਬ ਲਿਖੀ ਸੀ ਹਾਂਜੀ ਹਾਂਜੀ ਉਹ ਮੈਂ ਹੀ ਲਿਖੀ ਸੀ ਅੱਛਾ ਦੱਸੋ ਫਿਰ ਉਸ ਹੁਣ ਆਪਣੀ ਜ਼ਿੰਦਗੀ ਦੀ ਗੱਲ ਦੱਸ ਹਾਂਜੀ ਮੈਂ ਹੀ ਦੂਜਾ ਮੈਂ ਮੈਂ ਕਿਸੀ ਪੰਜਾਬੀ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤੇ ਉੱਥੋਂ ਫਿਰ ਮੈਨੂੰ ਕਿਸੇ ਨੇ ਕਿਹਾ ਵੀ ਬਾਤਾਂ ਦੇ ਉੱਤੇ ਕੰਮ ਹੋਣ ਵਾਲਾ ਤੇ ਮੈਂ ਪਿੰਡਾਂ ਦੇ ਵਿੱਚ ਜਾ ਕੇ ਜਿਵੇਂ ਹਾਲਾਤ ਵੀ ਇਹੋ ਜਿਹੀ ਸੀਗੇ ਜੀ ਤੇ ਉਹ ਮੈਂ ਜਿਵੇਂ ਪਿੰਡਾਂ ਜਿਹੜੇ ਮੇਰੇ ਦੋਸਤ ਹੁੰਦੇ ਸੀਗੇ ਜਿਵੇਂ ਯੂਨੀਵਰਸਿਟੀ ਨਾਲ ਪੜ੍ਹਦੇ ਸੀਗੇ ਉਹਨਾਂ ਨੂੰ ਕਹਿ ਦੇਣਾ ਵੀ ਜੇ ਕੋਈ ਤੁਹਾਡੇ ਪਿੰਡ ਬਾਤਾਂ ਜਾਣਦਾ ਹੋਇਆ ਤੇ ਤੁਸੀਂ ਮੈਨੂੰ ਦੱਸਿਓ ਤੇ ਉਹ ਜਦੋਂ ਸਿਰਫ ਉਸ ਪੈਣ ਜਾ ਕੇ ਫਿਰ ਜਾ ਕੇ ਬਾਤਾਂ ਸੁਣਨੀਆਂ ਹੀ ਤੇ ਉਹ ਤਾਂ ਇੱਕ ਵੱਖਰਾ ਹੀ ਸਵਾਦ ਸੀਗਾ ਜੀ ਤੇ ਉਦੋਂ ਬਾਅਦ ਵਿੱਚ ਫਿਰ ਮੈਂ ਉਹਨਾਂ ਨੂੰ ਲਿਖਿਆ ਉਵੇਂ ਅੱਖਰ ਅੱਖਰ ਜਿਵੇਂ ਜਿਵੇਂ ਕਿਸੇ ਨੇ ਸੁਣਾਈਆਂ ਸੀਗੀਆਂ ਤੇ ਜਿਹੜਾ ਉਹ ਟਾਈਮ ਸੀਗਾ ਜੀ ਬੜਾ ਵਧੀਆ ਟਾਈਮ ਸੀਗਾ ਮੈਂ ਤੁਹਾਨੂੰ ਜਮਈ ਨਿੱਕੀ ਜਿਹੀ ਬਾਤ ਸੁਣਾਉਣਾ ਕੋਈ ਬੰਦਾ ਕਹਿੰਦਾ ਨਾ ਇਹ ਚਾਰ ਬੰਦੇ ਇਕੱਠੇ ਹੋ ਗਏ ਕਹਿੰਦੇ ਵੀ ਬੰਦਾ ਤਾਂ ਚੋ ਗਲਤੀਆਂ ਕਰਦਾ ਹੀ ਕਰਦਾ ਵੀ ਆਪਾਂ ਰੱਬ ਦੀਆਂ ਗਲਤੀਆਂ ਲੱਭਣ ਤੇ ਉਹ ਤੁਰ ਪੈਂਦੇ ਘਰੋਂ ਤੇ ਖਦਵਾਨਿਆਂ ਮਤੀਰੇ ਵੀ ਕਹਿੰਦੇ ਨੇ ਉਹਨਾਂ ਨੂੰ ਖਦਵਾਨਿਆਂ ਦੀ ਵੇਲ ਆ ਗਈ ਤੇ ਕਹਿੰਦੇ ਲੈ ਖਲੋ ਰੱਬ ਦੀ ਪਹਿਲੀ ਗਲਤੀ ਅ ਬੇਲ ਆ ਫਲ ਦੇਖ ਲੋ ਕਿਵੇਂ 5-5 7-7 ਕਿਲੋ ਦੇ ਲਾਏ ਪਏ ਆ ਉਹ ਕਹਿੰਦੇ ਹਾਂ ਵੀ ਇਹ ਰੱਬ ਨੇ ਬਹੁਤ ਵੱਡੀ ਗਲਤੀ ਕੀਤੀ ਆ ਤੇ ਗਾਂ ਤੁਰ ਪਈ ਤੇ ਅੱਗੇ ਗਾਂ ਬੋੜ ਦਾ ਬਹੁਤ ਭਾਰੀ ਦਰਖਤ ਆ ਗਿਆ ਉਹ ਕਹਿੰਦੇ ਵੀ ਲਿਖ ਰੱਬ ਦੀ ਦੂਜੀ ਗਲਤੀ ਕਹਿੰਦਾ ਵੀ ਦੂਜਾ ਵੀ ਆ ਦੇਖੋ ਦਰਖਤ ਕਿੱਡਾ ਵੱਡਾ ਤੇ ਫਾਲ ਉਹਦੀਆਂ ਜਿਵੇਂ ਗੋਲਾਂ ਹੁੰਦੀਆਂ ਜੀ ਉਹ ਆਪਾਂ ਨੂੰ ਪਤਾ ਕਿੰਨੀਆਂ ਛੋਟੀਆਂ ਹੁੰਦੀਆਂ ਕਹਿੰਦੇ ਵੀ ਹਾਂ ਵੀ ਇਹ ਰੱਬ ਦੀ ਦੂਜੀ ਗਲਤੀ ਆ ਇੰਨੇ ਕਹਿੰਦੇ ਗਰਮੀ ਹੈਗੀ ਆ ਵੀ ਚਲੋ ਆਪਾਂ ਬੋੜ ਦੇ ਥੱਲੇ ਬਹਿ ਜੀਏ ਬੰਦ ਆਰਾਮ ਕਰ ਲਈਏ ਉਹ ਥੱਲੇ ਬਹਿ ਗਏ ਉਤੋਂ ਕਿਸੇ ਜਾਨਵਰ ਨੇ ਗੋਲ ਠੂੰਗੀ ਇੱਕ ਦੇ ਦੂਜਾ ਸਿਰ ਤੇ ਵੱਜੀ ਆ ਕੇ ਕੰਨਾ ਮੋੜ ਪੋਏ ਰੱਬ ਨੇ ਮੇਰੀ ਗੱਲਾਂ ਕੀਤੀਆਂ ਤੇ ਇੱਥੇ ਜੇ ਕਿਤੇ ਹਦਵਾਣੇ ਲੱਗੇ ਹੁੰਦੇ ਮੇਰਾ ਹੋ ਗਿਆ ਸੀ ਕੰਮ ਹਲੋ ਜੀਪ ਸਿੰਘ ਸਿੱਧੂ ਸਾਡਾ ਵਧੀਆ ਖਬਰਾਂ ਭੇਜਦੇ ਆ ਮਾਲਵੇ ਦੀਆਂ ਬਾਤਾਂ ਉਹਨਾਂ ਨੇ ਕਿਤਾਬ ਲਿਖੀ ਸਾਬ ਜੇ ਨਹੀਂ ਹੈਗੀ ਤੁਹਾਡੇ ਕੋਲ ਲੈ ਕੇ ਪੜਿਓ ਸਿੱਧੂ ਸਾਹਿਬ ਧੰਨਵਾਦ ਤੁਹਾਡਾ ਥੈਂਕ ਯੂ ਬਰਚਾਨ ਕੋਲਾਰ ਜੀ ਇੰਗਲੈਂਡ ਤੋਂ ਬਲੈਤੋਂ ਬੋਲਦੇ ਹਾਲ ਐਨਪਾਸਟੀਗਰ ਗੈਸ ਸਾਹਿਬ ਸਸੀਗਾ ਬਾਈ ਜੀ ਸਸੀਗਾ ਮਾਨੂੰ ਨਾਨੀ ਤੇ ਦਾਦੀ ਦਾ ਤਾਂ ਨਹੀਂ ਸੁਭਾਅ ਪ੍ਰਾਪਤ ਹੋਇਆ ਕਿਉਂਕਿ ਦਾਦੀ ਤੇ ਪਹਿਲਾਂ ਹੀ ਗੁਜ਼ਰ ਗਏ ਸੀ ਤੇ ਨਾਨੀ ਬਿਲਕੁਲ ਥੋੜੀ ਥੋੜੀ ਸਿਹਤ ਆ ਉਹ ਵੀ ਗੁਜ਼ਰ ਗਏ ਸੀ ਟਾਈਮ ਨਹੀਂ ਜੋ ਵੀ ਕਹਾਣੀ ਮਾਂ ਸਾਡੀ ਨੇ ਸਾਨੂੰ ਸੁਣਾਈਆਂ ਜਿੱਦਾਂ ਹਾਂਜੀ ਇੱਕ ਨਿੱਕੇ ਹੁੰਦਿਆਂ ਨੂੰ ਮਾਂ ਨੇ ਸੁਣਾਈਆਂ ਜਿੱਦਾਂ ਕਦੇ ਉਹਨਾਂ ਨੇ ਸੋਢੇ ਸ਼ਹਿਬ ਜੀ ਦੀ ਕਹਾਣੀ ਟੁਰ ਲੈਣੀ ਕਦੇ ਬਾਬਾ ਬੰਦਾ ਸਿੰਘ ਬਾਦ ਜੀ ਜਦੋਂ ਸੋ ਜਾਣਾ ਉੱਥੇ ਤੁਹਾਡੀ ਗੱਲ ਕਰਨਾ ਉੱਥੇ ਸਟਾਪ ਲੱਗ ਜਾਣਾ ਤੇ ਪਾਕਿਸਤਾਨੇ ਪਹਿਲੇ ਬਹੁਤ ਸੋਹਣੇ ਸੀਗੇ ਜੋ ਵੀ ਮਿਲਿਆ ਛੋਧੀ ਮਿਲਿਆ ਆ ਅੱਜ ਕੱਲ ਹੁਣ ਕੀ ਨਿਆਣਿਆਂ ਬਸ ਯੇ ਕੀ ਸਣਾਈਏ ਇੱਕ ਟੌਮ ਹੁੰਦਾ ਸੀ ਇੱਕ ਜੈਰੀ ਹੁੰਦਾ ਸੀ ਕੀ ਸਗਾਈਏ ਕਿਉਂਕਿ ਉਹ ਜੋ ਆਪਣੇ ਕੋਲ ਉਹ ਗਾਂ ਆਣਿਆ ਕੋਈ ਗਾ ਨਾ ਤੇ ਨਾ ਹੀ ਆ ਤੁਹਾਡੀ ਗੱਲ ਕੋਣੋ ਵੀ ਆ ਜਿਹੜਾ ਟੰਡ ਰਹੇ ਰਹੋ ਤੁਸੀਂ ਮਾਨ ਦਿੰਦੇ ਹੋ ਪਿਆਰ ਕਰਦੇ ਹੋ ਉਹ ਏਡੀ ਦੂਰ ਬੈਠੇ ਸੁਣਦੇ ਹੋ ਤੁਹਾਡੇ ਦੋਸਤ ਮਿੱਤਰ ਫੇਸਬੁਕ ਤੇ ਭੇਜਦੇ ਆ ਵੀ ਤੁਸੀਂ ਉਹਨਾਂ ਨੂੰ ਗਾਂ ਕਿਹਾ ਉਹ ਪ੍ਰੋਗਰਾਮ ਸੁਣਿਆ ਕਰੋ ਤੇ ਤੁਸੀਂ ਜਿਹੜੇ ਭਾਈ ਹੋ ਨਾ ਇਹਦੇ ਕਰਕੇ ਮਾਨ ਮਿਲਿਆ ਉਧਰੋਂ ਟੈਕਨੋਲੋਜੀ ਪਰ ਪਹਿਲਾਂ 5 ਸ਼ੁਰੂ ਹੋ ਗਈ ਠੱਡਾ ਟੱਪ ਗਈ ਵਤਨਾ ਤੋਂ ਦੂਰ ਜਿੱਥੇ ਵੀ ਬੈਠੇ ਹੋ ਆਸਟ੍ਰੇਲੀਆ ਤੋਂ ਬਹੁਤ ਫੋਨ ਤੁਸੀਂ ਕਰਦੇ ਹੋ ਆਸਟ੍ਰੇਲੀਆ ਵਾਲਿਆਂ ਨੂੰ ਵੀ ਬੇਨਤੀ ਆ ਪਾਓ ਖਬਰਾਂ ਬਲਗੇੜਾ 'ਚ ਬੰਬੂ ਕਾਕ ਸਲਮ ਦਾ ਇੱਕ ਗੀਤ ਹੈ ਬਹੁਤ ਵਧੀਆ ਗੀਤ ਆ ਉਹ ਤੁਹਾਨੂੰ ਸੁਣਾਉਣਾ ਖਾਸ ਪਸੰਦ ਖਾਸ ਡਿਮਾਂਡ ਇਹ ਵੀ ਬਲੈਤੋਂ ਹੀ ਭੇਜੀ ਹੈ ਰਾਜ ਸਿੰਘ ਬੈਂਸ ਜੀ ਰਾਜ ਸਿੰਘ ਬੈਂਸ ਲਾਈਨ ਨੰਬਰ 2 ਸਤਿ ਸ਼੍ਰੀ ਅਕਾਲ ਭਾਈ ਜੀ ਮੈਂ ਵੀ ਮਲਟੀ ਤੇ ਭਾਈ ਜੀ ਮੇਰੇ ਨਾਨਕੇ ਹੈਗੇ ਆ ਤੇ ਜਦੋਂ ਛੋਟੇ ਹੁੰਦੇ ਕੇ ਜਾਣਾ ਜਿਓ ਔੜ ਦਾ ਤੇ ਉਹ ਲੋਕ ਉਹ ਪਿੰਡ ਜਣੀ ਰੂਹ ਖੁਸ਼ ਹੋ ਕੇ ਜਦੋਂ ਨਾਨੀ ਨੇ ਘੁੱਟ ਕੇ ਨਾਲ ਲਾ ਲੈਣਾ ਵੀ ਮੇਰੇ ਦੋਤੇ ਆਏ ਨੇ ਜਾਂ ਕਿਵੇਂ ਵੀ ਆ ਬਾਕੀ ਪਰਿਵਾਰ ਇਕੱਠੇ ਸੀਗੇ ਜੀ ਉਦੋਂ ਆਂਡ ਕੇ ਬਹਿ ਜਾਣਾ ਗੱਲਾਂ ਬਾਤਾਂ ਮਾਰੀ ਜਾਣੀਆਂ ਤੇ ਸਿਆਲ ਤੇ ਤੜਕਿਓ ਚਾਹ ਦੇ ਗਲਾਸ ਹੌਣੇ ਨੇ ਤਾਂ ਉਹ ਅੱਧੀ ਅੱਧੀ ਰਾਤ ਕਰ ਲੈਣੀ ਜੀ ਉੱਥੇ ਜਾ ਕੇ ਉਹ ਹੁਣ ਉਹ ਕੁਛ ਹੁਣ ਮਤਲਬ ਮਿਲਦਾ ਨਹੀਂ ਹੈਗਾ ਜਿੰਨਾ ਮਰਜੀ ਭੱਜ ਦੌੜ ਜਿੰਨੀ ਮਰਜ਼ੀ ਕੁਝ ਵੀ ਕਰ ਲਈਏ ਪਰ ਉਹ ਬਾਈ ਜੀ ਸਵਾਦ ਨਹੀਂ ਹੈਗਾ ਕਿਤੇ ਵੀ ਬਹੁਤ ਬਹੁਤ ਥੈਂਕ ਯੂ ਵੀਰੇ ਬੜਾ ਕੁਝ ਯਾਦ ਕਰਾਇਆ ਤੁਸੀਂ ਜਿੰਦੇ ਰਹੋ ਜੀ ਉਹ ਏਰੀਆ ਹੀ ਬਹੁਤ ਵਧੀਆ ਜਿੱਥੇ ਦੀ ਤੁਸੀਂ ਗੱਲ ਕੀਤੀ ਉੱਥੇ ਇੱਕ ਈ ਦਾ ਦੋਹਤਮਾਨ ਸਾਰੇ ਘਰ ਦਾ ਹੀ ਪਿੰਡ ਦਾ ਹੀ ਦੋਹਤਮਾਨ ਉਹ ਭਾਂਜਾ ਕੱਲ ਨੂੰ ਉਠੀ ਰਹਿ ਲੈ ਜਾਣੇ ਨਹੀਂ ਸੀ ਦਿੰਦੇ ਬਾਹਰ ਫਿਰਨੀ ਪਿਆ ਹੱਥ 'ਚ ਝੋਲਾ ਹੁੰਦਾ ਬੂਟੀਆਂ ਵਾਲਾ ਬੇਬੇ ਦੇ ਮੋਰ ਪਾਏ ਹੁੰਦੇ ਉਹਦੇ 'ਚ ਚਾਰ ਦੋ ਪਜਾਮੇ ਇੱਕ ਚੱਪਲਾ ਥੱਲੇ ਬਸ ਜੇ ਮੁੰਡੇ ਮਾਮੇ ਦੇ ਹਾਣਦੇ ਹੁੰਦੇ ਫੇਰ ਤਾਂ ਲਜਾਂਦੇ ਨੀ ਸੀ ਕੁਝ ਜਿਹੜੇ ਕੱਪੜੇ ਤੰਦੇ ਹੁੰਦੇ ਉਹਨਾਂ ਨਾਲ ਬਹੁਤ ਤੇਜ਼ੀ ਹੁੰਦੀ ਮਾਮੇ ਦੇ ਮੁੰਡੇ ਜਿਹੜੇ ਬੜੇ ਹੁੰਦੇ ਨਾ ਕਈ ਵਾਰ ਉਹ ਪੁੱਠੇ ਕੰਮ ਵੀ ਕਰਾ ਲੈਂਦੇ ਮਾਮੇ ਦੇ ਮੁੰਡੇ ਜੇ ਵਿਆਹੇ ਹੁੰਦੇ ਤਾਂ ਰੋਲਾ ਪਾ ਲੈਣਾ ਮੈਂ ਤਾਂ ਤੇਰੇ ਨਾਲ ਪੈਣਾ ਵੀਰ ਉਹ ਕਹਿੰਦਾ ਆ ਜਾ ਗੱਲ ਕਿਹੜੀ ਐ ਤੂਰੇ ਪੈ ਭਾਬੀ ਨੂੰ ਕਹਣਾ ਵੀ ਨਾ ਬਈ ਤੂੰ ਨਹੀਂ ਇੱਥੇ ਪੈ ਸਕਦੀ ਅੱਜ ਅਸੀਂ ਵੀਰ ਦੇ ਕੋਲ ਮੇਰੇ ਕੋਲ ਪੈਣਾ ਫੇਰ ਹੋਲੀ-ਹੋਲੀ ਪਲੱਸ ਕਿਤੇ ਥੋੜਾ ਜਿਹਾ ਹੋਊਗਾ ਚੱਲ ਬਈ ਪਏ ਹੁਣ ਮੱਲਾ ਜਾ ਕੇ ਸਵੇਰੇ ਪਾਠੀ ਬੋਲਦੇ ਨਾਲ ਉੱਠਣਾ ਫੇਰ ਜਦ ਸੰਦੋਂ ਨੂੰ ਸੌ ਏਅਰ ਤੇ ਹੋ ਸਤਿ ਜੀ ਰਪਿੰਦਰ ਜੀ ਮੇਰੇ ਨਾਮ ਵੀ ਕੋਟਕਪੂਰੇ ਨਾਲ ਪਿੰਡ ਜੀ ਤੇ ਉਸ ਟਾਈਮ ਜੀ ਮੱਧਵੀਂ ਨਹੀਂ ਬਾਤਾਂ ਆਉਂਦੀ ਹੁੰਦੀ ਸੀ ਕਿ 2-2 ਘੰਟਿਆਂ ਬਾਅਦ ਤੇ ਉਦੋਂ ਆਇਆ ਲੱਗਣਾ ਵੀ ਇਹ ਏਰੀਆ ਤੋਂ ਸਭ ਤੋਂ ਦੁਨੀਆ ਦਾ ਸੋਹਣਾ ਏਰੀਆ ਨਾਲੋਂ ਬੈਕਵਰਡ ਪੈਣ ਸੀਗੇ ਪਰ ਮਾਨ ਬੱਸ ਜੀ ਬਹੁਤ ਵਧੀਆ ਬਿਲਕੁਲ ਗੱਲ ਸੁਣ ਕੇ ਬਿਲਕੁਲ ਬਹੁਤ ਯਾਦ ਆਇਆ ਏਰੀਆ ਦੀ ਜੁਦੇ ਰਹੋ ਭਾਈ ਧੰਨਵਾਦ ਜੀ ਧੰਨਵਾਦ ਫਰਕ ਹੈ ਆਪਣੇ ਕਿਤੇ ਦਾ ਫਰਕ ਹੁੰਦਾ ਹੈ ਖੁੱਲ੍ਹਦਲੇ ਲੋਕ ਨੇ ਤੁਸੀਂ ਕਿਸੇ ਨੂੰ ਵੀ ਵੇਖ ਲਓ ਦੋਸਤ ਮਿੱਤਰ ਨੂੰ ਮਿਲਾ ਕੇ ਮਿਲ ਕੇ ਬਹੁਤ ਫਰਕ ਹੈ ਏਰੀਆ ਦਾ ਆਪਣਾ ਆਪਣਾ ਫਰਕ ਹੈ ਤੰਗ ਦੇਲੇ ਨਹੀਂ ਹੈ ਤੰਗ ਦੇਲਾ ਬੰਦਾ ਪਤਾ ਲੱਗ ਜਾਂਦਾ ਹੈ ਖੁੱਲ੍ਹਦਲਿਆਂ ਦਾ ਅਲੱਗ ਪਤਾ ਲੱਗਦਾ ਏਰੀਆ ਸਾਰੇ ਵਧੀਆ ਪੰਜਾਬ ਦੇ ਸੋਨਾ ਵਤਨ ਹੈ ਸਾਡਾ ਪਰ ਕੁਝ ਨਾ ਕੁਝ ਖਾਸੀਅਤ ਹੁੰਦੀ ਬਠਿੰਡਾ ਤਾਂ ਸੋਹਣਾ ਲੱਗਦਾ ਚੜ੍ਹਦੀ ਵਰੇਸ ਉੱਥੇ ਰਹੇ 4 ਸਾਲ ਜਿਹੜਾ ਦੋਸਤ ਮਿੱਤਰ ਸੀ ਉੱਥੇ ਤੇ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਵਸੀਮਿਆਂ ਰਾਹਾਂ ਦੇ ਵਿੱਚ ਤੁਰਦੇ ਫਿਰਦੇ ਧੁੱਲ ਚ ਫਿਰਦੇ ਬੜਾ ਕੁਝ ਮਿਲਿਆ ਉਸ ਬਠਿੰਡੇ ਨੇ ਬਹੁਤ ਕੁਝ ਦਿੱਤਾ ਬਣ ਥੋੜੀ ਥੋੜੀ ਸੁਣਾ ਰਹੇ ਵੱਡੇ ਵੀ ਬੈਠੇ ਸੁਣਦੇ ਆ ਸਤਿਕਾਰਯੋਗ ਮਾਮਾ ਜੀ ਹਨਓਵਰ ਦੇ ਵਿੱਚ ਬੈਠੇ ਪ੍ਰੋਗਰਾਮ ਸੁਣਦੇ ਆ ਆਪਣੇ ਆਪ ਪੂਰਾ ਖਿਆਲ ਰੱਖਣਾ ਪੈਂਦਾ ਖੇਲੇ ਆ ਦੇ ਹੱਥਾਂ ਦੇ ਵਿੱਚ ਮਾਨ ਬੜਾ ਹੁੰਦਾ ਜਦ ਆਪ ਨੇ ਸ਼ਾਬਾ ਆ ਵੀ ਠੀਕਾ ਕਹਾਣੀ ਹੁਣ ਉਹ ਅਸਿਸ ਵਿੰਡੋ ਦੱਸਿਆ ਟੱਬਰ ਅੱਧੇ ਤੋਂ ਵੱਧ ਜਰਮਨ ਦੇ ਪਿਛਲੇ 50 ਸਾਲਾਂ ਤੋਂ ਰਹਿ ਰਿਹਾ ਜਿਨ੍ਹਾਂ ਨੇ ਛੰਡੇ ਗੱਡੇ ਜਾ ਕੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਆ ਕੇ ਰੈਸਟੋਰੈਂਟਾਂ ਤੋਂ ਲੈ ਕੇ ਏਅਰਲਾਈਨ ਪਾਇਲਟ ਤੱਕ ਮਾਮੇ ਜਿਹੜੇ ਉਹ ਉੱਚੀਆਂ ਬਲੰਦੀਆਂ ਨੂੰ ਉਹਨਾਂ ਨੇ ਛੂਹਿਆ ਇਹੀ ਤਰੱਕੀਆਂ ਦੀ ਦਾਸਤ ਸਾਰੇ ਆਪਾਂ ਇੰਡਸਟਰੀ ਦੇ ਵਿੱਚ ਝੰਡਾ ਗੱਡਿਆ osswindows ਨੇ ਤੇ ਪਹਿਲੀ ਕੰਪਨੀ ਹੈ ਜਿਹੜੀ ਵਿੰਡੋ ਫੈਕਟਰੀ ਲੱਗੀ ਭਾਈਚਾਰੇ ਦੀ ਛੋਟੇ ਜਿਹੇ ਵੇਅਰਹਾਊਸ ਤੋਂ ਸ਼ੁਰੂ ਕਰਕੇ ਅੱਜ ਵੇਖੋ ਜਾ ਕੇ ਕਿਲਿਆਂ ਦੇ ਵਿੱਚ ਸਟੇਟ ਆਫ ਆਰਟ ਪਲਾਂਟ ਲੱਗਿਆ ਮਲਟੀ ਫੈਮਿਲੀ ਟਾਊਨ ਹਾਊਸ ਕਾਂਡੋ ਵੱਡੇ ਪ੍ਰੋਜੈਕਟਾਂ ਤੇ ਉਹ ਇਸ ਵਿੰਡੋਜ਼ ਦੀਆਂ ਵਿੰਡੋਜ਼ ਲੱਗਦੀਆਂ 6545975033 ਧਾਮੀ ਨਾਰਿੰਗ ਦੋ ਵਕੀਲਾਂ ਨੇ ਸ਼ੁਰੂ ਕੀਤੀ ਕੰਪਨੀ ਅੱਜ 8 ਗਹਿ ਨਾਲ ਨੇ ਹੋਰ ਅਮਲਾ ਫੈਲਾ 6646416131 ਤੇ ਨਾਲ ਹੀ ਯੂਟੀਏ ਦੇ ਵਿੱਚ ਦਫ਼ਤਰ 'ਚ ਐਤਵਾਰ ਨੂੰ ਖੰਡ ਰੇਜ਼ਿੰਗ ਹੋਣਾ 11:00 ਵਜੇ 86 ਤੇ 128 ਤੇ ਕਮਲਜੀਤ ਹੁੰਦਲ ਦੇ ਲਈ ਬੇਨਤੀ ਹੈ ਸਾਰੇ ਪਹੁੰਚੋ ਮੈਂ ਵੀ ਪਹੁੰਚਾਂਗਾ ਸਾਰੇ ਵੀਰਾਂ ਨੂੰ ਮਿਲਾਂਗੇ ਉੱਥੇ ਲੜਾਈ ਨੇੜਿਆ ਹੁਣ ਹੁਣ ਨਾ ਖਖੜੀਆਂ ਕਰੇਲੇ ਹੋ ਜੋ ਕਿਤੇ ਸਾਂਭਿਓ ਆਪਣੇ ਆਪ ਨੂੰ 64349 1313 ਕਿਤੇ ਫੌਜਾਂ ਜਿੱਤ ਫੇਰ ਹਾਰ ਜਾ ਧੰਨਵਾਦ ਤੁਹਾਡਾ ਜਰਮਨ ਦੇ ਵਿੱਚ ਬਾਈ ਜੀ ਦਲਵੀਰ ਸਿੰਘ ਉਹਨਾਂ ਦਾ ਬਰਲਿਨ ਦੇ ਵਿੱਚ ਧੰਨਵਾਦ ਤੁਹਾਡਾ ਮਾਲਕ ਅੰਗ ਸੰਗ ਰਹੇ ਤੇ ਕੌਮ ਦੀ ਚੜ੍ਹਦੀ ਕਲਾ ਸਦੇ ਰਹੇ ਮਨੁੱਖਤਾ ਲਈ ਸਦਾ ਕੰਮ ਕਰਦੇ ਰਹੀਏ ਸਰਬੱਤ ਦਾ ਭਲਾ ਸਦਾ ਮੰਗਦੇ ਰਹਿ ਅਖਿਰਚ ਮਾਮਾ ਜੀ ਦੇ ਪਸੰਦੀ ਦਾ ਮੁਹੰਮਦ ਸਦੀਕ ਰੱਬ ਰਾਖਾ ਸੌ ਬਾਸ ਨੂੰ ਕਿਹੜਾ ਵੇ ਫੇਰ ਮੁੜਦਾ ਚੜਦੀ ਕਲਾ